ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਫਾਰਕ ਸ਼ਾਂਤ ਸਤ ਬੁੱਧ ਮੂਰਤ ਅਸਲ ਦੇ ਵਿੱਚ ਜਿਹੜਾ ਸ਼ਾਂਤ ਹੈ ਨਾ ਸਤ ਬੁੱਧ ਮੂਰਤ ਇਸ ਨੂੰ ਸੰਤ ਕਹਿੰਦੇ ਨੇ ਤੇ ਸੰਤ ਦੀ ਨਿਸ਼ਾਨੀ ਹੈ ਇਹ ਸ਼ਾਂਤ ਕਹਿੰਦੇ ਜਿਹੜਾ ਸ਼ਾਂਤ ਐ ਸ਼ਾਂਤ ਹੈ ਉਹ ਸਰਬਤ ਹੈ ਸੱਤ ਬੁੱਧ ਬੁਰਤਾ ਜਮਲ ਮਰਨ ਤੇ ਪਰੇ ਸੱਤ ਬੁੱਧ ਉਹ ਬੁੱਧੀ ਜਿਹੜੀ ਜੋ ਬੁੱਧੀ ਹੱਦੇ ਦੇ ਵਿੱਚ ਚਲਿਆ ਗਿਆ ਨਾ ਅਸਲ ਜੋ ਹੈ ਉਹਦੇ ਮਾਤਾ ਦੇ ਰੂਪ ਚ ਉਹ ਮੇਰਾ ਪਿਤਾ ਕੋ ਹੈ ਮੇਰਾ ਮਾਤਾ ਜਿਹਨੂੰ ਬਬੇ ਕਹਿ ਦਿੰਦੇ ਆ ਤਾਂ ਹੋਰ ਐ ਸੋਹੁਰ ਪਾਇਓ ਚਾਤਾ ਨੋ ਤੂੰ ਉਹਨੂੰ ਬੁੱਧ ਕਹਿਆ ਜਾਂਦਾ ਫਿਰ ਇਸਤਰੀ ਲਈ ਇਹ ਉਸੇ ਨੂੰ ਬੁੱਧ ਕਹਿਆ ਜਾਂਦਾ ਤਾਂ ਇਸਤਰੀ ਲਈ ਬਵੇਗ ਤਾਂ ਇੱਕੋ ਹੈ ਜਿਹੜੀ ਸੱਤ ਬੁੱਧ ਮੂਰਤ ਹੈ ਇਹਦੇ ਵਿੱਚ ਥੋੜਾ ਥੋੜਾ ਥੋੜਾ ਥੋੜਾ ਫਰਕ ਹੈ ਬਵੇਗ ਬੁੱਧ ਦੇ ਵਿੱਚ ਥੋੜਾ ਥੋੜਾ ਥੋੜਾ ਥੋੜਾ ਥੋੜਾ ਥੋੜਾ ਫਰਕ ਹੈ ਜਾਂਦਾ ਕਿ ਜਿਹੜੇ ਇਲਾਕੇ ਦੇ ਵਿੱਚ ਕੋਈ ਪੈਦਾ ਹੋਇਆ ਉਹ ਇਲਾਕੇ ਦੀ ਭਾਸ਼ਾ ਉਹਨੇ ਸਿੱਖੀ ਜੇ ਬੈਠ ਲਾਉਂਦਾ ਦੇ ਦਾ ਬੇਤਪਾਲਾ ਹੁੰਦਾ ਚਨਾਮ ਦੇਵ ਨੇ ਵਰਤੇ ਭਾਮੇ ਕਵੀਰ ਰਵੀ ਬਾਚ ਵਰਤੇ ਇਲਾਕੇ ਦੇ ਲੈਂਦੇ ਦੀ ਬੋਲੀ ਫਰੀਦੀ ਹੈ ਉਹਨਾਂ ਚੀਜ਼ਾਂ ਦਾ ਅਸਰ ਮਤਲਬ ਜਿੱਥੋਂ ਅਸੀਂ ਕੋਈ ਚੀਜ਼ ਜਿਵੇਂ ਜਿੱਥੇ ਜਿਹੜੇ ਧਰਤੀ गन्ना ਪੈਦਾ ਹੁੰਦਾ ਉਹ ਧਰਤੀ ਦਾ ਅਸਰ ਉਸ ਗੰਨੇ ਤਾਂ ਪੈਲੇ ਵਿੱਚ ਇਕਾਪੁਰਖ ਸਵੈ ਨਾਰ ਜਾਂ ਤੁਸੀਂ ਕਹਿੰਦੇ है ਜਿਹੜੀ ਕਵੁੱਧ ਤੋਂ ਵੇਗਵੁੱਧ ਬਣਦੀ ਏ ਬੁੱਧੇ ਇੱਕ ਕੋ ਲਾਲਣ ਤੋਂ ਲਾਲਣ ਬਣਦੀ ਹੈ ਲਾਲਣ ਤਾਂ ਨਹੀਂ ਬਣਦੀ ਲਾਲਣ ਰਲ ਪ੍ਰੇਤ ਕੋ ਲਾਲਣ ਨਹੀਂ ਬਣਦੀ ਲਾਲਣ ਦਾ ਉਹ ਬੁੱਧ ਹੈ ਜਿਹੜੀ ਬਿਨਾਂ ਕੰਨਾਂ ਤੇ ਸੁਣਨ ਵਾਲੀ ਬੜੀ ਚਾਰ ਕਰਦੀ ਲਾਲੀ ਤਾਂ ਮਿਹਰ ਨਾਲ ਕੀ ਹੋ ਜਿਹੜੀ ਸਰੀਰ ਚ ਬੁੱਧ ਕੰਮ ਕਰਦੀ ਹੈ ਇੱਕ ਦੇ ਵਿੱਚ ਕੰਮ ਕਰਦੀ ਇੱਕ ਦੇ ਵਿੱਚ ਉਹ ਸੁਣ ਕੇ ਗੁਰਬਾਣੀ ਯਾਦ ਕਰਨ ਕਰਦੀ ਹੈ ਬਿਨਾਂ ਕਰਨਾ ਤੋਂ ਸੁਣ ਕੇ ਬਾਣੀ ਨੂੰ ਗੁਰਬਾਣੀ ਦਾ ਰੂਪ ਦਿੰਦੀ ਹੈ ਅਖਰੀ ਨੂੰ ਦਿੰਦੀ ਹੈ ਗੁਰਬਾਣੀ ਕੁਲਾਲਣ ਦਿੰਦੇ ਕਿਉਂਕਿ ਉਹਦੇ ਸਪਰਸ਼ ਨਾਲ ਵਿੱਚ ਰੱਸੀ ਵੀ ਬਣਦੀ ਹੈ ਰੱਸੀ ਗੁਰਬਾਣੀ ਦੀ ਰੱਸੀ ਵੀ ਹੈ ਬਾਣੀ ਜੋ ਗੁਰਬਾਣੀ ਬਣਦੀ ਹੈ ਗੁਰ ਵਿੱਚ ਰੱਸੀ ਵੀ ਹੈ ਵਾਇਆ ਹੈ ਸ਼ਬਦ ਨੇ ਵਾਇਆ ਦਾ ਗਿਆਨ ਪਰਮਾਨੰਦ ਇਹ ਤੇ ਤਤ ਤਤ ਜੋੜਾ ਸਾਛ ਛੱਡ ਦੇ ਇਹਨੂੰ ਲੜਕਣਾ ਤਾਹੀ ਰਹੇ ਉਹ ਉਹਨੂੰ ਨੜਕਣ ਦੇ ਦੋ ਉਹ ਤਾਂ ਮੱਖਣ ਪੰਰੇ ਵਾਲਾ ਚੰਪਾ ਇਹ ਜਿਹੜਾ ਮੱਖਣ ਤੋਂ ਦੁੱਧ ਬਣਾਉਣ ਵਾਲੀ ਗੁੱਧ ਹੈ ਉਹ ਨੂੰ ਕਿੱਥੇ ਲੜਨ ਫਤਨੇ ਆਪਣੀ ਬੁੱਧ ਨੂੰ ਕਲਾ ਲੜ ਕੇ ਜੇ ਮਤ ਦੇ ਕਲਾ ਲੀ ਗੇ ਲਾਲੀ ਨਹੀਂ ਹੈ ਲਾਲੀ ਤਾਂ ਮੇਰੇ ਨਾਲ ਕੀ ਹੋਈ ਹਾਂ ਤਾਂ ਹੀ ਹੈ ਰੋਜ਼ ਆ ਨਹੀਂ ਕਰੇ ਪਰੇਸ਼ਾਨੀ ਬੁੱਧ ਦੇ ਉਸ ਬੁੱਧ ਨਾਲ ਸਾਰੀ ਸ੍ਰਿਸ਼ਟੀ ਰਚਨਾ ਹੋਈ ਹੈ ਪਰ ਸਾਰੀ ਸ੍ਰਿਸ਼ਟੀ ਦੀ ਸੁਭਾਅ ਹੋਤੀ ਇਹ ਆਦੂ ਨਹੀਂ ਕੋਈ ਨਹੀਂ ਕਰਦਾ ਭਗਤ ਦੇ ਬੁੱਧ ਇਹਾ ਗੁਰਦੇਵ ਸਤਗੁਰ ਦੀ ਬੁੱਧ ਜੋ ਕਲਲੀ ਹੈ ਸਿਰਫ ਇੱਕ ਬਾਉੜੀ ਦਾ ਉਪਦੇਸ਼ ਜਾਣਦੀ ਉਹ ਤੋਂ ਕਹਨੀ ਆ ਜਿਹੜੀ ਮਨੁੱਖਾ ਜਨਮ ਦੀ ਉਹ ਸਾਰੀਆਂ ਬਾਉੜੀਆਂ ਨੂੰ ਲਾਲੀ ਇਹ ਤਾਂ ਸਾਰੇ ਸਾਰਿਆਂ ਨੂੰ ਸਾਰੇ ਦੀ ਭਾਜੀ ਆ ਜੀ बड़ी बड़ाई जाना अलाओ बड़ी बड़ाई यस करके भी है तेरी के हरकती भाषा जानदा है तू कीड़ी तो लगया हाथी तक मुथवे तू समर्थ वटा मेरी मत थोड़ी ना तू सम्राटों से नु गैर वाली असली ये जानो जाणु से ये <स्थिणी> इस करके ये ज्ञान जेड़ा ਪਰ ਲਾਲੀ ਦੇ ਕਿਆ ਹੁੰਦਾ ਣਕਾਈ ਹੈ ਜੋ ਲਾਲੀ ਕੋਲ ਗਿਆ ਉਹਦਾ ਕਿ ਣਕਾਈ ਗਿਆ ਰੰਗਾਂ ਉਹਦਾ ਨਾਲ ਮੁਕਾਬਲਾ ਕਰੀਏ ਣਕਾਈ ਹੈ ਕਿਉਂਕਿ ਗਿਆਨ ਸਮੁੰਦਰ ਦੇ ਗਿਆ ਹੁੰਦੇ ਬਰਾਬਰ ਕੀ ਇੱਕ ਕਬੂਲ ਦਾ ਹੀ ਗਿਆਨ ਇੱਕ ਇੱਕ ਵਾਸਤੇ ਗਿਆ ਇੱਕ ਇੱਕ ਵਾਸਤੇ ਗਿਆ ਵਾਸਤੇ ਗਿਆ ਕਣਕੀ ਹੋਇਆ ਇਹ ਇਸ ਕਰਕੇ ਕਿ ਕਣਕਾ ਇੱਕ ਜਿਸ ਜੀਵ ਸਾਹਾ ਇਹਦਾ ਮਤਲਬ ਇਹ ਨਹੀਂ ਗੁਰਬਾਣੀ ਦੇ ਸਾਰੇ ਗਿਆਨ ਲੈ ਕਣਕਾ ਨਾ ਨਾ ਇਹ ਸਾਰਾ ਹੀ ਗਿਆਨ ਲੈਣਾ ਇਹ ਆਪਣੇ ਆਪ ਚ ਕਣਕਾ ਸਾਰਾ ਹੀ ਗਿਆਨ ਆਪਣੇ ਆਪ ਚ ਕੋਈ ਜਿਹੜਾ ਸਤਗੁਰਿਆ ਗੁਰਦੇਵ ਹੈ ਉਹ ਕੇਵਲ ਇੱਕ ਪੌੜੀ ਦਾ ਗਿਆਨ ਜਾਣਦਾ ਗੁਰੂ ਸਾਰੀਆਂ ਹੀ ਬੋੜੀਆਂ ਦਾ ਗਿਆਨ ਜਾਣਦਾ। ਉਸ ਜਾਲ ਕੋ ਦੇ ਤ ਕੋ ਦੇ ਤ ਜ਼ਮੀਨ ਕੋ ਦੇ ਤ ਜ਼ਮਾਨੇ ਕੋ ਦਾ ਹੈ। ਉਹ ਆਲਮੀ ਕੇ ਅੰਤਰ ਕੀ ਜਾਣ ਤ ਉਹ ਹੈ ਇਹ ਨਹੀਂ ਹੈ। ਅਦਮੀ ਗਰੀਬ ਨਹੀਂ ਕੇ ਅੰਤਰ ਕੀ। ਉਹ ਕਿਆ ਫਿਰ कले ਇਕੱਲੇ बैठा है, ਬੈਠੇ ਇਹਦੇ ਥਰੂ ਹੋ ਜਾਂਦਾ ਸੀਐਡੀ ਰੱਖੀ ਹੈ ਗੋਬਲ ਦੀ ਸੀਐਡੀ ਪੜਾਉਣੀ ਉਹਦਾ ਵੀ ਇੱਕ ਤੇ ਸੀਐਡੀ ਛੜਿਆ ਹੋਇਆ ਹੈ ਯਾ ਇਸ ਤਰੀਕੇ ਨਾਲ ਗਾੜਕ ਆਦਮੀ ਨਿਕੜ ਕੜ ਕੇ ਉਹ ਕਾਜ਼ਮੀ ਤਾਂ ਬਾਹਰ ਰਹਿੰਦਾ ਵਿਚਾਰਾ ਬਾਹਰ ਇਹਦੇ ਅੰਦਰਲਾ ਇਹ ਨੂੰ ਜਾਂਦਾ ਅੰਦਰ ਲਾਓ ਵੇਖੇ ਉਹਨਾਂ ਨੂੰ ਨਾ ਮੈਨੂੰ ਬੋਲਦੇ ਇਹਨੂੰ ਨੂੰ ਪਤਾ ਲੱਗਦਾ ਵੀ ਸਾਨੂੰ ਕੋਈ ਦੇਖ ਰਿਹਾ ਜਾਨਵਰਾਂ ਨੂੰ ਵੀ ਪਤਾ ਵੀ ਕੋਈ ਸਾਨੂੰ ਕੈਮਰਾ ਦੇਖ ਰਿਹਾ ਪਰ ਕੈਮਰਾ ਉਹਨਾਂ ਦੀ ਫੋਟੋ ਲੈਣੇ ਸੈਲਫੀ ਵੀ ਜਦੋਂ ਜਿਹੜੀ ਜਗੜ ਦੀ ਫੋਟੋ ਲਈ ਗਏ ਜਾਨਵਰਾਂ ਨੂੰ ਉਹਨਾਂ ਨੂੰ ਪਤਾ ਨਹੀਂ ਸਾਡੀ ਨੂੰ ਉਹਨਾਂ ਨੂੰ ਵੀ ਸਾਨੂੰ ਕੋਈ ਦੇਖ ਰਿਹਾ ਸਾਨੂੰ ਨੂੰ ਪਤਾ ਸਾਨੂੰ ਕੋਈ ਦੇਖ ਰਿਹਾ ਉਮੀ ਸਭ ਲੋਕ ਨੂੰ ਪਤਾ ਨਹੀਂ ਪਵੇ। ਬਸ ਸਾਰੀ ਰੀਲ ਹੋਊ। ਜਸ ਉਹੀ ਚਲਾ ਕੇ ਦਿਖਾ ਦੇਵਾਂ ਦੁਬਾਰਾ। ਫੇਰ ਕੀ ਬਕਰੂਗਾ ਕੀ ਕੋਹਗਾ ਵੀ ਮੈਂ। ਹੇ ਗੁਰਦੇਵ ਪਾਰਸ ਪਸਪਰਾ। ਗੁਰਦੇਵ ਪਾਰਸ। ਪਸਪਰਾ। ਪਾਰਸਿਕ ਪੱਥਰ ਹੁੰਦਾ ਹੈ। ਹਰਦੇਵ ਪੱਥਰ ਨਹੀਂ। ਗੁਰਦੇਵ ਕੋਲ ਨਾਮ ਰਸ ਹੁੰਦਾ ਹੈ। ਸਤਗੁਰ ਤੇ ਨਾਮ ਪਾਇਆ। ਗੁਰਦੇਵ ਤੋਂ ਰਸ ਪ੍ਰਾਪਤ ਕਰਕੇ ਗੁਰਦੇਵ ਉਪਕੜ ਦਮਤੁਰਾ ਗੁਰਦੇਵ ਕੋ। ਕੀ ਗੁਰਦੇਵ ਨੂੰ ਸਿਹਰੀ ਹੋਵੇ ਆਉਕੜੋ? ਉਕੜੇ। ਜਿੱਥੇ ਸਹਾਰੀਆ ਉੱਤੇ ਗੁਰਦੇਵ ਦੁਆਰਾ ਗੁਰਦੇਵ ਦੇ ذریعے ਕੰਮ ਬਿਆ ਆਪਣਾ ਸਰ ਗੁਰਦੇਵ ਦੇ ਜਰੀਆ ਸੀ ਪ੍ਰਾਪਤ ਹੋਈ ਇਹ ਕੋਲਾ ਗੁਰਦੇਵ ਤੋਹਫਰਾ ਤੁਹਾਨੂੰ ਮੋੜ ਤੋਂ ਰਸ ਮਿਲਦਾ ਹੈ ਨੂੰ ਮਿਲਦਾ ਰਸ ਟਾਣੀ ਉੱਤੇ ਮੂਲ ਜੜ ਥੱਲੇ ਹੈ ਰਸ ਪਹਿਲਾਂ ਮੂਲ ਨੇ ਲੈਣੇ ਮੂਲ ਕਿਥੋਂ ਰਸ ਲੈਂਦਾ ਹੈ ਗੱਲ ਅਲੱਗ ਹੈ ਮੂੜਾ ਕਿਥੋਂ ਲੈਂਦਾ ਹੈ ਗੱਲ ਅਲੱਗ ਸਾਨੂੰ ਮੂੜ ਤੋਂ ਰਸ ਮਿਲਦਾ ਹੈ ਬਸ ਤੁਸੀਂ ਤਾਂ ਆਪਣਾ ਦੇਖੋ ਗੌਰਮੈਂਟ ਪੈਸਾ ਕਿਥੋਂ ਲਿਆਉਂਦੀ ਹੈ ਅਸੀਂ ਕੀ ਲੈਣਾ ਸਾਨੂੰ ਤਨਖਾਹ ਗੌਰਮੈਂਟ ਦਿੰਦੀ ਹੈ ਗੱਲ ਹੈ ਬਈ ਗੌਰਮੈਂਟ ਤੋਂ ਤਨਖਾਹ ਲੈਣੀ ਗੌਰਮੈਂਟ ਦੇ ਸਰਸ ਕੀ ਨੇ ਕਮਾਈ ਤੋਂ ਗੱਲ ਅਲੱਗ ਸਤਗੁਰ ਰਸ ਕਿਥੋਂ ਮਿਲਦਾ ਹੈ ਨੂੰ ਅਸੀਂ ਇੱਥੇ ਕੀ ਲੈਣ ਅਸੀਂ ਇੰਨੀ ਗੱਲ ਹੈ ਕਿ ਸਤਗੁਰ ਤੋਂ ਅਸੀਂ ਰਸ ਤੋਂ ਹਰਦਾਸ ਰਾਏ ਨੇ ਗੁਰਦੇਵ ਤੋਂ ਰਸ ਪ੍ਰਾਪਤ ਕਰਕੇ ਗੁਰਦੇਵ ਗਾਹ ਪਿੱਛੇ ਜੁੜਿਆ ਆ ਗੁਰਦੇਵ ਦਾ ਵੀ ਤਾਂ ਕੋਈ ਮੂਲ ਹੈ ਉਹ ਮੂਲ ਜਿਹੜਾ ਮੂਲ ਆ ਉਹਦਾ ਮੂਲ ਧਰਤੀ ਹੈ ਧਰਤੀ ਰਸ ਦਿੰਦੀ ਹੁੰਦੀ ਉਹਦਾ ਸ਼ਬਦ ਗੁਰੂ ਮੇਰਾ ਕਹਨਾਂ ਤੋਂ ਸੋਲ ਵਾਲਾ ਮੂਲ ਹੈ ਉਹ ਤਾਂ ਗਾਹ ਮੂਲ ਹੈ ਗੁਰਦੇਵ ਪਰਮੇਸ਼ਰ ਨਾਲ ਜੁੜਿਆ है, ਅਸੀਂ ਗੁਰਦੇਵ ਨਾਲ ਜੁੜਨੇ ਇਹ ਜੈੰਗਲ ਤੋਂ ਕਿਰ ਗੁਰ ਪਰਮੇਸ਼ਰ ਇੱਕੋ ਜ ਹੈ ਗੁਰਦੇਵ ਕੋਲ ਫਿਰ ਵੀ ਰਸ ਹੈ ਨਹੀਂ ਰਸ ਪਰਮੇਸ਼ਰ ਤੋਂ ਹੀ ਆਇਆ ਹੈ ਰਸ ਗੁਰਦੇਵ ਕੋਲ ਨਾ ਪਹਿਲੇ ਤੇਨ ਤੋਂ ਪਿਆ ਪਹਿਲੇ ਤੇਨ ਤੋਂ ਗੁਰ ਪਰਮੇਸ਼ਰ ਇੱਕੋ ਹੋਇਆ ਉਹ ਉਤੋ ਹੀ ਲੈਂਦਾਰਾ ਬਸ ਕਨੈਕਸ਼ਨ ਹੋ ਗਿਆ ਪਰ ਹੰਡੀ ਸੀ ਹੋਇਆ ਹੋਣ ਐਸੇ ਨੇ ਜੀਵਨ ਨਹੀਂ ਕਰਦਾ ਰਹੇਗਾ ਕਨੈਕਸ਼ਨ ਹੋਇਆ ਜੀ ਹੱਥ ਜਲਦਾ ਰਹਾ ਚੁੱਪ ਗੁਰਦੇਵ ਗੁਰ ਅਰ ਪਰਮੇਸ਼ਰ ਇੱਕ ਹੋਵੇ ਰਾਧ ਪਰਮੇਸ਼ਰ ਦਾ ਹੀ ਹੈ ਗੁਰਦੇਵ ਕੋਲ ਨਹੀਂ ਹੈ ਬੱਚੂ ਕਿ ਉਹਦੇ ਨਾਲ ਜੁੜ ਗਿਆ ਉਹ ਤੋਂ ਰਾਸ ਮਿਲ ਗਿਆ ਪਰ ਉਹਦੇ ਨਾਲ ਜੁੜ ਗਿਆ ਗੁਰਦੇਵ ਕੋਲ ਕੱਲ ਵੀ ਆਪਾਂ ਕਹਿੰਦੇ ਸੀ ਗੁਰਦੇਵ ਕੋਲ ਆਪਣੇ ਕੋਲ ਕੁਝ ਨਹੀਂ ਬਸ ਉੱਥੇ ਮਿਲਦਾ ਜੇ ਨਹੀਂ ਗੱਲ ਹੋ ਕਹਿੰਦਾ ਵੀ ਅੱਜ ਹੀ ਪੈਂਡਿੰਗ ਰੱਖ ਲੈ ਦਾ ਜਾ ਦੋ ਦੇ ਉਸ ਬਰਜੰਦਾ ਇਹ ਹੀ ਹਾਲ ਤਸੀਰਬਦ ਉਹਦੀ ਨਾ ਹੁੰਦੀ ਯਾਦ ਕਹਿੰਦਾ ਅਜੂ ਨਾ ਆਇ ਤਰਫ ਵਰਤਣੀ ਅਗਲ ਤੇ ਨਹੀਂ ਆਈ ਰਾਜਾ ਦਾ ਲੋਹਾ ਲਾ ਖਾਇਆ ਬੈਠਾ ਸੁਣਦਾ ਹੀ ਗੱਲ ਉਹਦਾ ਕਹਿੰਦਾ ਵੀ ਹੁਣ ਡਰ ਗਿਆ ਦੂਦੇ ਮਜਾਕ ਕਰਦੇ ਹੁਣ ਹੁਣ ਬੋਲੇ ਬੜ ਬੜ ਬੋਲੀ ਜਾਂਦਾ ਬਾਅਦ ਹੁਣ ਬੋਲਤੀ ਤਾਂ ਹੋਊਗੀ ਉਹ ਦੇਖਦਾ ਵੀ ਇਹਨੂੰ ਹੋਰਸ ਨੂੰ ਕਿੱਥੋਂ ਸ਼ੁਰੂ ਕਰਾਂ ਗੱਲ ਸਮਝਾਵਾਂ ਉਹ ਨਹੀਂ ਆ ਰਹੀ ਉਹ ਅਕਲ ਹੀ ਨਹੀਂ ਆ ਰਹੀ ਵੀ ਤਾਂਗਾ ਸ਼ੁਰੂ ਕਿੱਥੋਂ ਕਰਾਂ ਤਾਂ ਤਾਂ ਆਥ ਨਹੀਂ ਆ ਰਹੀ ਭਈ ਉੜ ਗੱਲ ਯਾਰ ਸ਼ੁਰੂ ਕਰੀ ਆਪਾਂ ਨੇ ਵੀ ਭਾਸ਼ਾ ਤੋਂ ਸ਼ੁਰੂ ਤੇ ਭਾਸ਼ਾ ਦਾ ਅੰਤਰ ਹੈ ਬ੍ਰਹਮ ਨੂੰ ਜਦੋਂ ਅਸੀਂ ਸਮਝਣਾ ਪਰ ਬੰਦ ਸਮਝਣ ਦੀ ਸੰਸਾਰ ਨੂੰ ਕੋਈ ਲੋੜ ਨਹੀਂ ਰਾਜ ਨੂੰ ਕੋਈ ਲੋੜ ਨਹੀਂ ਪਰ ਰਾਜ ਨੂੰ ਤਾਂ ਆਪਣੇ ਦਫਤਰ ਚ ਚਲਾਉਣ ਖਾਤਰ ਕੰਮ ਚਲਾਉਣ ਖਾਤਰ ਪੜਾਈ ਖਾਤਰ ਸੰਸਾਰੀ ਕੰਮ ਚਲਾਉਣ ਖਾਤਰ ਹਥਿਆਰ ਚਲਾਉਣ ਖਾਤਰ ਘੋੜੇ ਸਿਧਾਰ ਮਤਲਬ ਹਥਿਆਰ ਬੜੋ ਖਾਤਰ ਡਾਕਟਰ ਤੇ ਲੋੜ ਖਤਰ ਹਸਾਉ ਕਾਦ ਰੱਖਣ ਖਤਰੋ ਲੋੜ ਹੈ ਟੈਕਨੀਕਲ ਆਦਮੀ ਦੀ ਸਾਰੇ ਸਰਕਾਰوں ਨੂੰ ਲੋੜ ਪੈਂਦੀ ਹੈ ਕੋਈ ਜਿਹੜੇ ਸਕੂਲ ਕਾਲਜ ਕੋਲ ਹੈ ਜਿਹੜੀ ਉਹਦੀ ਲੋੜ ਹੈ ਆਪਣੀ ਉਹਨੇ ਬ੍ਰਹਮਣ ਨੂੰ ਜਾਣ ਕੇ ਕੀ ਲੈਣ ਜਿਨ੍ਹਾਂ ਨੇ ਬ੍ਰਹਮਣ ਨੂੰ ਜਾਣਿਆ ਉਹਨਾਂ ਨੇ ਸੰਸਾਰ ਛੱਡਤਾ ਵਿਸ਼ਣ ਤਾਂ ਸੰਸਾਰ ਛੱਡਣ ਦੇ ਸਲਾਹ ਉਹ ਤੇ ਸੰਸਾਰ ਨੂੰ ਚਲਾਉਣਾ ਹੈ ਵਿਸ਼ਣ ਸ਼ਿਕਾਇਤ ਕਰਦਾ ਹੈ शिवजी ब्रह्मा विष्णु तिनै कठे हो के शिकायत कर देने नाल दी कैसा की होगी नारद भी राधा का नारद गुरुमुख सारो इजि दी गल दा जवाब है ना तन्ना कोनी है ओ भी गल आ है जेडी शास्त्र ਤੁਸੀਂ ਕਦਰ ਵਿੱਚ ਗੱਲ ਆ ਹੈ ਦੱਸੋ ਇਹ ਠੀਕ ਹੈ ਜਾਂ ਗਲਤ ਹੈ ਵਿਰਾਕਾਰ ਮਟੇ ਉਹ누 ਕਿਨੇ ਪੈਦਾ ਕੀਤਾ ਜਿਹਨੇ ਤੁਹਾਨੂੰ ਪੈਦਾ ਕੀਤਾ ਮੈਂ ਉਹਦੀ ਗੱਲ ਕਰ ਬ੍ਰਹਮ ਵੱਡਾ ਅਹਿਜਾਸ ਉਪਾਇਆ ਬ੍ਰਹਮ ਵੱਡਾ ਹੋਇਆ ਜਿਹਨੇ ਬ੍ਰਹਮ ਪੈਦਾ ਕੀਤਾ ਉਹ ਵੱਡਾ ਹੈ 베ਦ ਵੱਡਾ ਕਿਹਾਂ ਤੇ ਆਇਆ ਓੜੇ 베ਦ ਵੱਡਾ ਹੈ ਕਿ ਜਿਹੜੇ ਹਿਰਦੇ ਚ ਉਹ ਬਣੀ ਕੇ ਫੈਸਲਾ ਆਇਆ ਹੈ ਤਾਂ ਬਾਗੂ ਲੱਗੇ ਪਾਇਆ ਦਾ ਨਹੀਂ ਕਰ ਸਕਦਾ ਗੁਰੂ ਗੁਰੂ ਚੇਤੰਗਪੁਰ ਬਿਲਕੁਲ ਨਹੀਂ ਕਰ ਸਕਦਾ ਤੁਸੀਂ ਤਾਂ ਫੈਸਲਾ ਹੋਇਆ ਹੋਇਆ ਬਿਲ ਇਹ ਤਾਂ ਬਿਮਾਰੀ ਪਹਿਲਾਂ ਹੋਈ ਹੈ ਬੇਦ ਵੱਡਾ ਕਿ ਤੇ ਆਇਆ ਜਿਹੜੇ ਹਿਰਦੇ ਵਿੱਚੋਂ ਬਾਣੀ ਆਈ ਹੈ ਇਹ ਜਿੱਥੋਂ ਬਾਣੀ ਆਈ ਹੈ ਤੁਰਕੀ ਉਹ ਵੱਡਾ ਹੈ ਤਾਂ ਅੱਖਰ ਵੱਡੇ ਨੇ ਇਹ ਅੱਖਰ ਖਰਜਾਂਗੇ ਉਹ ਖਾਰਨ ਮੈਨੋ ਹੈ ਵੱਡਾ ਉਹ ਹੀ ਰਟ ਜਿੱਥੋਂ ਆਈ ਹੈ ਬਾਣੀ ਜਿਹਦੇ ਥਰੂ ਆਈ ਹੈ ਉਹ ਵੀ ਚਪੜਾਸੀ ਹੈ ਵੱਡਾ ਉਹ ਨਹੀਂ ਹੈ ਉਹਨੇ ਤਾਂ ਇਹਨਾਂ ਅੱਖਰਾਂ ਨੂੰ ਆਪਣੇ ਨਾਲ ਵੱਡਾ ਮੰਨੇ ਇਹਨਾਂ ਅੱਖਰਾਂ ਨੂੰ ਉਹਨੇ ਵੱਡਾ ਮੰਨੇ ਉਹ ਚਪੜਾਸੀ ਨੇ ਵੱਡਾ ਮੰਨੇ ਜਿਹੜਾ ਚਪੜਾਸੀ ਹਾਈ ਕੋਰਟ ਸੁਪਰੀਮ ਕੋਰਟ ਦਾ ਹੁਕਮ ਲੈ ਗਿਆ ਉਹ ਕਹਿੰਦਾ ਮੈਂ ਕੀ ਹਾਂ ਮੈਂ ਤਾਂ ਗੁਲਾਮ ਆ ਗੁਲਾਮ ਲਾਲਾ ਗੋਲਾ ਨੂੰ ਕਹਾਂ ਭਾਈ ਆ ਪਰਮੇਸ਼ਰ ਦਾ ਹੁਕਮ ਹੈ ਇਹਨੂੰ ਮੰਨਣਾ ਹੈ ਮੰਨੋ ਨਹੀਂ ਗੁਜੋ ਨਾ ਮੰਨੋ ਉਹਨੇ ਆਪਣੀ ਵੈਲਿਊ ਨਹੀਂ ਕਹੀ ਮੇਰੀ ਟੂ ਵੈਲਿਊ ਹੈ ਪਰ ਇਹਨਾਂ ਖਰਾਂ ਦੀ ਮੇਰੇ ਨਾਲੋਂ ਜ਼ਿਆਦਾ ਵੈਲਿਊ ਇਹਨਾਂ ਖਰਾਂ ਵਿੱਚ ਕੋਈ ਗੁਰਮੁਖੀ ਖੂਜਾ ਪੋਥੀ ਪਰਮੇਸ਼ਰ ਦਾ ਥਾਂ ਦਾ ਮਤਲਬ ਹੈ ਅਸੀਂ ਕਿ ਪਹਿਲਾਂ ਤਾਂ ਬੋਲੇ ਪਰਮੇਸ਼ਰ ਸਾਡੇ ਵਿੱਚ ਅਸੀਂ ਸੁਣਿਆ ਉਹਨਾ ਪੋਥੀਓ ਬੋਲੂ ਭਾਈ ਆਮ ਆਦਮੀ ਵਾਸਤੇ ਪੋਥੀ ਬੋਲੂਗੀ ਇਹ ਉਸ ਅਵਸਥਾ ਏ ਪਛਾਦੂ ਤੁਹਾਨੂੰ ਕਿ ਪਰਮੇਸ਼ਰ ਤੁਹਾਡੇ ਅੰਦਰ ਵੀ ਬੋਲੇ ਕਿਵੇਂ ਬੋਲੇ ਕਿਵੇਂ ਬੋਲਦਾ ਹੁੰਦਾ ਇਹ ਸਾਰਾ ਕੁਝ ਇਹ ਦੱਸਿਆ ਮੇਰੀ ਬਿਮਾਰੀ ਕਿਵੇਂ ਹਟੀ ਹੈ ਉਹ ਦੱਸਿਆ ਪਰਮੇਸ਼ਰ ਨਹੀਂ ਬੋਲੂਲ ਪੋਥੀ ਬੋਲੂਗੀ ਕਿਉਂ ਇਹ ਉਹ ਨਹੀਂ ਲਿਖਾਈ ਹੈ ਅਸੀਂ ਤਾਂ ਅੱਖਰ ਵੀ ਆਪਣੀ ਮਰਜ਼ੀ ਨਾਲ ਨਹੀਂ ਪਾਏ ਉਹਨਾਂ ਨੇ ਆਪਣੇ ਨਾਲ ਜਾਂ ਤੁਲਨਾ ਕੀਤੀ ਕੇ ਫਿਰ ਪੋਥੀ ਵੱਡੀ ਫਿਰ ਵੀ ਗੁਰਿਆਈ ਨਹੀਂ ਦਿੱਤੀ ਜਾ ਜਦ ਨਾਨਕ ਹੋਇਆ ਭਗਤ ਆਪਣੇ ਨਾਲ ਤੁਲਨਾ ਕਰਦੇ ਨੇ ਪੋਥੀ ਦੀ ਤਾਂ ਪੋਥੀ ਵੱਡੀ ਕਹਿੰਦੇ ਨੇ ਅਸੀਂ ਛੋਟੇ ਕਿਉਂ ਪੋਥੀ ਲਿਖਾਈ ਕਿਥੇ ਹੋਰ ਨੇ ਵੱਡੀ ਪਾਵਨ ਨੇ ਲਿਖਾਈ ਸਾ ਤੋਜ਼ੀ ਨੇ ਲਿਖੀ ਰਾਈਡਰ ਦੀ ਕਿਤਾਬ ਤੇ ਨੋ ਨੀ ਨੋ ਹੁੰਦਾ ਲਿਖਉਣ ਵਾਲੇ ਦਾ ਹੁੰਦਾ ਲਿਖਣ ਵਾਲੇ ਦਾ ਨੋਦੀ ਬਾਣੀ ਤਾਂ ਕਿਸੇ ਨੇ ਵੀ ਲਿਖੀ ਹੋਵੇ ਜਗਵੀਰ ਦੀ ਬਾਣੀ ਹੈ ਨਾਨਕ ਦੀ ਬਾਣੀ ਨੂੰ ਕੇ ਸਰ ਕਲ ਮੰਦ ਕਰਕੇ ਨਕਲ ਕਰਕੇ ਲਿਖ ਲਈ ਉਹਦਾ ਕੀ ਹੈ ਕੋਈ ਵੀ ਕਰ ਸਕਦਾ ਚਲੋ ਨੇ ਮੰਦ ਕੀਤੀ ਛੜ ਕੀਤਾ ਉਹ ਬਿਲਕੁਲ ਅਲੱਗ ਹੈ ਪਰ ਬਰਾਬਰ ਨਹੀਂ ਕਰ ਸਕਦਾ इस करके पोथी भी बराबरी गुरुवान ने लिखी पोथी परमेश्वर का खान है पर ये गुरु ने गास दिए गुरु परमेश्वर एको जानता है गुरु परमेश्वर एको जानता है कि परमेश्वर ने जो है सतगुरु दे थ्रू दे ਉਹ ਤਾਰ ਉੱਥੇ ਸਿੱਧੀ ਜੁੜਦੀ ਹੈ ਤਾਂ ਕਰੰਟ ਆਉਦੀ ਹੈ ਹਰ ਤਾਰ ਦੇ ਵਿੱਚ ਜੁਗ ਤੇ ਤ੍ਰੈਕ ਹੋ ਜਾਏ ਤਾਂ ਪਕਾ ਬੰਦ ਹੋ ਜੂਗਾ ਬਜਿੱਤੋ ਪੈਦਾ ਹੁੰਦੀ ਹੈ ਤੌਰ ਹੁਣ ਜੁੜੀ ਹੋਈ ਹੈ ਇਹ ਤਾਰ ਉੱਥੋਂ ਹੀ ਜੁੜੀ ਹੋਈ ਹੈ ਦੇ ਵਿੱਚ ਜਿੱਲੇ ਵੀ ਕਨੈਕਸ਼ਨ ਨੇ ਉਹ ਸਰਪਾ ਇੱਥੇ ਦੇ ਬਚਾਉਣ ਵਾਸਤੇ ਹੀ ਨੇ ਹੋਰ ਉਹ ਪੈਦਾ ਥੋੜੀ ਕਰ ਦੇਣਾ ਵੀ ਕੋਈ ਵੀ ਪਾਵਰ ਥੋੜੀ ਪੈਦਾ ਜਿਹੜੇ ਰਾਹ ਦੇ ਵਿੱਚ ਗ੍ਰਿਡ ਨਹੀਂ ਹੋਣੀ ਪਹਿਲਾਂ ਤੱਕ ਜਿਹੜੇ ਪਾਵਰ ਹਾਊਸ ਤੱਕ ਗੁਰਦੇਵ ਦੀ ਤਾਰ ਜੁੜਦੀ ਹੈ ਸੰਸਾਰ ਤੱਕ ਉਹ ਗਲਪ ਹੋਈ ਦੀ ਇਹ ਸੰਸਾਰ ਤੱਕ ਪਹੁੰਚੇ ਕਿਵੇਂ ਉਹ ਇੱਕ ਸਾਧਨ ਹੈ ਸਾਧਨ ਸਦਾ ਆਉਂਦਾ ਮਨ ਵਿੱਚ ਬੋਰ ਕੰਨਾ ਹੀ ਗੰਦਾ ਹੋਇਆ ਸਦਾਰ ਕਰਦੇ ਹਾਂ ਜੀ ਤੁਰੂਏ ਆਊਗਾ ਜੀ ਕੋਈ ਗੱਲ ਹਰ ਮਨ ਨੂੰ ਮੰਨਣੀ ਕਦੇ ਕੋਈ ਜਿਹਦੇ ਜਨੂ ਹੋਰ ਬਰਜੀ ਭਗਤ ਆਖਰ ਫਿਰ ਦਾਰ ਮਿਲਦਾ ਆਹ ਇਹਦੀ ਹਾਰ ਬਨਣ ਤੇ ਜਿੱਤ ਇਹ ਜਿੱਤ ਹਾਰ ਮੰਨ ਲਈ ਜਿੰਨਾ ਚਿਰ ਮਨ ਜਿੱਤਦਾ ਰਹੂਗਾ ਉਹਨਾਂ ਜੀਵਨ ਜੀਵਨ ਅਜਾਈ ਗੁੰਦਾਰ ਹੋਗਾ ਜਿੰਨਾ ਚਿਰ ਮਨ ਹੱਥ ਯੋਗ ਦੇ ਵਿੱਚ ਹਾਰ ਨਹੀਂ ਕਰਦਾ ਰਹੂਗਾ ਉਹਨੇ ਜਨਵ ਬੇਕਾਰ ਹੁੰਦੇ ਚਲੇ ਜਿੱਦਣੇ ਹਾਰ ਮੰਨ ਗਿਆ ਸੱਚ ਤੋਂ ਸੱਚ ਦੇ ਝੋਕਿਆ ਤਾਂ ਸਮਝ ਲੈ ਬਾਜੀ ਜਿੱਤੇ ਸਚਿਆਰਾ ਬੰਗੇ ਸੱਚ ਕਹਣ ਸਚਿਆਰਿਆਂ ਨੂੰ ਬੰਨ੍ਹਦੇ ਅੰਦਰ ਝੂਠਿਆਂ ਨੂੰ ਵੜਦੇ ਝੂੜਕੰਡਾ ਜੇ ਸੱਚ ਕਹਣਾ ਹੋਵੇ ਝੂੜਕੰਡਾ ਹਾਏ ਝੂੜਕੰਡਾ ਝੂਠ ਨਹੀਂ ਆਇਆ ਵੈਸੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਇਹ ਕਹਿਣ ਦਾ ਮਤਲਬ ਹੈ ਕਿ ਝੂਠਾ ਝੂੜਾ ਚੁੜਕੋਈ ਗੱਲ ਹੈ ਕੁਝ ਹੋਰ ਗੱਲ ਹੋ ਗਈ ਹਾਂਜੀ ਗੁਰਦੇਵ ਤੀਰਥ ਅਮਰਤ ਸरोवर ਗੁਰਦੇਵ ਤੀਰਥ ਅਮਰਤ ਸरोवर ਅਮਰਤ ਸरोवर ਗੁਰਦੇਵ ਆਪਣੇ ਆਪ ਵਿੱਚ ਤੀਰਥ ਤੀਰਥ ਚੇਤਨ ਹੁੰਦਾ ਤੀਰਥ ਜੜ ਨਹੀਂ ਜੜ ਜੜੇ ਤੀਰਥ ਨੇ ਜਿਹੜੇ ਜੜ ਵਸਤੂਆਂ ਨੇ ਤੀਰਥ ਨੇ ਅਸੀਂ ਬਣਾਏ ਹੋਏ ਉੱਥੇ ਵਸਤੂ ਵੀ ਜੜੇ ਸੁਧਧ ਹੋ ਸਕਦੀ ਹੈ ਸਰੀਰ ਜੜਾ ਹੈ ਉੱਥੇ ਜੜੇ ਸਰੀਰ ਨੂੰ ਜੜ ਮਾਇਆ ਦੇ ਜਿੰਨੇ ਤੀਰਥ ਨੇ ਉੱਥੇ ਮਾਇਆ ਹੀ ਧੋਤੀ ਜਾ ਸਕਦੀ ਹੈ ਸਰੀਰ ਹੀ ਧੋਤਾ ਜਾ ਸਕਦਾ ਬਾਹਰੋਂ ਪੂਰੇ ਤੀਰਥ ਚੇਤਨ ਨੂੰ ਚੇਤਨ ਨੂੰ ਜੇ ਧੋਣਾ ਤੀਰਥ ਲੋਚੇ ਤੂੰ ਸਾਧੂ ਲੋਚੇ ਆ ਲੋਚੂਗਾ ਚੇਤਨ ਨੂੰ ਰਚੂ ਜੇ ਚੇਤਨ ਨੂੰ ਧੋਣਾ ਤਾਂ ਤੀਰਥ ਵੀ ਚੇਤਨ ਚਾਹੀਦਾ सतवर देय तक की भरया है उधर उधर राम उद्दक ऐसा उपदेश है ऐसा रास है तो रास आ गया था? ऐसा रास है वो उपदेश है जेडी मलिनता सारी होई ले जांदी है छोड़ दंदा त्याग दंदा है तोती नहीं जांदी है नहीं करदा त्याग दंदा है, त्याग दंदा है। ਅਸਲ ਤੋਰੀ ਹੁੰਦਾ ਮਰ ਮਨ ਤੇ ਆਗਦਾ ਮੈਂ ਕਪੜਾ ਨਾ ਚਾਹੁੰਦਾ ਹੋਇਆ ਵੀ ਮੈਂ ਤਕਬੂਲ ਕਰਦਾ ਨਾ ਚਾਹੁੰਦਾ ਹੋਇਆ ਵੀ ਛੱਡ ਦਿੰਦਾ ਕਪੜਾ ਤਾਂ ਨਹੀਂ ਚਾਹੁੰਦਾ ਵੀ ਮੇਲਾ ਹੋ ਹੋ ਜਾਂਦਾ ਕਪੜਾ ਇਹ ਨਹੀਂ ਚਾਹੁੰਦਾ ਹੋਣੇ ਸਾਫ ਹੋ ਜਾਉਗਾ ਹੋ ਜਾਂਦਾ ਕਪੜੇ ਜੜਾ ਦੀ ਛਕੀ ਹੋਣੀ ਮਾਨ अपनी ਇੱਛਾ ਨਾਲ ਮੈਲਾ ਹੁੰਦਾ अपनी ਆਪਣੀ ਮਰਜ਼ੀ ਨਾਲ ਮਲੀਨਤਾ ਕਬੂਲ ਕਰਦਾ ਔਰ ਆਪਣੀ ਮਰਜ਼ੀ ਨਾਲ ਮਲੀਨਤਾ ਚਾਲ और ਚੇਤਨ ਦਾ ਨਿਰਭਰਤਾ ਆਪਣੀ ਮਰਜ਼ੀ ਨਾਲ ਕੋਈ ਭਾਂਡਾ ਝੂਠਾ ਨਹੀਂ ਹੋਇਆ ਆਪਣੀ ਮਰਜ਼ੀ ਨਾਲ ਸੱਚਾ ਨਹੀਂ ਹੋ ਸਕਦਾ ਝੂਠਾ ਵੀ ਅਸੀਂ ਕਰਦੇ ਬਾਅਦ ਕੇ ਸੱਚਾ ਵੀ ਕੁਝ ਕਿਤਾਬ ਨਹੀਂ ਜੜ ਸ਼ਰੀਰ ਕਦੇ ਨਹੀਂ ਜਾਉਦਾ ਵੀ ਮੈਂ ਤੀਰਥ ਤੇ ਨਾਵਾ ਇਹ ਇੱਥੇ ਨਾਵਾ ਇਹ ਮਨੂੰ ਲੋੜ ਦੀ ਲੋੜ ਹੈ ਨਹੀਂ ਲੋੜ ਅਸੀਂ ਮਹਿਸੂਸ ਕਰਦੇ ਆ ਕੋਈ ਤੁਸੀਂ ਨਾ ਆਇਆ ਹੈ ਗਰਮੀ ਹੈ ਨਾ ਹਲੀਏ ਚੇਤਨ ਜਿਹੜੇ ਲੋਕਾਂ ਨੇ ਜੜ ਤੀਰਥ ਬਣਾ ਲਏ ਉਹਨਾਂ ਦੀ ਬੁੱਧੀ ਵੀ ਜੜ ਆਪ ਵੀ ਪੱਥਰ ਨੇ ਉਹਨੂੰ ਪੱਥਰ ਕੇ ਪਾਪ ਵੀ ਜੜ ਉਹਨੇ ਮਨ ਪੱਥਰ ਨਹੀਂ ਪਰ ਸੈਲ ਪੱਥਰ ਨਹੀਂ ਉਹਨੂੰ ਪੱਥਰ ਨੇ ਸੈਲ ਪੱਥਰ ਮਾਇਆ ਵਾਲਾ ਪੱਥਰ ਇਹ ਚੇਤਨ ਹੁੰਦੇ ਹੋਏ ਵੀ ਪੱਥਰ ਨੇ ਆਪ ਚੇਤਨ ਹੈ ਪੂਜਾ ਜੜਦੀ ਕਰਦਾ आप चेतन ਹੈ तो पूजा ਜੜ ਨਹੀਂ ਕਰਦੇ ਫਿਰ ਜੜੇ ਆਪ ਚੇਤਨ ਦਾ ਜੈਸਾ ਪੂਜੇ ਸੇਵ ਦਾ ਸੋ ਜਿਹੜੀ ਆਗਿਆ ਕਰੀਏ ਵਾਲੇ ਨੇ ਆਗਿਆ ਕਰੀਏ ਧਰਮ ਸਾਰਿਆਂ ਦੇ ਵਿੱਚ ਇਹੀ ਪ੍ਰੋਸੀਜਰ ਚੱਲਦਾ ਸਿਰਫ ਇੱਕ ਧਰਮ ਹੈ ਜਿਹਨੇ ਟਿੱਪਣੀਆਂ ਕਰਕੇ ਗੱਲਾਂ वरदेव कौन है अमृत सरोवर तीर्थ है वरदेव कौन है वरदेव हरका दास कहले तीर्थ पड़ा और तीर्थ पड़ा होया तो हरका दास है तीर्थ से तो शरीर धो दे शरीर का किते धो लो ਸਾਬ ਗੋਜਨ ਦੇ ਬਲਕੇ ਦਰਿਆ ਦੇ ਪਾਣੀ ਨਾਲ ਤਾਂ ਸਰੀਰ ਸਾਫ ਹੁੰਦਾ ਨਹੀਂ ਹੈ ਕਮਿਟੀ ਆਪੀ ਉੱਥੇ ਵੀ ਨਾਲ ਕੇ ਦਾ ਪਾਣੀ ਨਾ ਆਇਆ ਦੇ ਪਾਣੀ ਨਾਲ ਜਿਆਦਾ ਸਾਫ ਹੁੰਦਾ ਹਰ ਕਦਾਸ ਮੰਨੂ ਤੋਂ ਹੁੰਦਾ ਬੰਦੀ ਮੈਲ ਕੱਟਦਾ ਹੈ ਸਰੀਰ ਦੀ ਕੱਟਦਾ ਪਰ ਉਹ ਵੀ ਪੂਰੀ ਨਹੀਂ ਕੱਟਦਾ ਕਿ ਪ੍ਰਲੋਕ ਤੁਸੀਂ ਤੀਰਥ ਦਾ ਬੜਾ ਹੈ ਇਹ ਸਰਪਦਾ ਗੁਰਦੇ ਤੀਰਥ ਅਮਰੋ ਹੀ ਫਟੇ ਆਓਗੇ ਪ੍ਰਲੋਕ ਦਾ ਤੀਰਥ ਹੈ ਹਰਕਾ ਦਾਸ ਹੈ ਗੁਰਦੇ ਤੀਰਥ ਇਹ ਹਰਕਾ ਦਾਸ ਗੁਰਦੇ ਤੀਰਥ ਨੇ ਨਾ ਦੋ ਤੀਰਥ ਹੋਗੇ ਉਹ ਤੋਂ ਦੀਤ ਨਾ ਹੈ ਹੈ ਤੀਰਥ ਵੱਡਾ ਹੈ ਹਰਕਾ ਦਾਸ ਬਾਹਰਲੇ ਦੀਤ ਇੱਥੇ ਵਾਲੇ ਜਿਹੜੇ ਤੀਰਥ ਨੇ ਇੱਥੇ ਵਾਲੇ ਤੀਰਥ ਉਹਦੇ ਨਾਲੋਂ ਬਿਹਤਰ ਉਹ ਵੀ ਤੀਰਥ ਹੈ ਵੱਡਾ ਹੋਇਆ ਉਹ ਹਰਕਾ ਦਾਸ ਦੇ ਇੰਤਰੀ ਹਰਕਾ ਦਾਸ ਨੇ ਤਾਥੇ ਰਾਮਣ ਧੋ ਦੇਣ ਇਹ ਤੀਰਥਲੇ ਬਾਹਲਾ ਸ਼ਰੀਰ ਧੋਣੇ ਜਾਂਦੇ ਜਾਂਦੇ ਤੇ ਮੰਨਤਾ ਮੈਂ ਮੇੜਾ ਸਭਾ ਨੇ ਤਰਮ ਦਾ ਕੰਮ ਹੈ ਮੰਨਦਾ ਸਾਰੇ ਤਰਮ ਹੋ ਜਾਈਏ ਸਾਰੇ ਬੰਦੇ ਨੇ ਮੰਨਦਾ ਸ਼ੁੱਧੀ ਕਰਨ ਹੈ ਤਰਮ ਦਾ ਪ੍ਰਯੋਜਨ ਹੈਡਾ ਟਾਰਗੇਟ ਹੈ ਤਰਮ ਨਾ ਬੰਦੇ ਸ਼ੁੱਧੀ ਕਰਨ ਫਿਰ ਪਾਣੀ ਨਾਲ ਤੋਤੇ ਤੇ ਸਰੀਰ ਮਨਸਤ ਕਿਵੇਂ ਹੋ ਜੂ ਨੁਕਸਾਨ ਕੀ ਹੋ ਉਹਦਾ ਤੀਰਥਾਂ ਦਾ ਨੁਕਸਾਨ ਕੀ ਹੋ ਉਹ ਦਾ ਤੋਤੇ ਵਾਂਗੂ ਅੱਛਾ ਨਹੀਂ ਇਹਨਾ ਤੀਰਥਾਂ ਦਾ ਨੁਕਸਾਨ ਵੀ ਹੋ ਗਿਆ ਜਦੋਂ ਇਹ ਕਹਿਦਾ ਭਈ ਪਾਪ ਕਰਕੇ ਪੁੰਨ ਕਰਕੇ ਕਰ ਦੇਣਾ ਤੀਰਥ ਸਨਾਨ ਕਰ ਲੈਣ ਦਾ ਪਾਪ ਕੱਟੇ ਜਾਂਦੇ ਨੇ ਤਾਂ ਪਾਪ ਕਰਨ ਦੀ ਛੂਟ ਲੇ ਜੜੂ ਜੇ ਕਹਿੰਦੇ ਬਾਪ ਲੈ ਨਹੀਂ ਸਕਦੇ ਤੀਰਸਤੇ ਵੀ ਫਿਰ ਸ਼ਾਇਦ ਉਹਦਾ ਫਾਇਦਾ ਜ਼ਿਆਦਾ ਹੁੰਦਾ ਪਰ ਉਹਨਾਂ ਨੇ ਤਾਂ ਤੀਰਸਤ ਨੂੰ ਦੁਕਾਨ ਬਣਾਉਣੀ ਸੀ ਤੇ ਤੀਰਸਤ ਦੁਕਾਨ ਨਹੀਂ ਸੀ ਬਣਦੇ ਉਹਨੂੰ লাভ ਨਹੀਂ ਸੀ ਹੁੰਦਾ ਆਪਣੇ ਲਾਭ ਖਾਤਰ ਇੱਕ ਗੱਲ ਜੋੜ ਲਈ ਕਿ ਤੀਰਸਤੇ ਆ ਕੇ ਦਾਨ ਕਰਕੇ ਬਾਪ ਕੱਟੇ ਜਾਂਦੇ ਨੇ ਉਹਨਾਂ ਦੀ ਦੁਕਾਨ ਤਾਂ ਚੱਲ ਗਈ ਲੋਕ ਡੂ ਤਰਮ ਡੂ ਹੋਂ ਤਾਂ ਡਰ ਬੋਲ ਵਾਲਾ ਬਣ ਗਿਆ ਇਹੀ ਗੱਲਾਂ ਅਸੀਂ ਫਿੱਟ ਕਰ ਲਈਏ ਉਹਨਾਂ ਦੀ ਆਪਣੇ ਗੁਰਦੁਆਰੇ ਆਪਣੇ ਦੀਰ ਤੋਂ ਅਸੀਂ ਵੀ ਡੁੱਬ ਗਏ ਉੱਥੇ ਜਿੱਥੇ ਉਹ ਡੁੱਬੇ ਕੀਤੀਆਂ ਕੀ ਉਹਨਾਂ ਲੋਕਾਂ ਨੇ ਉਹੋ ਜਿਹੇ ਸੁਭਾਅ ਲੋਕ ਆ ਗਏ ਲਾਲਚੀ ਲੋਭੀ ਮਾਇਆਧਾਰੀ ਉਹ ਆਵੜੇ ਧਰਮ ਚ ਪਾਰਟੀ ਕੋਈ ਵੀ ਬੜੇ ਉਹ ਉੱਥੇ ਹੋਈ ਜਾਈ ਆਵੜਦੇ ਨੇ ਕਿੰਨੀ ਵਧੀਆ ਪਾਰਟੀ ਬਣਾ ਲਓ ਸਿਆਸੀ ਸਭ ਆਵੜਦੇ ਨੇ ਉੱਥੇ ਫਿਰ ਰੋਕ ਕੇ ਰੱਖਣੇ ਪੈਂਦੇ ਨੇ ਚਾੜ ਦੇ ਵੀ ਆਦਮੀ ਅਸੇ ਤਰ੍ਹਾਂ ਪਾਰਟੀਕਲ ਦੇ ਲੈ ਤਾਂ ਗਾ ਬਗੜ ਗਿਆ ਤੇ ਸਾਰਾ ਗੰਦਾ ਵੜੂ ਸਾਰਾ ਦੁਨੀਆ ਪਰਦਾ ਗਲਦ ਸਿੱਖੀ ਸਭ ਚਾਵੜਿਆ ਪੰਜ ਪਿਆਰਿਆਂ ਵੇਲੇ ਜਿਹੜਾ ਕੱਢਿਆ ਸੀ ਗੰਦੇ ਕੱਢਿਆ ਸੀ ਬਾਹਰ ਉਹਨ ਕੀ ਕੱਢਿਆ ਥੜੀ ਉਹਦੀ ਵੀ ਤੇ ਘੱਲੂ ਘਾਰੇ ਦੇ ਵਿੱਚ ਵੱਡੇ ਜਿਹੇ ਫੁੱਪਰ ਹੀੜੇ ਕੋਲ ਜਿਹੜੀ ਜੰਗ ਹੋਈ ਹੈ ਕਹਿੰਦੇ ਨੇ 1 ਲੱਖ ਦੇ ਕਰੀਬ ਕੋਈ ਕਹਿੰਦਾ 50000 ਕੋਈ ਚਲੋ ਇਹਨੇ ਬਤਲਵਾ ਬੱਚੇ ਵਿੱਚ ਜਨਾਨੀਆਂ ਵਿੱਚ ਗੁੱਡੇ ਬੰਦੇ ਨਹੀਂ ਹੋਏ ਮਾਰੇ ਗਏ ਕੋਹ ਉਹ ਜਗਮੀ ਪਰ ਇੱਕ ਜੰਗ ਪਿਆਸੀ ਜਗਮੀ 14 ਸੀ ਗੱਲਾਂ ਕਰਦੇ ਜਾਂਦੇ ਨੇ ਦੋਹੇ ਦਿਨ ਸਵੇਰ ਆ ਗਈ। ਲੋਥੇ ਲੋਥੜਾ ਲੜਿਆ ਸੋ। ਪਰਮ ਦੀ ਲੜਾਈ ਹੁੰਦੇ ਚੜਦੇ ਏਡੀ ਬਈ ਬਹੁਤ anarch ਹੋਇਆ ਆ ਬਾਰਾ ਪਾਪ ਕੀ ਤੌ ਕੀ ਤੌ ਕੀ ਬੱਚੇ ਨੇ ਨਾ ਕੀ ਖਸੂਦ ਸੀ। ਜਨਾਨੀਆਂ ਨੇ ਇਹਨਾਂ ਦਾ ਕੀ ਖਸੂਦ ਹੈ ਬਜ਼ੁਰਗ ਨੇ ਕੁੜੇ ਨੇ ਇਹਨਾਂ ਦਾ ਕੀ ਖਸੂਦ ਸਭ ਸਿਖਰ ਦਾ ਨੇ। ਉੱਠਦੇ ਰਹਿ ਗਏ। ਉਹਨਾਂ ਨੂੰ ਕਹਿੰਦਾ ਕੀ ਸੱਚੀਆਂ ਬਿੱਲੀਆਂ ਗੱਲਾਂ ਕਰਦੇ ਹੈਂ ਦੀਆਂ ਕਲਾੜੀਆਂ ਗੱਲਾਂ ਕਰਦੇ ਹੁਣ ਨੀਵੇਂ ਇਹ ਉੱਪਰ ਸੱਜੇ ਚਲੋ ਹੁਣ ਉੱਪਰ ਸੱਜੇ ਹੋਰ ਨੀਵੇਂ ਦੁਬਾਰਾ ਉੱਪਰ ਇਹ ਗੱਲ ਤੋਂ ਉੱਡ ਜਾ ਕਹਿੰਦਾ ਹੈਂ ਦੀਆਂ ਗੱਲਾਂ ਕੀ ਕਰਦੇ ਗੱਲ ਖੋਟ-ਖੋਟ ਗਈ ਆ ਸ਼ੁੱਧ ਤਾਂ ਖਾਸਾ ਹੋਵੇ ਫਿਰ ਖੋਟ-ਖੋਟ ਛੱਡ ਗਿਆ ਜਿਹੜੇ ਉਹਦੇ ਨਾਲ ਦੇ ਸ਼ੇਰ ਹੋਏ ਉਹਨਾਂ ਨੂੰ ਖੋਟ ਤੋਂ ਕੁਝ ਪਰ ਲੱਗ ਘੋਟ ਆਵੜੀ ਸੀ ਤੋ ਤਾਂ डावੜਿਆ ਸੀ ਲੁਟੇਰਾ ਪਾਰਟੀ ਜਿਆਦਾ ਸੀ ਅਰੇ ਕਰੇ ਰੋਡਪੁਲ ਖਾਵੜੇ ਘਟਾ ਡੇਸਤਾਈ ਇਹ ਆਏ ਵੱਢਦੇ ਹੁੰਦੇ ਜਮਾਇਆ ਹੈਗੀ ਤਾਂ ਭੱਜ ਭੱਜ ਕੇ ਲੱਖਾਂ ਰੁਪਏ ਖਰਚ ਕਰਕੇ ਇਲੈਕਸ਼ਨ ਲੜਦੇ ਨੇ ਜੇ ਗੋਲ ਇੱਥੇ ਹੋਵੇ ਨਾ ਕੋਈ ਜਾ ਕੇ ਵੀ ਨਹੀਂ ਖੜਦਾ ਕਿਉਂ ਜਾਣਗੇ ਸਭ ਗੁੜ ਤੇ ਇਹ ਗੰਦਗੀ ਤੇ ਮੱਖੀ ਮਿਲਦੀ ਦੋ ਕਿਸਮ ਦੀ ਮੱਖੀ ਹੈ ਇੱਕ ਮੱਖੀ ਦਾ ਹੈ ਸਾਡੇ ਘਰਾਂ ਜਿਹੜੀ ਹੈ ਗੰਦਗੀ ਤੇ ਇਹ ਗੁੜ ਤੇ ਦੋ ਚੀਜ਼ਾਂ ਤੇ ਮਿਲਦੀ ਖੈਰ ਦੀ ਮੱਖੀ ਫਿਰ ਤੇ ਬਰਨੀ ਹੋਰ ਆਮਕੀ ਮੱਖੀ ਹੈ ਇਵੇਂ ਜਿਹੜੀ ਸੁਰਤ ਗੁਰਮੁਖੀ ਹੈ ਉਹ ਉਸ ਮੁਖੀ ਵਰਗੀ ਹੈ ਜਿਹੜੀ ਸਾਹ ਹੈ ਉਹਦਾ ਸੁਭਾਅ ਵੀ ਨਾ ਮੁਖੀ ਨਾਲੋਂ ਉਲਟ ਜੈਸੇ ਮਦ ਮਦਬ ਮੁਖੀਰਾ ਉਹਦਾ ਸਭ ਤੋਂ ਸੱਚ ਬਰੋ ਵਿੱਚ ਇਕਤਾ ਤੇ ਮੈਂ ਹੈਨੀ ਉੱਤੇ ਇੱਥੇ ਤੇ ਅੰਦਰ ਤੋਂ ਹਾਂਦੇ ਸੁਭਾਅ ਕਰਨਾ ਉਰਦਾ ਗੁਰੂ ਕੀ ਜਿਵੇਂ ਆਇਆ। ਇਹੋ ਦਾ ਗੁਰੂ ਕੀ ਜਿਵੇਂ ਆਇਆ। ਜਿੰਨਾ ਚਿਰ ਗੁਰਦਾਰਿਆਂ ਚ ਮਾਇਆ ਦਾ ਪ੍ਰਭਾਵ ਰਹੂਗਾ। ਉਹ ਨਾ ਜਿਹੜੇ ਸੁਧਾਰ ਵੀ ਕਰ ਸਕੋਗੇ। ਇਹ ਸੋਚਣਾ ਹੀ ਬੇਵਕੂਫੀ। ਮਾਇਆ ਦੇ ਪ੍ਰਭਾਵ ਚ ਸੁਧਾਰ ਕੋਈ ਨਹੀਂ। ਮਾਇਆ ਤਾਂ ਦੂਰੀ ਬੜੋੜੀ ਹੈ। ਔਰ ਮਾਇਆ ਦੇ ਨਾਲ ਪ੍ਰਚਾਰ ਹੋਊਗਾ। ਇਹ ਵੀ ਗਲਤ ਇਹ ਵੀ ਗਲਤ ਜਿਹੜੀ ਚੀਜ਼ ਦਾ ਅਸੀਂ ਵਿਰੋਧ ਕਰਦੇ ਹਾਂ ਉਹਦੇ ਸਾਰੇ ਨਾਲ ਪ੍ਰਚਾਰ ਕਰਦੇ ਜਿਹੜੀ ਚੀਜ਼ ਦਾ ਪਰਛਾਵਾਂ ਨਹੀਂ ਲੱਗਣਾ ਚਾਹੀਦਾ ਪਰਛਾਵੇ ਤੋਂ ਵਛੜਾਇਆ ਚਾਹੀਦਾ ਉਹ ਚੀਜ਼ ਦੇ ਸਹਾਰੇ ਨਾਲ ਅਸੀਂ ਕਹਿੰਦੇ ਗੁਰਬਤਾਂ ਪ੍ਰਚਾਰ ਉਹ ਜਿਹੜੇ ਸੋਚਦੇ ਨੇ ਸੋਚੇ ਗਲਤ ਅਸਲ ਤਾਂ ਮਾਇਆ ਧਾਰੀ ਨੇ ਉਹ ਦੂਜੀ ਹੋਂਦਾਂ ਨੂੰ ਦੇਖਦੇ ਨੇ ਕਿ ਉਹ ਆਏ ਕਰਦੇ ਨੇ ਨਾ ਦੂਜਿਆਂ ਬਤਾਦਾ ਹੈ ਹਮਾਇਤ ਹਾਰੀ ਜਾਂਦੀ ਉਹ ਤਾਂ ਗਿਣਤੀ ਵਧਾਉਣ ਵਾਲੀਆਂ ਮੱਤਾਂ ਨੇ ਇਹ ਗਿਣਤੀ ਘਟਾਉਣ ਵਾਲੀ ਮੱਤਾਂ ਬਤਾਉਣ ਵਾਲੀ ਗਿਣਤੀ ਘਟਾਉਣ ਵਾਲੀ ਮੱਤਾਂ ਵਧਾਉਣ ਵਾਲੀ ਨਹੀਂ ਹੈ ਕਿਹਨੇ ਇੱਥੋਂ 10-5 ਪਟਕ ਕੇ ਸੱਚਖੰਡ ਲੈ ਜੜੇ ਨੇ ਗਿਣਤੀ ਘਟ ਜਾਨੀਏ ਇੱਥੇ ਇਹ ਵਧਾਉਣ ਵਾਲੀ ਮੱਤ ਨਹੀਂ ਮੋਰਖ ਨੇ ਜਿਹੜੇ ਕਹਿਦੇ ਨੇ ਇਹਦੇ 2 4 10 ਜਿਹੜੇ ਪਟਕੇ ਇਥੋਂ ਲੈ ਜਾਣੇ ਨੇ ਸੱਚ ਖੜ੍ਹ। ਕਿ ਗਿਣਤੀ ਘਟ ਗਈ। ਇਹ ਬਿਲਾਉਣ ਵਾਲੀ ਕਿੱਥੇ ਮਾਤਾ ਤਾਂ ਘਟਾਉਣ ਵਾਲੀ ਹੈ। ਕੋ ਤੋਂ ਰੋਣ। ਸਾਰੇ ਸੰਸਾਰ ਛੱਡਣ ਨੂੰ ਤਿਆਰ ਕੋਈ ਨਹੀਂ। ਕਿੰਨੇ ਬੰਦੇ ਨੇ ਸੰਸਾਰ ਛੱਡਣ ਨੂੰ ਤਿਆਰ? ਉਹ ਇਹ ਤਾਂ ਬੰਦਾ ਤਾਂ ਸਾਰੇ ਹੀ ਮਨ ਤੋਂ ਡਰਦਾ ਜਣਾ ਨਹੀਂ ਚਾਹਦਾ ਇੱਥੇ ਤੇ ਇਹ ਹੈ ਜੀਵਨ ਮੰਨ ਲੋ ਪਹਿਲਾਂ ਮਰਨ ਕਬੂਲ ਕਰਨਾ ਐ ਤੋਂ ਛੱਡ ਜਾਣਾ ਇਹ ਸੰਸਾਰ ਇਹ ਹੀ ਮੰਨਣਾ ਕਬੂਲ ਕਰ ਲੈ ਉਹ ਅੱਜ ਤੋਂ ਵੀ ਛੱਡਿਆ ਸੰਸਾਰ ਤਾਂ ਹੀ ਵਾਯੂ ਦੀ ਦੌੜ ਤੋਂ ਉਹ ਕਿਉਂ ਹਟੂਗਾ ਹਟਦਾ ਹੀ ਨਹੀਂ ਦੈਨਿਆ ਅੱਡਲ ਰਹਿ ਕੇ ਫਾਂਸੀ 'ਚ ਮਾਰੇ ਦੌਰ ਛੱਡੀ ਹੋਈ ਹੈ ਅਜੇ ਫਾਂਸੀ ਬਹਾਲ 20 ਸਾਲੀ ਤਬਦੀਲ ਹੋ ਗਈ ਜਦ ਮੈਂ ਦੌਰ ਫੇਰਾਵੜੇ ਭਾਇਦੀ ਦੌਰ ਤੋਂ ਬਾਹਰ ਨਿਕਲਣਾ ਹੀ ਬਹੁਤ ਬਹੁਤ ਬਹੁਤ આધી पहला અગલા જનમ પહેલા હી ઓરતીદાન પુણ અગલા જનમ ਦਾ બીજ બીજ દી પુણ ઓર પાપ અગલે જનમનો બીજ પુણ ਵੀ બલકે પાપ ਦਾ બીજ હેડી પુણ બીજ અગલે જનમ પુલ પુણ અસી બીજ દે ઓપન બીજ દે ઓ ਬੀਡੀ ਆ ਸਿੱਪੋਨ ਨੂੰ ਯਸ ਕਰਕੇ ਗਾਹ ਮਿਲੂਗਾ ਅੜੇ ਹੋੜ ਤਾਂ ਕਾਲ ਖਾਦੀਏ ਪਿਛਲੇ ਸਾਲ ਦੀ ਸੀ ਹੋੜ ਆਈਗੀ ਅਗਲਾ ਸਾਲ ਪਾਸ ਤੇ ਆਈਏ ਸਾਲ ਪਰ ਗਰੰਟੀ ਨਾ ਹੋਗੀ ਤੁਸੀਂ ਇੱਕ ਜੀਵਨ ਦੀ ਗਰੰਟੀ ਤਾਂ ਦੋ ਆ ਹੁਣ ਵਿਚੋੜ ਵੇਚਦੇ ਉਹ ਕਾਦੇ ਵਾਸਤੇ ਵੇਚਦੇ ਅਗਲੇ ਸਾਲ ਗਰੰਟੀ ਬੱਲੇ ਕਾਦੀ ਐ ਜਿਵੇਂ 6 ਮਹੀਨੇ ਜੋੜਿਆ ਜੋ ਜਦੋਂ ਤਾਂ ਕੋਈ ਕੰਮ ਨਹੀਂ ਲਾ ਰਿਹਾ ਸੀ ਸਾਤ ਜਵੜੀ ਤੱਕ ਰਾਤੀ ਪਹਿਲੇ ਲੇਖੂ ਠੀਕ ਹੈ ਕੰਮ ਇਹ ਸੇ ਕਰਕੇ ਰਾਜਾ ਇਸ ਜਨਮ ਨੂੰ ਇਸ ਧਰਮ ਨੂੰ ਨਹੀਂ ਤਬੂ ਕਰਦਾ ਕੇ ਧਰਮ ਦਾ ਗ੍ਰੁੱਤੀਗ ਰਾਜਾ ਵੀ ਇਹ ਤਾਂ ਸਾਰੇ ਲੋਕ ਖਰਾ ਕੰਮ ਕਰਦੇ ਹਰ ਜਾਣਗੇ ਇਹੀ ਇਤਰਾਜ ਕਹਿੰਦਾ ਕਿ ਉਹ ਕਹਿੰਦਾ ਕਈ ਵਾਰ ਅਸੀਂ ਸ੍ਰਿਸ਼ਟੀ ਸਾਜੀ ਰਚਨਾ ਰਚੀ ਇਹ ਸਾਰੇ ਬੰਦੇ ਨੂੰ ਗਵਾਡ ਦਿੰਦਾ ਜਾ ਕੇ ਸਾਡੇ ਕੋਲ ਸੋਦਾ ਹੀ ਨਹੀਂ ਸਾਰੇ ਮੁਕਤ ਹੋ ਜਾਂਦੇ ਨੇ ਸ੍ਰਿਸ਼ਟੀ ਖਤਮ ਹੋ ਜਾਂਦੀ ਅਸੀਂ ਕੀ ਕਰੀਏ ਸਾਡੀ ਬੰਦਾ ਹੀ ਨਹੀਂ ਹੋਈ ਇਹ ਐਸੀ ਸਖਿਆ ਦਦਾ ਕਹਿੰਦਾ ਬਾਹਰ ਉਹ ਕੰਮ ਨਾ ਕਰਿਓ ਹੱਜ ਹੋ ਗਏ ਇਹ ਸਾਰੇ ਤੋਂ ਕੰਮ ਨਹੀਂ ਕਰਨਾ ਬਹਿ ਜਾ ਟਿੱਕੇ ਜਿਹਨੇ ਪੈਦਾ ਕੀਤਾ ਕੋ ਪੈਦਾ ਕਰਨ ਨਾਲ ਕਹਿੰਦਾ ਪੈਦਾ ਮੈਨੂੰ ਤਾਂ ਕਰਨਾ ਪੈਣਾ ਮੇਰੀ ਡਿਊਟੀ ਹੈ ਮਾਰਨ ਨਾਲ ਕਹਿੰਦਾ ਮੈਨੂੰ ਤਾਂ ਮਾਰਨਾ ਕਰਨੀ ਪੈਣੀ ਹੈ ਮੇਰੀ ਡਿਊਟੀ ਹੈ ਮਾਰਨ ਨਾਲ ਕਹਿੰਦਾ ਮੈਨੂੰ ਤਾਂ ਮਾਰਨਾ ਪੈਣਾ ਮੇਰੀ ਡਿਊਟੀ ਹੈ ਉਹ ਲੋਗ ਗਾ ਰਹੇ ਹੋਏ ਦਸੰਦਾ ਵੀ ਨਾ ਕਦਰਾਂ ਦੀ ਡਿਊਟੀ ਹੈ ਤਿੰਨਾਂ ਦੀ ਇਹਨਾਂ ਨੂੰ ਇਹਨਾਂ ਬਰਾਉਰੇ ਇਹ ਇੱਕ ਅੱਤਿਓ ਗੱਲ ਹੈ ਕਦੇ ਸਾਡੇ ਗੱਲ ਸੁਣ ਟਿੰਡ ਬਾੜੀ ਅਸੀਂ ਨਹੀਂ ਇਹ ਹੈਗੀ ਹੈ ਸਾਸਤ੍ਰਾਂ ਚ ਹਾਲਾਂਕਿ ਜੇ ਫਰਜੀ ਅਸਾਕੀ ਹੈ ਕਿਹੜੇ ਪਰਮੇਸ਼ਰ ਕੋ ਕੌੜ ਗਿਆ ਕੀ ਗੱਲ ਹੈ ਲੇਕਿਨ ਇੱਕ ਸਾਖੀ ਤਾਂ ਹੈ ਨਾ ਕਿਸੇ ਸਿਆਣੇ ਬੰਦੇ ਦੀ ਲਿਖੀ ਹੋਈ ਉਹ ਲਿਆ ਨਾਰਦ ਆ ਕੀ ਕਹਿੰਦੇ ਨੇ ਇਹ ਕੀ ਕਹਿੰਦੇ ਨੇ ਇਹ ਕਹਿੰਦੇ ਨੇ ਸਾਰੇ ਲੋਕਾਂ ਨੂੰ ਸਾਡੇ ਤੋਂ ਭੜਾ ਦਿੰਦਾ ਸਾਰਾ ਭੇਦ ਭੋਲ ਦਿੰਦਾ ਖੜਦਾ ਸਾਰਾ ਭੇਦ ਖੋਲ ਦਿੰਦਾ ਲੋਕ ਭੇਤੀ ਹੋ ਜਾਂਦੇ ਨੇ ਉਹ ਕੰਮ ਨਹੀਂ ਕਰਦਾ ਉਹ ਜਾਂਦੇ ਜਾਣਦੇ ਫਿਰ ਜਾਂਦੇ ਨੇ ਸਾਰੇ ਇਹਦਾ ਇਹਦਾ ਕੰਮ ਹੈ ਜਾਲ ਲਾਉਣਾ ਕਰਦੇ ਮੈਂ ਨੇ ਮੈਂ ਤੁਸੀਂ ਮੈਨੂੰ ਕਾਹਦੇ ਖਾਤਰ ਪੈਰਾ ਕੀਤਾ ਪੈਰਾ ਕੀਤਾ ਆਪਣਾ ਕਰਨ ਮੈਂ ਆਪਣਾ ਕਰਦਾ ਤੁਸੀਂ ਮੈਨੂੰ ਜਿਹੜੇ ਕੰਮ ਖਾਤਰ ਪੈਰਾ ਕੀਤਾ ਵੇ ਆਪਣਾ ਮੰਦਰੀ ਨਾ ਕਰਦਾ ਮੈਂ ਆਪਣਾ ਕਰਦਾ ਆ ਆਪਣਾ ਖਰੀ ਜਾਂ ਤੈਨੂੰ ਨਾ ਕਰਦਾ ਇਹਦੇ ਚ ਲੜਾਈ ਕਹਦੀ ਹੈ ਇਸ ਰਾਜ ਕਹਦੀ ਹੈ ਕੱਲੇ ਫਿਰ ਸ੍ਰਿਸ਼ਟੀ ਘਰ ਚੱਲੂ ਕੱਲੇ ਤਾਂ ਥੋੜੀ ਈ ਪਾਵਰ ਦਿੱਤੀ ਹੋਈ ਹੈ ਜਿੰਨੇ ਤੁਸੀਂ ਗੱਲ ਕਹੀ ਅਸੀਂ ਆਪਣੀ ਡਿਊਟੀ ਕਰਦੇ ਫਿਰ ਐਂ ਕਰੋ ਤੂੰ ਜਿਆਦਾ ਤਿੰਨਾਂ ਲੋਕਾਂ ਨੂੰ ਲੌਕ ਸਕਦਾ ਪਰ ਇੱਕ ਘੜੀ ਦੇ ਬਾਅਦ ਕਿਤੇ ਰੁਕ ਨਹੀਂ ਸਕਦਾ ਉਹਨੂੰ ਤਿੰਨਾਂ ਲੋਕਾਂ ਜਾਣ ਦੀ ਪਾਵਰ ਹੈ ਇਹਨੂੰ ਇੱਕ ਇੱਕ ਲੋਕ ਦੀ ਜਾਣ ਦੀ ਸ਼ਿਵਪੁਰੀ ਤੋਂ ਬਾਹਰ ਸ਼ਿਵ ਨਹੀਂ ਜਾ ਸਕਦਾ ਬ੍ਰਹਮਪੁਰੀ ਤੋਂ ਬਾਹਰ ਬ੍ਰਹਮ ਨਹੀਂ ਜਾ ਬ੍ਰਹਮਾ ਨਹੀਂ ਜਾ ਸਕਦਾ ਵਿਸ਼ਨਪੁਰੀ ਤੋਂ ਬਾਹਰ ਵਿਸ਼ਨ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਇਹ ਤਿੰਨਾਂ ਹੀ ਜਾ ਸਕਦਾ ਕਿੰਨਾ ਇਹਦੇ ਕੋਲ ਪਾਵਰ ਜਿਆਦਾ ਦਿੱਤੀ ਹਾਂ ਉਹ ਕਹਿੰਦਾ ਬਰੂਪੁਰੀ ਉਹ ਕਹਿੰਦਾ ਆ ਉਹ ਹੈ ਉਹ ਕਾਲਾ ਉਹ ਤਿੰਨਾ ਕੁੜੀਆਂ ਦੀ ਗੱਲ ਦੱਸਦੇ ਹਾਂਜੀ ਬਸ ਕਹਿੰਦੇ ਹੁਣ ਉਹਨੂੰ ਇੰਨਾ ਟਾਈਮ ਮਿਲਦਾ ਨਹੀਂ ਉਹ ਪ੍ਰਦੇਸ ਕਰਨ ਦਾ ਇਹਨਾਂ ਚਿਰ ਲੋਕ ਸਮਝ ਨਹੀਂ ਸਕਦੇ ਪੱਟ ਇਹਨਾਂ ਚਿਰ ਬੰਦੇ ਨਹੀਂ ਪੱਟ ਹੁੰਦੇ ਇਸ ਕਰਕੇ ਉਹਨੂੰ ਵਧੀਆ ਕੰਮ ਚੱਲਦਾ ਉਹ ਤੱਕ ਨਹੀਂ ਚੱਲ ਵੀ ਨਹੀਂ ਤਾਂ ਹਰਦਾਦ ਕਰ ਦਿੰਦੇ ਤੇ ਬੜਾ ਜਦੇ ਫੈਕਰੀ ਭੇਜ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਜੇ ਸਪਰਸ਼ ਕਰੇ ਸਤਿਗੁਰ ਦਾ ਜੇ ਮਲਾਪ ਕਰੇ ਮਨ ਉਹਦੇ ਨਾਲ ਤਾਂ ਸਾਰੇ ਮਨ ਲਕਸ਼ਯ ਦਿਓ ਅਮਰਦ ਸरोवर ਹਾਂਜੀ ਗੁਰਦੇਵ ਤੀਰਥ ਅਮਰਦ ਸरोवर ਗੁਰ ਗਿਆਨ ਮੰਜਨ ਔਰ ਪਰੰਪਰਾ ਗੁਰ ਗਿਆਨ ਮੰਜਨ ਨਹੀਂ ਹੁੰਦਾ ਮੱਜਨ ਹੁੰਦਾ ਹੈ ਮੱਜਨ ਮੰਜਨ ਜਿਹੜਾ ਹੈਗਾ ਉਹ ਦੰਦਾਂ ਨੂੰ ਕਰਨ ਵਾਲਾ ਹੁੰਦਾ ਹੁੰਦਾ ਪਿੰਡੇ ਨੂੰ ਮੜਨ ਵਾਲਾ ਮੱਜਨ ਆ ਜਿਹੜਾ ਸ਼ਰੀਰ ਤੁੰਨਾ ਕਰਦਾ ਜਿਹੜਾ ਨਾ ਹੁਣ ਕਹਿੰਦੇ ਨੇ ਮੰਜਲ ਜੀ ਜਿਹੜਾ ਇਸ਼ਨਾਨ ਉਹ ਲੁਕੀ ਲਾ ਕੇ ਬਾਹਰ ਨਿਕਲੇ ਇਸ਼ਨਾਨ ਇਹ ਜਿਹੜੇ ਸ্নান ਸ্নান ਕਹਿੰਦੇ ਨੇ ਸ্নান ਧਾਪੜੇ ਹੈ ਤੇ ਤਾਂ ਹੀ ਜ਼ਰੂਰ ਵਾਏ ਲਾ ਕੇ ਨਿਕਲੇ ਆਉਂਦੇ ਤਾਂ ਫਿਰ ਗੰਦਗੀ ਪਿੰਡੇ ਦੀ ਤਾਂ ਕਹਿੰਦੇ ਨੇ ਪਰ ਇਹ ਸਰੋਵਰ ਚ ਮੱਧਨ ਕਰਕੇ ਨੋ। ਅੱਛਾ। ਗਿਆਨਮਈ। ਪਾਗਰ ਸਰੋਵਰ ਮੱਧਨ ਕਰੂ। ਉਹ ਪਰੰਪਰਾ। ਕਰ ਲਈ ਸਰ। ਦੋ। ਮੋੜ ਕੇ ਨੋ। ਬਾਗ ਮੱਧਨ ਸਾਧੂ। ਤੋਂੜੇ ਚ। ਮੜ ਕੇ। ਬਣ ਤੇ ਬਣ ਤੇ ਮਰਲੀ ਤੇ। ਹੋ ਲੱਗ ਜੂਗੀ ਗੱਲਾ। ਨਾ ਹੋਊਗੀ। ਹੋਊਗਾ। ਪੈਦਾ ਬਜੇ ਜਿਹੜੀ ਮੈਲ ਜੰਮੀਓ ਤਾਂ ਹੋਰ ਪੈ ਗਈ ਹੋਈ ਜਮਿਆਂ ਦੀ। ਕੀ ਪੈਗੇ ਹੋਰ ਗੱਲੇ ਪੜਨੇ ਤੇ ਕਰਤਾ ਸਭ ਪਾਪ ਹਰਤਾ ਗੁਰਦੇਵ ਕਰਤਾ ਸਭ ਪਾਪ ਹਰਤਾ ਜਿਹੜਾ ਕਰਤਾ ਕਰਤਾ ਅਸਲ ਦੇ ਵਿੱਚ ਕਰਤਾ ਪੁਰਖ ਗੁਰਦੇਵ ਨੂੰ ਕਿਹਾ ਹੋਇਆ ਗੁਰਦੇਵ ਕਰਤਾ ਗੁਰਦੇਵ ਅਸਲ ਕਰਤਾ ਹੈ ਕਰਤਾ ਜਿਹੜਾ ਹੈਗਾ ਉਹ ਜਿਹੜਾ ਦੇਖ ਰਹੇਗਾ ਉਹ ਹੈ ਗੁਪਤ ਕਰਤਾ ਵਰਦੇ। ਸਰੀਰ ਬਣਾਇਆ ਜੀਵ ਆਤਮਾ ਨੇ ਬਣਵਾਇਆ ਦਲੇ। ਤੰਦਰਲੇ ਨੇ ਆਪਣੀ ਮਰਜ਼ੀ ਨਾਲ ਹੀ ਬਣਵਾਇਆ। ਪਰਮੇਸ਼ਰ ਦੀ ਮਰਜ਼ੀ ਨਾਲ ਇਹ ਜੋ ਜਿਹੜੀ ਜੁਗ ਹੁਕਮ ਤੇ ਬੈਠੇ ਹੁਕਮ ਦੇ ਨਾਲ ਉਹ ਹੁਕਮੀ ਬੰਦਾ ਹਕੂਮੀ ਬੰਦਾ ਜਦ ਬੋਲੇ ਉਹਨੇ ਕਹਿੰਦਾ ਕਿ ਹੁਕਮੀ ਬੰਦਾ ਇਹ ਜਿਹੜਾ ਜੀਵ ਹੈ ਇਹ ਹਕੂਮੀ ਬੰਦਾ ਇਹ ਤਾਂ ਹਾਕਮ ਹੈ ਇਹ ਤਾਂ ਆਪਣੇ ਵਰਗਾ ਹੋ ਗਿਆ ਹੁਕਮੀ ਹੈ ਤਾਂ ਹੀ ਦੇਖ ਉਹ ਅੰਦਰਲਾ ਹੁਕਮੀ ਬੰਦਾ ਉਹ ਦੇ ਰਿਹਾ ਹੁਕਮ ਹੁੰਦਾ ਆਪ ਤਾਂ ਬੋਲਣੇ ਨਹੀਂ ਜਾਣਦਾ ਤੂੰ ਤਾਂ ਕੋਈ ਬਲਾਵੈ ਤਾਂ ਬੋਲ ਤਾ ਇਸ ਕਰਕੇ ਉਹਦੇ ਤੇ ਭਰੋਸਾ ਕਰਦੇ ਆਂ ਬੁਲਾਇਕ ਬੋਲ ਇਹਨੇ ਤਾਂ ਬੋਲਣੇ ਹੀ ਜਿਆਦਾ ਜਿਆਦਾ ਬੁਲਾਉਂਦਾ ਇਹਦੇ ਕਰਦਾ ਭਰੋਸਾ ਇਹ ਵੀ ਨੋ ਇਹ ਬੋਲੇ ਤੇ ਬਾਅਦ ਵੀ ਚੰਗੀ ਗੱਲ ਹੈ ਵਿਚਾਰ ਲਵੇ ਵੀ ਤੇ ਗਲਤ ਬੋਲਿਆ ਗਿਆ ਬਾਅਦ ਵਿੱਚ ਜੋ ਕਹੇ ਠੀਕ ਹੈ। ਜੇ ਉਹ ਤਾਂ ਕੇ ਗਲਤ ਉਹ ਵੀ ਠੀਕ ਕਰੂ ਚਾਹੇ 50 ਜਾਂ ਬੁਲਾ ਗੁਰਦੇਵ ਕਰਤਾ ਸਭ ਪਾਪ ਕਰਤਾ ਗੁਰਦੇਵ ਨੇ ਕਿਹਾ ਪਰ ਬਾਹਰ ਜੋ ਵੀ ਕਦੇ ਉਹ ਤੇ ਪ੍ਰਾਪਰਟੀ ਗੀਆਂ ਨੇ ਇੱਕ ਆ ਚੰਨ ਲੋਕ ਦੇ ਅੰਦਰ ਲਿਖਦੀ ਗੱਲ ਆ ਚੰਨ ਲੋਕ ਦੇ ਅੰਦਰ ਇੱਕ ਬਣਦਾ ਨਹੀਂ ਸਿੱਖ ਬਣ ਕੇ ਹੀ ਚੌਥੇ ਲੋਕ ਜਾਉਂਗਾ ਇਸ ਤੋਂ ਬਾਅਦ ਚੌਥੇ ਲੋਕ ਜਾਉਂਗਾ ਇਸਕਾ ਤਾਕਤ ਤਾਂ ਇਹ ਲੋਕ ਦੇ ਵਿੱਚ ਹੀ ਆ ਕਿ ਖਜ਼ਾਨੇ 'ਚ ਬਹਿ ਗਿਆ ये का खजाने में सब उड़ गया वो फिर एक तरह से। दी होत ता शरीर टपईया पिछाड़ लो। जेना जर शरीर है वो तो बात का नहीं पिछाड़ संधार संधि निशान। संधार तो कोई मुश्किल। भूज जेना थोड़ी जे ऊपर है अलग है। भूज है जो बीच दे चीज है। फिर समुंदर है। दया जी डी पितद रहया है। ਜਿੰਨਾ ਜਿਹਾ ਸਰੀਰ ਨੂੰ ਜਦ ਬਥਰੇ ਬਹੁਤ ਪਾ ਜੀ ਵੀ ਤੇ ਬਾਤ ਕੋਈ ਇਹਦਾ ਸਬੂਤ ਪਰ ਆਪਣੇ ਕੋਈ ਸਬੂਤ ਨਾ ਆਖ ਨਾ ਦੇਖ ਸਕਦੇ ਇਹਦਾ ਕੋਈ ਪਛਾਣ ਨਾ ਕੋਈ ਕਿਸੇ ਨੇ ਵੀ ਨਹੀਂ ਉਹਦੀ ਕੀ ਸੂਏ ਨਹੀਂ ਕਿਹੜਾ ਹੈ ਆਤਮਾ ਵੀ ਹੈ ਨਹੀਂ ਆਪਣੇ ਕੋਲ ਕੋਈ ਸਬੂਤ ਹੈ ਨਹੀਂ ਆਤਮਾ ਦਾ ਆਪਣੇ ਕੋਲ ਕਿੱਥੇ ਗਈ ਆ ਕਿੱਥੇ ਆਈ ਕੀ ਹੋਇਆ ਕੀ ਰਹਾ ਹੋਇਆ ਜੇ ਆਪਾਂ ਮਨ ਵੀ ਲਈਏ ਉਹਨੂੰ ਇਸ ਕਰਕੇ ਇਹ ਕਾ ਜਿਹੜਾ ਹੈਗਾ ਇਹ ਤਾਂ ਉਦੋਂ ਤੱਕ ਹੈ ਜਦੋਂ ਤੱਕ શરીર ਮਾਇਆ ਦੇ ਨਾਲ ਹੋ। ਬਸ ਮਾਇਆ ਦੇ ਪਰੇ ਤਾਂ ਇਹ ਕਹਤੇ ਹਨ। ਮਾਇਆ ਦੇ ਪਰੇ ਸਤ ਸੰਗਤ ਕੈਸੀ ਜੀ ਹੈ? ਕੈਸੀ ਹੁੰਦੀ ਹੈ ਸਤ ਸੰਗਤ? ਕਿਨੂ ਸਤ ਚਾਹੀਦਾ ਜਾਣिए ਦਾ ਮਤਲਬ ਮੰਨਣਾ ਕਿਨੂੰ ਚਾਹੀਦਾ ਹੈ ਜਾਣੇ ਦਾ ਮਤਲਬ ਮੰਨਣਾ ਹੈ ਸਤ ਸੰਗਤ ਕੈਸੀ ਹੁੰਦੀ ਹੈ ਕਿਨੂੰ ਸਤ ਸੰਗਤ ਜਾਣੀਏ ਕਿਨੂੰ ਮੰਨੀਏ ਸਤ ਸੰਗਤ ਦਿੱਤੇ ਹੀ ਕੋ ਨਾਮ ਕੇਵਲ ਨਾਮ ਦੀ ਵਿਆਖਿਆ ਹੋਵੇ ਉਸ ਹਿਰਦੇ ਉਹ ਹਿਰਦਾ ਸੱਚ ਨਾਲ ਜੁੜਿਆ ਹੋਇਆ ਹੈ ਉਹ ਮਨ ਸੱਚ ਨਾਲ ਜੁੜਿਆ सत संगत ज्यादा ज्यादा मान बुद्धि सचना से जुड़े हुए सचते के ही ਜੋ ਬੁੱਧ ਬਣਦੀ ਹੈ ਸ਼ਾਂਤ ਬਣਦੀ ਹੈ ਸਿੱਧੀ ਪ੍ਰਾਪਤ ਸੋਝੀ ਪ੍ਰਾਪਤ ਹੁੰਦੀ ਹੈ ਉਹਨੂੰ ਸੱਤ ਸਿੱਧ ਬੁੱਧ ਸਿੱਧ ਦਾ ਬੁੱਧ ਪੂਰੀ ਸੋਝੀ ਵਾਲੀ ਪੂਰੇ ਗਿਆਨ ਵਾਲੀ ਜਿਹਨੂੰ ਸਾਰੀ ਗੱਲ ਦਾ ਸੋਝੀ ਹੈ ਸਿੱਧ ਦਾ ਬੁੱਧ ਸਜੀ ਬੁੱਧ ਵਿੱਚ ਸਾਰੀ ਸੋਝੀ ਹੈ ਜੇ ਸੋਜੀ ਨਹੀਂ ਹੈ ਤਾਂ tujhe sujanta kuch nahi suveer kehda etho lage naam te aal dol gayi soji hi naam hai tujhe sujanta kuch kach nahi tenu sujda da kuch hai aal batal vaar tu ਤੂੰ ਪਤਾ ਕੀ ਬੋਲਦਾ ਬੱਚੇ ਦੇ ਟੀਚਰ ਹੈਗਾ ਪੜਾਉਂਦਾ ਹੈ ਚੌਥੀ ਦੇ ਵਿੱਚ ਕੀ ਸਵਾਲ ਕਰ ਦੇਣਾ ਦੇ ਵਿੱਚ ਕੀ ਸਵਾਲ ਕਰ ਲੜਦੇ ਤੁਸੀਂ ਕਿਹੜਾ ਆਉਦਾ ਜਵਾਬ ਨਹੀਂ ਹੈ ਇਹਦੇ ਸਵਾਲ ਦਾ ਸਵਾਲ ਕਰਨ ਵਾਲਾ ਤਾਂ ਪ੍ਰਾਇਮਰੀ ਦੇ ਬੱਚੇ ਹੁੰਦੇ ਉਹਦੇ ਸਮਝ ਜੇ ਸੋਝੀ ਹੋਵੇ ਤਾਂ ਜੇ ਸੋਚੀ ਦੀ ਕਮੀ ਹੋਵੇ परेदर उदक जा부가 वगलाचा कुंक्या पास समजायला गळली के तो पता लागले सोच जी दी कवी हो सोच जी ही नाम ड्रामा सोजी है कोई सोची ਸੋਜੀ ਹੋਸੀ ਸੋਜੀ ਅੰਦਰੋਂ ਪੈਦਾ ਹੁੰਦੀ ਗਿਆਨ ਬਾਹਰੋਂ ਮਿਲਦਾ ਲਗ ਭੀ ਲਿਆ ਜਾ ਸਕਦਾ ਗਿਆਨ ਪ੍ਰਾਪਤ ਸੋਜੀ ਆਇਆ ਉਹ ਲਿਆ ਉਹ ਗਿਆਨ ਸੋਜੀ ਹਰ ਗੱਲ ਬਹੁਤ ਫਰਕ ਹੈ ਹਾਂ ਕਿ ਗੁਰ ਗਿਆਨ ਅੰਦਰੋਂ ਮਿਲਿਆ ਹੈ ਗੁਰਦੇਵ ਦੀ ਗੱਲ ਕੋ ਜਸ ਜਨਤਾ ਕੁਛ ਨਹੀਂ ਪਹਿਰਾਵਾ ਦੇਖੀ ਹੋਵੇ ਦੇ ਪਹਿਰਾਵਾ ਦੇਖੀ ਤੂੰ ਤਾਂ ਇਹ ਦੇਖ ਲੈ ਅਭੀ ਸੰਤ ਹੈਗਾ ਮਾੜਾ ਭੜੀਆ ਕਪੜੇ ਪਾਏ ਨੇ ਵਿੱਚਾ ਬਹਾਵ ਦਾ ਹੋ ਗਿਆ ਜੇ ਸੋਚੀ ਹੁੰਦੀ ਪ੍ਰਭਾਵਤ ਕਿਉਂ ਹੁੰਦਾ ਤੈਨੂੰ ਸਮਝ ਹੁੰਦੀ ਜੇ ਜੋਰੀ ਹੁੰਦਾ ਤਾਂ ਬਲੌਰ ਨੂੰ ਹੀ ਰਖਵੇਂ ਮੰਨ ਲੈਂਦਾ ਉਹ ਤਾਂ ਕੱਜਨ ਕੇ ਕੁੰਡਲ ਬਲੇ ਕਿਉਂ ਬਣਾਇਆ ਰਿਓ ਨੇ ਧੋਖਾ ਦੇਣ ਵਾਸਤੇ ਬਣਾਇਆ ਕਿਉਂ ਧੋਖਾ ਦੇਣ ਵਾਸਤੇ ਜਿਹੜੇ ਧੋਖਾ ਖਾ ਗਏ ਉਹਨਾਂ ਨੂੰ ਸੋਝੀ ਹੈ ਨਹੀਂ ਘੋਰ ਸੀ ਜਿਹੜੇ ਉਹਨਾਂ ਨੂੰ ਧੋਖਾ ਦੇਣ ਵਾਸਤੇ ਇਸ ਕਰਕੇ ਗੁਰਬਾਣੀ ਕੀ ਕਰਦੀ ਹੈ ਗੁਰਬਾਣੀ ਕੁਰ ਸਿੱਖਾ ਨੂੰ ਜਾਨ ਜਿਹੜੇ ਨੇ ਜਾਨ ਨੇ ਅਗੁਰ ਸਿੱਖ ਨੇ ਉਹਨਾਂ ਨੂੰ ਜੋਰੀ ਬਣਾਉਦੀ ਹੈ ਉਹਦੇ ਗਿਆਨ ਰਤਨ ਦੀ ਪਰਖ ਕਰੋ ਕਿ ਖੋਟਾ ਹੈ ਖਰਾ ਹੈ ਜੋ ਤੁਹਾਨੂੰ ਦੇ ਜੇ ਪਰਖ ਨਹੀਂ ਤਾਂ ਖੋਟਾ ਹੀ ਲੈ ਰਹੋਗੇ ਪਹਿਲੀ ਸਟੇਜ ਦੇ ਵਿੱਚ ਜਿਹੜਾ ਗਿਆਨ ਮਾਨੂੰ ਚੰਗਾ ਲੱਗਦਾ ਨਾ ਉਹ ਹੁੰਦਾ ਹੀ ਖੋਟਾ ਵਰਾਖੋਟਾ ਖੋਟਾ ਗਿਆਨ ਜਿਹੜਾ ਆਮ ਆਦਮੀ ਨੂੰ ਚੰਗਾ ਲੱਗਦਾ ਹੈ ਉਹਦੀ ਪੱਕੀ ਨਿਸ਼ਾਨੀ ਹੈ ਖੋਟਾ ਹੈ ਉਹ ਕੋ ਸੱਚ ਕੋੜਾ ਲੱਗਦਾ ਚੰਗਾ ਲੱਗਦਾ ਹੀ ਨਹੀਂ ਜਿਹੜਾ ਸਭ ਨੂੰ ਚੰਗਾ ਲੱਗਦਾ ਹੈ ਧੜਧੜ ਉਹਦੀ ਮਗਰ ਬੰਦੇ ਲੱਗਦੇ ਨੇ ਮੇਰਾ ਹੀ ਖੋਟਾ ਹੈ ਪਹਿਲੀ ਉਹ ਗੱਲ ਦਾ वरना ਸੱਚ कौड़ा ਹੈ ਬਹੁਤ देर बाद ਸੱਚ ਬਿਠਾ ਲੱਗਣ लगता है, ਸੇਟ ਬਦਲਦਾ ਉਹ ਵੀ ਜੇ ਉਹਨੇ ਬਦਲਣਾ ਹੋਵੇ ਇਹ ਹਰਮੀ ਬਣਾ ਕਰਨਾ ਹੋਵੇ ਫਿਰ ਕੋਈ ਕੱਲੇ ਜੋਦੀ ਉਥੇ ਸੈੱਟ ਹੋਇਆ ਹੋਵੇ ਉਹਦੇ ਉਥੇ ਪਾਰਟੀ ਬਣੀ ਹੋਵੇ ਲੋ ਰਾਜਾ ਹਾਂ ਮੇਰੇ ਦਾ ਆਪਣਾ ਜਿਹੜਾ ਗੁੰਡਾ ਉਰੇ ਆਪਣੀ ਦੁਕਾਨ ਖਿਲਾਉਣੀ ਹੋਵੇ ਰਾਜਾ ਸਾਮੀ ਲੈ ਕੇ ਰਾਜਾ ਸਾਮੀ ਦਾ ਮਹੱਲਾ ਹੋਵੇ ਉਹ ਤਾਂ ਤੁਹਾਨੂੰ ਆਪਣਾ ਵਰਤੇ ਹੈ ਤੁਹਾਨੂੰ ਥੋੜੀ ਗਿਓ ਉਹਦਾ ਬਿਜ਼ਨਸ ਚਲਾਉਣ ਦਾ ਉਹਦਾ ਆਪਣਾ ਕਾਰਜ ਸiddhi ਦਾ ਸਾਧਨ ਕਿ ਕਾਰਜ ਸiddhi ਦਾ ਸਾਧਨ ਰਹੀਦਾ ਧਰਮ ਉਹ ਘੋਟਾ ਦਾ ਅੱ피 ਘੋਟਾ ਇਹ ਕਾਲੀ ਸਿੱਧੀ ਆਰਾਧੇ ਦਾ ਲਕਸ਼ ਹੈ। ਸਾਨੂੰ ਕੀ ਹੈ ਕਾਲੀ ਸਿੱਧੀ ਦਾ ਪ੍ਰਚਾਰ ਸਾਰੇ ਕਮਰਾ ਆਜੰਦ ਤੇ। ਪ੍ਰਚਾਰ ਇਹ ਹੀ ਹੈ। ਇਹ ਤਰਫ ਹੋਟਾ। ਕੋਈ ਆਦਿ ਕਹਿੰਦੇ ਸਾਰੇ ਧਰਮੇ ਕੋ ਪ੍ਰਚਾਰ ਕਰਦੇ ਨੇ ਇਹ ਤੁਹਾਨੂੰ ਸਾਰਿਆਂ ਨੂੰ ਉਲਟਾ ਇਹ ਹੀ ਹੁੰਦਾ। ਜਦਾਂ ਦੂਏ ਪਾਸੇ ਵੋਟਾ ਦਾ ਰਾਜ ਹੈ ਵੋਟਾ ਦਾ ਰਾਜ ਹੈ ਸਿਲੈਕਸ਼ਨ ਵਿੱਚ ਖੋਟਿਆ ਜੋ ਖਰਾ ਪਛਾਣਿਆ ਜਾ ਸਕਦਾ ਬਡੇ ਬਡੇ ਮੁੰਡੇ ਸਿਲੈਕਟ ਹੁੰਦੇ ਨੇ ਵੱਡੀ ਵੱਡੀਆਂ ਪੋਸਟਾਂ ਦੇ ਉੱਤੇ ਸਿਲੈਕਟ ਕਰਨ ਵਾਲੇ ਬੰਦੇ ਸਿਆਣੇ ਹੁੰਦੇ ਨੇ ਉਹਨਾਂ ਨੂੰ ਪਰ ਜਿਹੜੇ ਸਿਲੈਕਟ ਹੋ ਜਾਂਦੇ ਨੇ ਜਿਉਂ ਉਹਨਾਂ ਨੂੰ ਕਹਿੰਦੇ ਤੁਸੀਂ ਭਾਈ ਵੋਟਾ ਪਾ ਕੇ ਸਿਲੈਕਟ ਕਰ ਦੋ ਆਦਮੀ ਉਹ ਚੰਗਾ ਆਦਮੀ ਸਾਂਟ ਕਰਦੇ ਉੱਥੇ ਤੁਸੀਂ ਇਲੈਕਟ ਕਰ ਦੋ ਆਦਮੀ ਸਿਰਫ ਤਾਂ ਕਾਰੋਬਾਰ ਚੱਲ ਰਿਹਾ ਹੈ ਅ ਸਰਕਾਰ ਦਾ ਕਿ ਸਰਕਾਰੀ ਵਿਭਾਗ ਵਿੱਚ ਸਿਲੈਕਸ਼ਨ ਇਲੈਕਸ਼ਨ ਹੋ ਰਹੀ ਹੈ ਜੇਕਰ ਉੱਥੇ ਵੀ ਇਲੈਕਸ਼ਨ ਆ ਗਿਆ ਤਾਂ ਹਾਲ ਇਹਨੇ ਇਲੈਕਸ਼ਨਾਂ ਉਹਦੇ ਨਾਲ ਉਹਨਾਂ ਦੇ ਕੋਲ ਬਹੁਤਾ ਕੁਝ ਨਹੀਂ ਦਿੱਤਾ ਪਾਵਰ ਬਹੁਤ ਹੀ ਪਾਵਰ ਜਿਹੜਾ ਉਹ ਕਹਿੰਦੇ ਨੇ ਨਾ ਮਸ਼ੀਨਰੀ ਅਫਸਰ ਅਫਸਰ ਸ਼ਾਹੀ ਉਹਨਾਂ ਦੇ ਹੱਥ 'ਚ ਹੈ ਉਹ ਇਹਨਾਂ ਨੂੰ ਧੌਂਸ ਉਹਦੀ ਦਿੰਦੇ ਨੇ ਪਰ ਕਾਨੂੰਨ ਆਹ ਕਹਿੰਦਾ ਅਸੀਂ ਨਹੀਂ ਕਰਨਾ ਉਹ ਉਸ ਆਪਣੀ ਪਾਵਰ ਜਿਹੜੀ ਹੈ ਉਹਦੇ ਰਾਜ ਤੇ ਰਾਜ ਕਰਦੇ ਨੇ ਇਹ ਫਰੇਵ ਦੇ ਹੱਥੇ ਰਾਜ ਕਰਦੇ ਨੇ ਇਹ करते हैं ਵੀ ਕਰਾਫਟ ਕਰਦੇ ਨੇ ਤੇ ਆ ਆ ਕਰਾਫਟ ਆ ਤਾਂ ਕਰਾਫਟ है ਉੱਪਰ ਤੱਕ ਆੜੀਆਂ ਹੋਣਗੇ ਉਹ ਡੀਜੀ ਵੀ ਤਾਂ ਇਹ ਕੋ ਚੰਗੀ ਸੋਚ ਨਾ ਥੋੜੀ ਹੈ ਚੰਗਾ ਬਸੰਤ ਥੋੜੀ ਜਾਰੀ ਹੈ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਕਰਤਾ ਸਭ ਪਾਪ ਹਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤਰ ਕਰੋ ਕਰਨ ਵਾਲਾ ਦਿੱਤਾ ਹੈ ਪਤਤ ਜਿਹੜੇ ਹੋ ਗਏ ਨੀਚ ਜਿਹੜੇ ਹੋ ਗਏ ਉਹਨਾਂ ਨੂੰ ਕੁਝ ਕਰਨ ਵਾਲਾ ਜਿਹੜਾ ਉਹ ਚਤਰੇ ਮੇਰਾ ਉਹ ਇੱਕ ਗੋਬਿੰਦ ਗੁਰਦੇ ਜੀ ਸਾਰੀਆਂ ਗੱਲਾਂ ਉਸੇ ਉੱਤੇ ਆਏ ਕੋਈ ਗੱਲ ਬਾਹਰ ਉੱਥੇ ਇਹਦੇ ਨਾਲ ਦਾ ਹੀ ਪੰਦਤ ਇਹਨੇ ਬਵੱਤਰ ਕਰਨਾ ਨਾਲ ਦੇ ਨਾਲ ਹਾਂ ਬਾਦਤ ਚਾਹੇ ਉਹ ਉੱਥੋਂ ਲੈ ਲੇ ਵਾਦਤ ਕਿਥੋਂ ਲੈ ਲੈਗਾ ਰਾਣਾ ਤੈ ਪਰ ਕਰ ਨਾ ਐਸੇ ਜਿੰਨਾ ਜਰ ਆਪ ਇਹ ਉਸ ਲਾਈਨ ਤੇ ਨਹੀਂ ਚੱਲਦਾ ਗੁਰਦੇਵ ਆਪ ਉਹਨਾਂ ਵਾਲੀ ਲਾਈਨ ਤੇ ਚੱਲਦਾ ਉਹ ਨਾ ਜਰ ਪਤ ਆਪ ਵੀ ਪਤ ਤੇ ਕਰ ਨਹੀਂ ਸਕਦਾ ਉਹ ਨਾ ਜਰ ਗੁਰਦੇਵ ਹੈ ਉਹ ਗੁਰਦੇਵ ਗੁਰਦੇਵ ਇਹ ਰਾਮ ਹੋ ਕੇ ਨੂੰ ਰੋਣ ਦੀ ਕੀ ਲੋੜ ਪਈ ਸੀ ਤੇ ਰਾਮ ਕੇ ਰੋਂਦਾ ਕਿਸੇ ਕਮੀ ਦੀ ਤਾਂ ਪਿਆ ਜੇ ਮਾਇਆ ਦੇ ਮਿਰਗ ਦੀ ਮਗਰ ਭਜੇ ਧੋਖਾ ਖਾ ਗਿਆ ਉਹਨੂੰ ਬਾਤ ਵੀ ਦੀ ਮਗਰ ਰੋਂ ਵੀ ਭਜੇ ਇਹ possible ਤਾਂ ਫਿਰ ਹੋਣੀ ਉਹਨੂੰ ਬੜਾ ਪਤਾ ਹੀ ਹੈ ਬ੍ਰਹਮਪੁੱਤ ਇਹ ਗਾਹੀਆਂ ਫਿਰ ਸੀਤਾ ਦਾ ਹਰਨ ਦਾ ਬੋਲ ਹੀ ਹਾਂਜੀ ਗੁਰਦੇਵ ਆਦਿ ਜੁਗਾਦ ਗੁਰਦੇਵ ਆਦਿ ਜੁਗਾਦ ਜੁਗ ਜੁਗ ਇਹ ਵੇਸਾ ਨਾਲ ਇਹ ਰਹੇ ਤੇ ਗੁਰਦੇਵ ਆਦਿ ਜੁਗਾਦ ਜੁਗ ਤੋਂ ਲੈ ਕੇ ਜੁਗਾਰ ਜਿੱਦੋਂ ਜੁਗਿ ਸ਼ੁਰੂ ਹੋਏ ਰੇ ਜਦੋਂ ਮਾਇਆ ਦੀ ਰਚਨਾ ਸ਼ੁਰੂ ਹੋਈਆ ਜੁਗਾਰ ਤੋਂ ਸਮਝਦੇ ਜੁਗਾਰ ਜਿਹੜਾ ਰੱਬ ਹੈ ਜਦੋਂ ਸੀ ਜਦੋਂ ਨੂਰ ਸੀਗਾ ਮਾਇਆ ਨਹੀਂ ਸੀ ਤੋ ਆਦ ਯੋਗ ਸੀਗਾ ਮਾਇਆ ਦੇ ਭਾਇਆ ਹੱਬਲ ਅੱਲੋ ਨੂਰੋ ਭਾਇਆ ਅਜਾ ਸਾਚੇ ਆ ਜੁਗਾ ਦਾ ਖਤ ਪਤਾ ਰਹੀ ਇੱਕ ਅਲੋਤ ਰਹਿ ਗਈ ਜੇ ਮਨ ਨੂੰ ਨਾਲ ਦੇ ਵਿਚਾਰ ਬਹੁਤ ਕੁਝ ਰਹਿ ਤੇ ਕੋਈ ਹੋਵੇ ਜੇ ਕੋਈ ਗਲਤ ਕਰਦਾ ਦੱਸਿਆ ਕਰੋ ਗੁਰਦੇਵ ਆਦ जुगाਦ ਜੁਗ ਜੁਗ ਆਦ ਉਦੋ ਜਦੋਂ ਬੱਚਾ ਸਿਰ ਪੈਦਾ ਹੋਇਆ ਹੈ ਕੱਪੜੇ ਨਹੀਂ ਪਹਿਨੇ ਤੇ ਕੱਪੜੇ ਦਿ ਲੋੜ ਪੈਦੀ ਨੂਰ ਤਾਂ ਪੈਦਾ ਹੋ ਗਿਆ ਅੰਦਰਲਾ ਸ਼ਰੀਰ ਤਾਂ ਹੈ कुंडली देहिता है बाहर नहीं कपड़े नहीं शरीर कपड़ा है बस कपड़े और ऊपर काल का असर है शरीर ऊपर असर नहीं है काल समय समय योग्य जुग का असर शरीर पे जब शरीर आत्मा और शरीर जुड़ गए ਉਦੋਂ ਤੋਂ ਯੁੱਗ शुरू हो ਗਿਆ ਸਮਝੋ ਇਹ ਇੰਨਾ ਟਾਈਮ ਹੈ ਜੁੜੇ ਰਹਿਣਗੇ ਸੋ ਵੱਧੋਗੇ ਬਸ ਇਹਨਾਂ ਦੇ ਜੋੜ ਦਾ ਸਮਾਂ ਹੀ ਆਵੇ ਇਹਨਾਂ ਅਚਾਰ ਵਾਸਤੇ ਜੋੜ ਦਿੱਤੇ ਗਏ ਮਾਧੁਰ ਬੈਠਾ ਹੋਈ ਹੈ ਆਦ ਮੁੰਡ ਵਜੀ ਗਿਆ ਇਸੇ ਚੀਜ਼ ਤੋਂ ਬੋਲਟ ਵੱਜ ਗਿਆ ਹੁਣ ਆਦ ਤੋਂ ਪਹਿਲਾਂ ਕੀ ਹੁੰਦਾ ਜਦੋਂ ਆਦ ਨਹੀਂ ਉਹ ਉਹ ਕਾਲ ਨੇ ਉਹਨੂੰ ਅਨਾਦ ਕਹਿੰਦੇ ਨੇ ਜਿੱਥੇ ਆਦ ਨੂਰ ਵੀ ਹੈ ਨਹੀਂ ਉਹ ਅਨਾਦ ਲੋ ਆਦ ਅਨਿਲ ਅਨਾਦ ਅਨਾਹਿਤ ਬੇਦੀ ਅਨਾਦੀ ਵੀ ਕਹਿੰਦੇ ਨੇ ਨਾਦ ਕੀ ਹੈ ਉਹਦੋਂ ਨੂਰ ਵੀ ਹੈ ਜੀ ਸੁੰਨ ਸਮਾਧ ਲਗਾਉਣ ਲਈ ਮਨ ਮਨ ਜੀ ਵੀ ਕਰਾਇਆ ਹੈ ਨੇ ਉਧਰ ਜਿਹੜਾ ਹੈ ਸੁੰਨ ਸਮਾਧ ਹੈ ਜਿਹੜਾ ਤੇੜਾ ਤੀਨ ਭਵਣ ਇੱਕ ਜੋਤੀ ਗੁਰੂ ਕੀ ਬਸਤ ਪ੍ਰਾਪਤ ਹੋਵੇ ਗੁਰਮੁਖਾਂ ਨੂੰ ਬਸਤ ਪ੍ਰਾਪਤ ਹੋਵੇ ਜੋ ਨਾ ਗੋਲ ਨੂੰ ਦੇਖੀ ਅਨਾਦ ਉਸ ਜਦੋਂ ਸੁਨ ਸਮਾਦ ਲਗਾਏ ਦਾ ਉਹ ਹੈ ਸਤਿਯੁਗ ਅਨਾਦ ਕਾਲ ਜਿਹੜਾ ਹੈ ਉਹ ਸਤਿਯੁਗ ਹੈ ਉਹ ਤੇ ਆਦ ਹੈ ਨਹੀਂ ਜਨੂਰ ਹੈ ਸੰਸਾਰ ਦਾ ਆਦ ਕੀ ਹੈ ਸੰਸਾਰ ਦਾ ਆਦ ਰੂਪ ਹੈ ਸਤਗੁਰ ਆ ਗਿਆ ਨਾ ਕੀ ਇਹ ਸਤਗੁਰ ਸਤਗੁਰ ਆਦ ਜੁਗਾਦ ਆਦ ਜੁਗਾਦ ਜੁਗ ਜੁਗ ਸਤਗੁਰ ਗੁਰਦੇਵ ਹਮੇਸ਼ਾ ਹਮੇਸ਼ਾ ਤੋਂ ਆਦ ਜੁਗਾਦ ਸਤਗੁਰ ਰਏ ਇਹਦੀ وجہ ਨਾਲੇ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ ਪਰਮੇਸ਼ਰ ਦਾ ਇਹ ਜੀ ਮਦਦ ਕਰਦਾ ਇਹਨਾਂ ਦੀ ਮਦਦ ਕਰਦਾ ਉਹ ਮਦਦ ਕਰਦਾ ਉਜੋ ਡਿਗਿਆ ਹੈ ਨੂੰ ਕੱਢਣ ਦੇ ਵਿੱਚ ਮਦਦ ਕਰਦਾ ਸਿਰਫ ਮੰਤਰ ਦੇ ਰਸਤੇ ਤਸਕਈ ਉਪਦੇਸ਼ ਦੇ ਰਸਤੇ ਮਦਦ ਕਰਦਾ ਮੰਨਣਾ ਉਪਦੇਸ਼ ਹੈ ਰੱਬ ਦੇ ਮੱਤ ਪੇਦ ਕਰਕੇ ਨਾ ਮੰਨਣ ਕਰਕੇ ਉੱਥੇ ਦੀ ਗੱਲ ਗਰੇ ਦੇ ਖੂਚ ਮੰਨ ਕੇ ਨਿਕਲ ਜਾਣਗੇ ਸੱਚਖੰਡ ਨਾਲ ਕੁਛ ਇਹਨਾਂ ਦੇ ਮੱਤ ਪੇਦ ਹੋਗੇ ਇਹ ਅਡੇਗਰ ਭਾਰਤੀ ਜਗਲ ਕਹਿੰਦੇ ਵੀ ਅਸੀਂ ਤਾਂ ਚੰਦਰਮਾ ਤੇ ਜਾ ਕੇ ਕੋਈ ਫੋੜੀ ਨਾ ਬਕਰਣੇ ਤੇ ਪ੍ਰੋਬਲਮਾ ਵੀ ਹੋਣੀ ਹੈ ਬਾਟ ਵੀ ਜਿੱਦਾਂ ਲੱਗੇ ਬਾਹਲੇ ਵੀ ਹਵਾ ਵੀ ਪ੍ਰੋਬਲਮ ਇੱਥੇ ਦੀ ਹੈ ਹਾਂ ਨੂੰ ਵੀ ਬਹੁਤ ਕੁਛ ਹੈ। ਉਹ ਗੱਡੀਏ ਸਾਥ ਕਾਣ ਜਹੈ ਨਹੀਂ ਚਲਾਉਂਦਾ ਰਰ ਰਰ ਦੀ। ਏਸੀ ਹੈ ਨਹੀਂ। ਆਜ ਬਰ ਕੁਛ ਨਹੀਂ ਉੱਥੇ ਤਾਂ। ਜਾਂਦਾ। ਉੱਥੇ ਹੋਏ ਅਨਾਨ। ਉੱਥੇ आद पुरुष तो ही अनाद हो जाईदा है।, है। नारद की नारद को वस्तु है। किया सर आद पुरुष तो नार परे आ नारद की जीत कोई नहीं ਕਬਦਰੂਪ ਹੋ ਜੂਆ ਨਾਲ ਹੋਵੇ ਅਨਾਦ ਉਹਨੂੰ ਕਹਿੰਦੇ ਨੇ ਜਿਹਦਾ ਆਦ ਨਹੀਂ ਹੁੰਦਾ ਕੋਈ ਉਹਦਾ ਸ੍ਰਿਸ਼ਟੀ ਦਾ ਆਦ ਹੈ ਸ੍ਰਿਸ਼ਟੀ ਦਾ ਆਦ ਹੈ ਜਿਵੇਂ ਆਦ ਅਸੀਂ ਜੁਗਾਰ ਕਹਿੰਦੇ ਹਾਂ ਉਹ ਸ੍ਰਿਸ਼ਟੀ ਬਾਰੇ ਆ ਜੁਗਾਰ ਆਉਂਦਾ ਹੈ ਮਾਇਆ ਬਾਰੇ ਆ ਜੁਗਾਰ ਆਉਂਦਾ ਨਾ ਕਿ ਜੋਤਵਾਰੇ ਹੁੰਦਾ ਜਦਵਾਰੇ ਆ ਜਵਾਰ ਹੁੰਦਾ ਮਾਇਆਵਾਰੇ ਹੁੰਦਾ ਜਵਾਰ ਸ੍ਰਿਸ਼ਟੀਵਾਰੇ ਆਦਾ ਜੋ ਤਾਂ ਪਹਿਲਾਂ ਵੀ ਸੀ ਹੁਣ ਵੀ ਹੈ ਜੇ ਪਹਿਲੇ ਇੱਕ ਸੀ ਦੋ ਦੋ ਹੈ ਫਿਰ ਕੀ ਫਰਕ ਪੈ ਗਿਆ ਜੋ ਕਾਲ ਤੋਂ ਪਰੇ ਚੀਜ਼ ਉਹਦਾ ਹਾਸ ਨਹੀਂ ਹੈ ਆਦ ਮੰਦਾ ਵੀ ਨਹੀਂ ਹੈ ਪਰ ਵੀ ਰਹਦੀ ਹੈ ਪਰ ਰਹਦੀ ਹੋਏ ਪਰ ਅਨਾਦੀ ਜਦ ਬਣਦਾ ਹੁਣ ਅਨਾਦੀ ਕਿਉਂ ਹਏ ਦੇਖਿਆ ਆਦੀ ਹੈ ਹਾਂ ਕਦੇ ਦੁੱਧ ਆਦੀ ਹੈ ਇਹਦੀ ਆਦਤ ਹੈ ਆਦੀ ਹੈ ਨਹੀਂ ਆਦਤ ਹੋਂਦ ਅੰਤ ਮਾਇਦਾਈ ਹੈ ਹੈ ਅਲੋ ਮਾਇਦਾ ਰਹਿਣਾ ਆਦਤ ਆਪਾਂ ਆਦਤ ਪੁੱਤ ਆਦਤ ਕਹੇ ਵੀ ਆ ਦੇ ਜਦੋਂ ਕਿ ਹੈ ਇਹ ਆਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਕੋਈ ਨਹੀਂ ਆਤਮਾ ਦੱਸੋ ਕੌਣ ਕੋ ਉਹ ਆਤਮਾ ਕਦੋਂ ਦੀ ਹੈ ਕਿ ਆਤਮਾ ਨੂੰ ਦੱਸਤਾ ਤਾਂ ਸਭ ਕੁਝ ਦੱਸਤਾ ਸੱਚ ਸਾਰਾ ਉਹੀ ਹੈ ਜੇ કબੂਲ ਦੱਸਤੀ ਤਾਂ ਸਾਰਾ ਪਾਣੀ ਦੱਸਤਾ ਕਰਪਾ ਕਰੇਗਾ ਆਲੀਆ ਤਾਂ ਇਹਨਾਂ ਪੱਥਰ ਲੈ ਕੇ ਟੈਸਟ ਕਰ ਲਿਆ ਵੀ ਇਹਨਾਂ ਜਿਹਦੇ ਸਾਰੇ ਹਵਾਲੀਏ ਉਹ بڑے ਰਹਾ ਫਿਰ ਕੱਲਾ ਪੱਥਰ ਨਹੀਂ ਬਣਿਆ ਸਾਰਾ ਹਵਾਲੀਏ ਦਾ ਕੋਈ ਯਾਦ ਨਹੀਂ ਆਠਵਾਂ ਦਾ ਮਰ ਢਿੜਕੀ ਜ ਮਰ ਉਹਦਾ ਹੁੰਦਾ ਕੋਈ ਆਹ ਰੋਦਾ ਹੁੰਦਾ ਜਿਹਦੇ ਵਿੱਚ ਚੇਂਜ ਆਫ ਸਟੇਟ ਅੱਛਾ अवर में समाया भी है पर ऐसे रंग रूप है रंग रूप बदलता है उसका रंग रूप है नहीं कोई है वो तो आरूप है रूप है पा में दो शोर दोतों होने करके शांति पैदा होगी उधर और की दोतों भी कुछ नहीं है ਮਾਇਆ ਜ ਰਹਿਣ ਦੀ ਇੱਛਾ ਰੱਖਦਾ ਹੈ ਮਾਇਆ ਦੇ ਵਿੱਚ ਦੁਖੀ ਹੈ ਦੋਦੋਂ ਨਹੀਂ ਆਏਗਾ ਹੁਣ ਵੀ ਇਹ ਐਵੇਂ ਅਸੀਂ ਕਰਦੇ ਹਾਂ ਇੱਛਾ ਦਾ ਪ੍ਰਕਾਰ ਦੀ ਹੈ ਸਾਡੀ ਪਰਮੇਸ਼ਰ ਨਾਲ ਮਿਲੇ ਰਹਿਣ ਦੀ ਵੀ ਇੱਛਾ ਸੰਦਾ ਚੜ੍ਹਦੀ ਵੀ ਇੱਛਾ ਸੰਦਾ ਚੜ੍ਹਦੀ ਵੀ ਸਾਰ ਜ ਰਹਿਣ ਦੀ ਵੀ ਇੱਛਾ ਹੈ ਨਾ ਛੱਡਣ ਦੀ ਇੱਛਾ ਸਾਡੇ ਅੰਦਰ ਇੱਛਾ ਵੀ ਸੰਸਾਰ ਨਾ ਛੱਡੀਏ ਜਉਂਦੇ ਰਹੀਏ ਇੱਥੇ ਰਹੀਏ ਪਰਮੇਸ਼ਰ ਨਾਲ ਵੀ ਮਿਲੇ ਰਹੀਏ ਇਹ ਦੋ ਚੀਜ਼ਾਂ ਨਹੀਂ ਹੋਣੀ ਆ ਪੋਸੀਬਲ ਨਹੀਂ ਇਹ ਆ ਫਿਰ ਜੇ ਪਰਮੇਸ਼ਰ ਦੇ ਘਰ ਜਾਈਏ ਥਰੇ ਸਰੀਰ ਜਾਈਏ ਇਹ ਵੀ ਇੱਛਾ ਅਰੇ ਛੁੱਡ ਵੀ ਬੋਲਣੇ ਜੋਗੀਆਂ ਡਿਜੀਸ਼ਨਲ ਕੰਪਨੀ ਦਾ ਕੋਲ ਨਹੀਂ ਹਾਂ ਹਾਂ ਉਹ ਗੱਲ ਨਾ ਉਹ ਭਾਈ ਜਿਹਨਾਂ ਦੇ ਵਿੱਚ ਝੂਠਿਆ ਜੀ ਆ ਕੇ ਉਹ ਕਹਿੰਦੀ ਹਾਂ ਆਖੇ ਛਿੱਟੇ ਆ ਗਏ ਮੇਰੇ ਪੈਰਾਂ ਦੇ ਵੀ ਪਏ ਸੀ ਕਹਿੰਦਾ ਵਾ ਤੇਰਾ ਵਿਆਹ ਨਾ ਹੋਊ ਸਾਡੇ ਦੱਬਰ ਸੋਦਰ ਜੀ ਤੇਰਾ ਗਿਆਰਾ ਹੋ ਸਾਡੇ ਝੂਠ ਲੋਗੇ ਝੂਠ ਬੋਲਦੇ ਹੋ ਤੁਸੀਂ ਕਿਉਂ ਪੱਥਾ ਤੋਲਦੇ ਹੋ ਜੇ ਤੈਨੂੰ ਕਹਿ ਤਾ ਮੈਂ ਤੌਕਾ ਆਪਣੇ ਮੇਰਾ ਲੜਾਈ ਜਗੜਾ ਮੇਰਾ ਰੋਜੇ ਨਿਕਲੇ ਸਰੂ ਘਰ ਚ ਉਹ ਕਹਿੰਦਾ ਵਾ ਠੀਕ ਆ ਹੀ ਦੇਖ ਲੀ ਮੈਂ ਆਪਣਾ ਜਾਰਾ ਹਜੂ ਬਧੀਆ ਇਹ ਸਮਝੋ ਉਹਦੇ ਨਹੀਂ ਕਹਿੰਦਾ ਹੋਰ ਕੀ ਕਰਵਾ ਦੇ ਲੜਾਈ ਕਰਦੇ ਵਰਦੇਵ ਆਲ जुगाਲ ਜੁਗ ਜੁਗ ਕੰਪਰੋਮਾਈਜ਼ ਇਸੇ ਕਹਾ ਦਾ ਨਾਮ ਕਰਦਾ ਕਰਦੇ ਸੀ ਨਾਲ ਨੇ ਕੰਪਰੋਮਾਈਜ਼ ਕਿਤਾਂ ਛੀ ਜੰਮੇ ਕਰਦੇ ਇਹ ਮੇਰੀ ਜੀਨੂ ਆਨ ਪਾੜ ਲੋਰ ਨੇ ਡੀਸੀ ਬਣਾ ਤਾ ਉਹ ਕਿਹਾ ਕੋਈ ਖੂਬੀ ਨਹੀਂ ਕੋਈ ਕੁਲਿਫੀਕੇਸ਼ਨ ਨਹੀਂ ਕੋਈ ਉਹਦਾ ਤਾਪ ਨਹੀਂ ਇਹ ਤਾਂ ਹੁਣ ਜੋ ਮਰਜੀ ਗੱਲਾਂ ਮਾਰੀ ਜਾਣ ਜਿਹੜਾ ਬਾਪ ਭਗਤ ਹੈ ਇਹਦਾ ਮਤਲਬ ਧਰਮਗਾਦਮੀ ਨਹੀਂ ਹੈ ਫਿਰ ਪਿੱਛੋਂ ਲਾਲਾ ਇਹ ਵੀ ਨਾਨਕ ਦੀ ਹੋਲ ਮੋੜ ਲਾ ਦਿੱਤਾ ਨੂੰ ਖੋਲ ਦਿੱਤੀ ਤਾਂ ਹੁੰਦਾ ਉਹ ਬੰਦਾ ਗੱਡੀ ਨੂੰ ਪੈਂਦਾ ਫਿਰ ਉਹਦੀ ਨੂੰ ਤਾਂ ਨੂੰ ਬਨਰੀ ਬੰਦਾ ਉਹ ਉਹਨਾਂ ਦਾ ਵਿਰੋਧ ਕਰਦਾ ਜਿਹੜੇ ਤਾਂ ਨੂੰ ਫਿਰ ਉਹ ਤਾਂ ਤੁਸੀਂ ਕਿਵੇਂ ਕਹੋਗੇ ਤਾਂ ਨੂੰ ਸਭ ਠੱਗੀ ਉਹਨਾਂ ਲੋਕਾਂ ਨਾਲ ਮਾਰੀ ਜਾ ਸਕਦੀ ਸੀ ਜਿਨ੍ਹਾਂ ਨੂੰ ਗਿਆ ਰਹਿਣੀ ਉਹ ਜੋਗਾ ਸਿੰਘ ਜੋਗੀ ਕਵੀਸ਼ਰ ਆ ਉਥੇ ਦਾ ਦਾ ਉਤਾシャレ ਪਤਾ ਨਹੀਂ ਹੈ ਕਿ ਰਹੀ ਹੈ ਉਹਦੀ ਕੈਸਟ ਸੀ ਬਹੁਤ ਚਿਰ ਹੋ ਗਿਆ ਕਹਿੰਦਾ ਚੋਰਾਂ ਦੀਆਂ ਕੀ ਆ ਗਏ ਚੋਰਾਂ ਦੀਆਂ ਗੱਲਾਂ ਸਾਧ ਨੇ ਤਾਂ ਭੁਜੇ ਲੈਣੀ ਇਹ ਜਿਹੜਾ ਸਾਧ ਸਾਰੇ ਕਵੀਰ ਉਹ ਨਹੀਂ ਸੀਗੇ ਸਰੀਏ ਜੋ ਰੋਦੀਆਂ ਗੱਲਾਂ ਭੁਜ ਕੇ ਦੱਸਦੀਆਂ ਤੁਹਾਨੂੰ ਇੱਥੇ ਹੋਰ ਕੀ ਸੀ ਪੁਰ ਸੰਸਾਰ ਦੇ ਲੋਕ ਥੋੜੀ ਚੋਰਾ ਦੇਖ ਲਓ ਵੀ ਸੰਸਾਰ ਦੇ ਠੱਗਾ ਦੀ ਗੱਲ ਜਿਹੜਾ ਹੁਝ ਨਹੀਂ ਲੈਂਦਾ ਠੱਗੀ ਤੋਂ ਭੱਜ ਜਾਂਦਾ ਹੈ ਜਿਹੜਾ ਠੱਗੀ ਦੀ ਸਕੀਮ ਆ ਜਾਂਦਾ ਹੈ ਉਹ ਭੱਜ ਜਾਂਦਾ ਜਿਹੜਾ ਠੱਗੀ ਨੂੰ ਸਮਝ ਲੈਂਦਾ ਠੱਗੀ ਤੋਂ ਭੱਜ ਜਾਂਦਾ ਜਿਹੜਾ ਨਹੀਂ ਸਮਝਦਾ ਭਾਈ ਠੱਗੀ ਗੁਰਦੇਵ ਆਰ ਜੁਗਾਂ ਜੁਗ ਜੁਗ ਗੁਰਦੇਵ ਮੰਤਰ ਹਰ ਜਪ ਉਧਰਾ ਗੁਰਦੇਵ ਆਦ ਜੁਗਾਂ ਦੇ ਜੁਗ ਜੁਗ ਇਹ ਗੁਰਦੇਵ ਹੈ ਆਤੋਲ ਹੈ ਸਾਰੇ ਜੁਗਾਂ ਵਿੱਚ ਇਹ ਜੁਗ ਹੁੰਦਾ ਹੀ ਆਇਆ ਸਤ ਮੇਰਾ ਸਦਾ ਸਦਾ ਜਾਏ ਇਹ ਸੰਸਾਰ ਲੋਕ ਜੋ ਕਿਤੇ ਬੂਰ ਨਹੀਂ ਜਾਂਦਾ ਲਾ ਕੇ ਤਾਂ ਹੈ ਨਾ ਉਹ ਅਗਨਾਸ਼ੀਪੁਰ ਖਾਇਸਾ ਮੈਂ ਉਹ ਤਾਂ ਰਾਸ਼ੀੁਰਖਾ ਜਿਹੜਾ ਅਵਨਾਸ਼ੀ ਹੈ ਅਵਨਾਸ਼ੀ ਤਾਂ ਫਿਰ ਇਸ ਸਾਰੀਆਂ ਪ੍ਰਾਪਰਟੀ ਉਪਰ ਵਿਸ਼ਰਣ ਇਹ ਪਹੁੰਚਾਇਆ ਦੁਕਾਨੋ ਆਜਮਤ ਨੇ ਚਾਹੇ ਮਾਇਆ ਜਾਂ ਤਾਂ ਵੀ ਅਵਨਾਸ਼ੀਆ ਮਾਇਆ ਤੋਂ ਪਰੇ ਤਾਂ ਉਹ ਬਸ ਜਿਹਨੂੰ ਅਸੀਂ ਕਹਿੰਦੇ ਆ ਨਾ ਜੰਮੜ ਮੰਨਣਾ ਆ ਜਿਹੜਾ ਚੇਂਜ ਆਫ ਇਹਦਾ ਹੈਗਾ ਚੋੜਾ ਚੋੜਾ ਬਦਲ ਜਿਹੜੀ ਗੱਲ ਹੈ ਕਿ ਆ ਇੱਥੇ ਚਿੰਤਾਵਾਂ ਹੋਰ ਜਿਹੜਾ ਦੁੱਖ ਹੈ ਝਗੜੇ ਛੱਡੇ ਇਹਦੇ ਆਪਣੇ ਮੰਨਦੀਆਂ ਦੋ ਦੁਬਧਾ ਹੈ ਇਹ ਹੀ ਇਹਨੂੰ ਦੁੱਖੀ ਕਰਦਾ ਦੁਬਧਾ ਵੇਖ ਕੇ ਰੋਉਂਦੇ ਦੁਬਧਾ ਦੇ ਵਿੱਚ ਰੋਉਂਦੇ ਰੋਉਂਦੇ ਬੁਹਾਵਦੇ ਤੇ ਦੁਬਧਾ ਬਸ ਦੁਗਾ ਦੇ ਵਿੱਚੋਂ ਤਵਨਾਂ ਨੂੰ ਪ੍ਰਾਪਤ ਕਰਦੇ ਹਾਂਜੀ ਤੁਸੀਂ ਦੱਸੋ ਮਾਤਕ ਗੁਰਦੇਵ ਮੰਤਰ ਹਰ ਜਪ ਉਧਰ ਗੁਰਦੇਵ ਦਾ ਜਿਹੜਾ ਮੰਤਰ ਹੈ ਮੰਤਰ ਮੰਤਰ ਗੁਰਦੇਵ ਨੇ ਜੋ ਸਲਾਹ ਦੇਣੀ ਹੈ ਸਾਨੂੰ ਮੰਤਰ ਉਪਦੇਸ਼ ਦੀ ਸਲਾਹ ਉਹਦਾ ਮੰਤਰ ਜਪ ਉਧਰ ਉਧਰ ਜਪ ਲੈ ਬੈਰ ਸਭ ਜਲ ਬੈਰ ਉਹਦੇ ਕੋਲ ਕਰਦੇ ਸਮਝ ਕੇ ਉਧਾਰ ਹੁੰਦਾ ਕਿ ਸੰਜੇ ਦੇ ਬਿਨਾ ਜਮੇ ਉਹ ਗੁਰਦਾਖੜੇ ਕਹਿੰਗੇ ਕਰਨ ਕਰਨ ਤੋਂ ਪਹਿਲਾਂ ਜੋ ਕਿਹਾ ਉਹਨੂੰ ਸਮਝਣ ਵੀ ਹੋਣਾ ਠੀਕ ਠੀਕ ਜੇ ਉਹ ਸਭਝਾ ਠੀਕ ਨਹੀਂ ਤਾਂ ਐਕਸ਼ਨ ਵੀ ਠੀਕ ਨਹੀਂ ਹੋਗਾ ਜੇ ਕਾਲ ਸਮਝ ਲਿਆ ਆਪਾਂ ਨੇ ਕੁਝ ਵੀ ਕਰਾਂਗੇ ਵੀਰ ਤਾਂ ਕਰਾਂਗੇ ਵੀਰ ਤਾਂ ਰਸਤਾ ਵੀ ਗਲਤ ਇਸ ਕਰਕੇ ਹੁਣ ਬਾਣੀ ਨੂੰ ਅਸੀਂ ਗਲਤ ਸਮਝਿਆ ਹੋਇਆ ਹੈ ਜਿਸ ਤਰੀਕੇ ਨਾਲ ਅਸੀਂ ਬਾਣੀ ਨੂੰ ਸਮਝਿਆ ਹੋਇਆ ਉਸ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ ਜਦੋਂ ਕੱਲਣ ਵੇਲੇ ਸਾਨੂੰ ਇਹ ਲੱਗਦਾ ਹੈ ਕਿ ਸਿੱਖੀ ਸਾਡੇ ਅੰਦਰੋਂ ਚਲੀ ਗਈ ਸਾਡੇ ਚ ਬਾਣੀ ਪੜਦੇ ਉਹ ਤੇ ਸਮਝਣ ਦੇ ਪਾਠ ਅਰਥ ਲਾਏ ਹੋਏ ਨੇ ਆ ਸੁਲੇ ਹੋਏ ਨੇ بارੋ-ਬਾਰ ਪੜ੍ਹ ਚੁ। ਉਹਦੇ باوجود ਬਦਾਰ ਆਦਮੀ ਵੀ ਬਹੁਤ ਨੇ ਉਹਨਾਂ ਚ ਪਰਵਰਤਨ ਵੀ ਦਿਖਾਇਆ। ਉਹ ਪਰੇਸ਼ਾਨ। ਉਹੀ ਪਰੇਸ਼ਾਨ। ਇਹ ਕੀ ਹੋ ਰਿਹਾ? ਦੇਖਦੇ ਨੇ ਵੀ ਅਗਲੀ ਜਨਰੇਸ਼ਨ ਸਿੱਖੀ ਤੋਂ ਦੂਰ ਕਿਉਂਦੀ ਜਾ ਰਹੀ ਹੈ? ਅਸਲ ਤਾਂ ਇਸ ਗੱਲ ਤੋਂ ਪਤਾ ਲੱਗਿਆ। ਜਦੋਂ ਕਿਸੇ ਉਪਦੇਸ਼ ਦੇ ਵਿੱਚ ਦਮ ਨਾ ਨਾ ਰਹੇ ਤਾਂ ਗੱਲ ਨਹੀਂ ਤਾਂ ਉਹਨੂੰ ਮਟੜ ਵਾਲੇ ਉਹ ਡਿਟ ਲੈ ਰਹੇ ਜੋ ਬਾਣੀ ਦੇ ਸਹੀ ਰੂਪ ਹੈ ਉਹਦੇ ਵਿੱਚ सच ਹੈ ਬਾਣੀ ਸੱਚ ਹੈ ਸੱਚ ਵਿੱਚ ਦਮ ਹੁੰਦਾ ਹੈ ਜੇ ਵਿੱਚੋਂ ਸੱਚ ਕੱਢ ਦਈਏ ਸਾਹਸਾਤ ਸੱਚ ਦੀ ਸ਼ਕਤੀ ਇਹ ਬਾਣੀ ਕੋਈ ਸ਼ਕਤੀ ਨਹੀਂ ਸੱਚ ਅਸੀਏ ਤੋਂ ਖਾਰਜ ਕਰਦਾ ਹੈ ਜਿਉਂ ਉਹ ਤੇਲੇ ਆਂਦਾ ਸੱਚ ਖਾਰਜ ਕਰਦਾ ਸੱਚੀ ਜੋਤ ਦਾ ਗਿਆਨ ਸੱਚੀ ਮਾਇਆ ਉਹ ਸਭ ਕੁਝ ਹੈ ਮਾਇਆ ਉਹ ਤੇਲੇ ਆਂਦਾ ਜੋਤ ਦਾ ਗਿਆਨ ਥੱਲੇ ਆਂਦਾ ਜੋ ਤਦਾਸ਼ੁੱਧੀ ਕਰਨ ਥੱਲੇ ਕਰਤਾ ਮਰਦਾ ਬਲੀਦਤਾ ਦੂਰ दूर ਦੀ ਗੱਲ ਥੱਲੇ ਭਰਾਤੀ ਅਹ ਜੀ ਅਸੀਂ ਹੱਥ ਨਹੀਂ ਕਰਦੇ ਜਿਹੜਾ ਰੋਟੀ ਬਲੀਦਤਾ ਛੱਡਣ ਦੀ ਗੱਲ ਹੋਵੇ ਅਸੀਂ ਤਾਂ ਇਹੋ ਜਿਹਾ ਪ੍ਰਚਾਰ ਕਰਦੇ ਹਾਂ ਕਿ ਅਸੀਂ ਧਨવાન ਕਿਵੇਂ ਬਣੀਏ ਸਾਡੇ ਸਿੱਖ ਸਾਰੀ ਕੌਮਾਂ ਦੇ ਉੱਤੇ جے بہی کارن تاں اسی کی کریے پھر کیویں کرائیے ڈانڈ نہ کرائیے توکا کے کرائیے ایتھے قربانی کیتی ایتھے سارے قربانی رولٹ اے اے قرب کھانا ਧਰਮ اے ایتھے لبے سو توڑا ہوئے جندے برتاں ڈھانڈ کرو ਖਾਨੂੰ ਇਹ ਜੀ ਦਿੱਦੀ ਲੋੜ ਨਹੀਂ ਕਰੀ ਬੋੜਾ ਹੋ। ਖਾਨੂੰ ਜੇਦੀ ਰੋੜਾ ਅਸੀਂ ਜਿੱਥੇ ਜਾਈਏ ਲੋਕ ਖੜੇ ਹੋ ਜਾਣ। ਨਹੀਂ ਖੜਾ ਹੁੰਦਾ। ਉਹਦੇ ਚਾਰ-ਚਾਰ ਚਿਪੇੜਾ ਬਾਰ। ਤੂੰ ਕਿਉਂ ਖੜਾ ਹਾ? ਅਸੀਂ ਇਹ ਪ੍ਰਵਰਤੀ ਸਾਡੇ ਦਰਵਾਜ਼ੇ ਤੇ ਐਸੇ ਕਰਕੇ ਕੀਤੀ। ਅਸੀਂ ਜਿੱਥੇ ਚੱਲੇ ਪਹਿਲਾਂ ਖੜਾ ਹੋਵੇ। ਨਹੀਂ ਖੜਾ ਹੁੰਦਾ ਤਾਂ ਉਹ ਕਿੱਥੇ ਜਾਵੇ? ਕੋਈ ਖੜਾ। ਇਹ ਤਾਂ ਕੁਰਮਤ ਨਹੀਂ। ਨਾਇਜ਼ ਕਰਕੇ ਦਰਵਾਜ਼ਾ ਬੰਦ ਕਰ ਦਿੱਸ। ਹਲਵਾੜ ਦਾ ਇਸ ਵਾਸਤੇ ਜੀ। ਤਲਵਾਰ ਤਾਂ ਪਹਿਲਾਂ ਹੀ ਸੀ ਲੋਕਾਂ ਕੋਲ ਰਾਜਿਆਂ ਕੋਲ ਪਹਿਲਾਂ ਹੀ ਸੀ ਮੁਗਲਾਂ ਕੋਲ ਪਹਿਲਾਂ ਹੀ ਸੀ ਠਾਕਰਾਂ Rajputਾਂ ਕੋਲ ਪਹਿਲਾਂ ਹੀ ਸੀ ਅਰ ਉਹ ਕਹਿੰਦੇ ਤੇ ਤਲਵਾਰ ਸਾਡੀ ਆ ਹੋਰ ਕੋਈ ਪਾ ਨਹੀਂ ਸਕਦਾ ਜਿਹੜੇ ਅਜੂਬੇ ਦੀ ਕਾਤੀਆ ਬਣਾਈ ਅਰੇ ਅਸੀਂ ਸਾਡੀ ਸੇਵਾ ਕਰਨ ਵਾਲੀ ਇਹਦੀ ਤਲਵਾਰ ਪਾ ਸਕਦੀ ਹੈ ਨਹੀਂ ਕੋੜੇ ਤੇ ਬੈਸਨ ਗੁਰੂ ਨੇ ਕਹ ਕਿ ਗਏ ਜੇ ਤੁਸੀਂ ਹੋਏ ਸ਼ੇਰ ਕੋਈ ਆ ਤੁਹਾਨੂੰ ਨਾ ਚਾਹ ਇਹ ਪਹਿਨਣਗੇ ਮੈਂ ਇਹਨਾਂ ਦੇ ਨਾਲ ਖੜਾ ਤਲਵਾਰ ਹਿਜਾਲ ਕਰਾਤੀ ਤੱਕਾ ਹੀ ਤੱਕੇ ਦੇ ਖਿਲਾਫ ਲੜੇ ਸੀ ਔਰ ਇਸਤੇਮਾਲ ਕਰਨੀਏ ਜ਼ੁਲਮ ਕਰ ਵਾਸਤੇ ਤਾਂ ਨਹੀਂ ਜ਼ੁਲਮ ਰੋਕ ਵਾਸਤੇ ਜ਼ੁਲਮ ਰੋਕਣ ਵਾਸਤੇ ਰੋਜ਼ੀਆ ਰੋਗਲਾ ਢਾਕੇ ਵਾਸਤੇ ਹੀ ਹੁੰਦੀ ਹੈ ਪਾਵਦੀ ਰੋਪਲਾਂ ਆਪਣੇ ਤੇ ਹਜ਼ਰ ਪੈਡਰੂ ਰੋਟਣ ਵਾਸਤੇ ਨਹੀਂ ਦੂਏ ਦੇ ਦੇ ਪਿੰਡ ਨੂੰ ਲੁੱਟਣ ਵਾਸਤੇ ਰੋ। ਉਤਾ ਸੇ ਕੋਲੋਂ ਦੀ ਮਿਲਟਰੀ ਐ ਬਿਲਟਰੀ ਵਾਸਤੇ। ਹਾਂ ਮਿਲਟਰੀ ਦੇ ਡੇਪੂ ਲੁੱਟ ਲੋ ਤੁਸੀਂ। ਪਾਬਲਤ ਨੂੰ ਲੁੱਟੀ। ਪਾਬਲ ਕਾ ਜਦ ਰਾਜ ਹੋ ਗਿਆ ਸਾਡੀ ਹੋ ਗਈ ਪੁੱਤ। ਜਿੱਥੇ ਮਿਲਟਰੀ ਵੱਧ ਗਈ ਹੋਰਾਂ ਦੀ ਸੀ ਸਾਡੀ ਹੋ। ਸਾਡਾ ਕੰਮ ਉਹਨਾਂ ਦੀ ਰੱਖਿਆ ਕਰਨਾ ਹੀ ਹੋਇਆ। ਅਸੀਂ ਲੁੱਟਦੇ ਹਾਂ ਤੇ ਗੱਲ ਗੱਲ। ਨਿਯਮ ਦੇ ਅਨਸਾਰ ਸੰਸਾਰੀ ਨਿਯਮ ਦੇ ਅਨਸਾਰ ਵੀ ਕੰਮ ਕਰਦਾ ਪਰ ਬੰਦਾ ਕੋਲ ਨਿਯਮ ਜਿਉਂ ਬਣਾਏ ਜਾਂਦੇ ਨੇ ਸੰਸਾਰ ਦੇ ਵੱਡੇ ਨਿਯਮ ਬਣਾਏ ਬੜਿਆ ਨਿਯਮ ਦੇ ਬੰਨਣ ਵਾਲੇ ਉਹ ਲੋਕ ਦੀ ਮੰਨਦੇ ਫਿਰਦੀ ਨਾ ਅਥਿਕ ਪਾਵਰ ਹੁੰਦੀ ਹੈ ਪਰ ਇਹਦਾ ਬੰਦਾ ਵਿਚਾਰਾ ਰਹਿੰਦਾ ਤਕੜਾ ਹੀ ਨਹੀਂ ਬੰਦੋ ਉਹ ਤੋੜਦੇ ਨੇ ਜਿਹੜੇ ਸੱਤੀਸ਼ਾਹੀ ਹੁੰਦੇ ਨੇ ਉਰੀ ने ਕੀ ਤੋਂ ਬਾੜੇ ਕੋਲੋਂ ਤੇ ਕੀ ਤੋਂ ਸੱਚ ਜੇ ਤੋ ਕੱਢ ਦੀਏ ਰ ਇਹ ਚੀਜ਼ ਜੋ ਸਰੀਰ ਜੋ ਜ ਸਾਚੇ ਨੇ ਕਹਿੰਦਾ ਸਰੀਰ ਮਿੱਟੀ ਦੀ ਢੇਰੀ ਰ ਤੇਰੀ ਮਿਟੀ ਨਹੀਂ ਹੋ ਗਿਆ ਪਛੋ ਨਹੀਂ ਹੋਇਆ ਜਦੋਂ ਤੁਸੀਂ ਬਾਣੀ ਚ ਸੱਚ ਕੱਢਦਾ ਦੀ ਬਿਆਖਿਆ ਚ ਪਛੋ ਨਹੀਂ ਰਹੀ ਪਰ ਮਾਇਆ ਮਿਟੀ ਨਹੀਂ ਚੜੀ ਰਹੀ ਫਿਰ ਖਾਨੂੰ ਸੋਨੇ ਦੀ ਲੋਡ ਪੈਂਦੀ ਹੈ ਗੁਰਸਾਰੇ ਚਲਾਉਣ ਵਾਸਤੇ ਪੱਥਰ ਦੀ ਲੋਡ ਪੈਂਦੀ ਹੈ ਦਿਖਾਵੇ ਦੀ ਲੋਡ ਕਿਉਂ ਲੋਡ ਗੁਰਦਾਰਿਆਂ ਨੂੰ ਮਿਊਜ਼ੀਅਮ ਲੋੜ ਦੀ ਲੋੜ ਪਈ ਕਿਉਂ ਲੋਕ ਕਿਵੇਂ ਉਹ ਜਿਹੜਾ ਪਹਿਲਾਂ ਅਕਰਸ਼ਣ ਸੀ ਜੋ ਸੱਚ ਸੀ ਉਹ ਤਾਂ ਹੈ ਨਹੀਂ ਬੱਤੀ ਕਾਹਨੋਂ ਉੜਕੇ ਮੇਲੇ ਆ ਗਏ ਲੋਕ ਆ ਦੁਬਾਰਾ ਜੇ ਲੋਕ ਗਰਾਉਂਡ ਤੇ ਗੋਲਕਦੀ ਰੜੀ ਘੜਦੀ ਗੋਲਕਦੀ ਭਰਦੀ ਤਾਂ ਲੋਕਾਂ ਦੇ ਉਹਨਾਂ ਤੋਂ ਫਾਇਦੇ ਉਹਦੇ ਨਾਲ ਸਾਡਾ ਵਰਡ ਦੇ ਵਿੱਚ ਗੱਬੜਾਵਾ ਵੀ ਵਰਡ ਇੱਥੇ ਸੀਟਾ ਵੀ ਬਿਲਡੀਆਂ ਸਰ ਇਹ ਗੱਲ ਤਾਂ ਮਾਇਆ ਦੀ ਹੈ ਲੋਕਾਂ ਨੇ ਮਾਇਆ ਲੈਣ ਹੋਣਾ ਮਾਇਆ ਦੀ ਮਸੂਰੀ ਚਾਹੀਦੀ ਸਰ ਇਹ ਗੱਲ ਤਾਂ ਮਾਇਆ ਦੀ ਹੈ ਸਿੱਖੀ ਦੀ ਗੱਲ ਹੈ ਕਿਥੇ ਪੱਟਦ नहीं ਪਾੜ ਕੇ ਦਿੱਤਾ ਸਾਨੂੰ भी रहा ਰਾਹ ਬਾਣਨ ਵਾਸਤੇ ਪੱਟਾ ਤੋਂ ਅਖਰਾ ਦੇ ਬਣੇ ਨਾ ਪੜਦਾ ਉਹ ਐਕਸਪਰਟਰ ਆ ਬਾਣ ਦੇ ਵਿੱਚ ਜੋਤੀ ਛੜਤੀ ਯਾਦ ਪੜ ਲਈ ਰਾਹ ਬਾੜ ਗਿਆ ਕੀ ਓਕਾ ਸੀ ਇਹਦੇ ਚ ਉਹ ਰਵਲੇ ਪਰ ਗੜੂ ਗਰਾਂ ਗੀਦੇ ਵੜਲੇ ਚੱਲ ਫੁੱਟੀ ਦੇਖੀ ਔਖਾ ਸੀ ਤੋਂ ਇਹ ਨਹੀਂ ਸੀ ਔਖਾ ਔਖਾ ਉਹ ਸੀ ਖੰਨੇ ਉਹ ਤਿੱਖੀ ਬਾਲੋ ਦੀ ਕੀ ਇਤਮਾਰ ਵੀ ਜਾਣਾ ਉਹ ਸੀ ਔਖਾ ਔਖਾ ਕਮ ਛੜਦਾ ਔਖਾ ਖੜੇ ਉਹੜੀ ਕਾਖੜੀ ਕਾਰ ਦੀ ਉਹ ਛੜ ਦਤੀ ਕਹਦਾ ਨਾ ਬਵਰ ਨੂੰ ਲੋੜ ਨਾ ਸਨੂ ਲੋੜ ਜਿਹਨੂੰ ਲੋੜ ਕਰਦਾ ਰਹੇ ਪਰ ਜਿਹਨੂੰ ਲੋੜ ਆ ਭਾਈਓ ਚੁੱਪ ਕਰਕੇ ਕਰੀ ਜਾਂਦਾ ਨਹੀਂ। ਬਾਕੀ ਜਿਹੜੇ ਤੇ ਰੌਲਾ ਪਾਉਂਦੇ ਰੌਲਾ ਕੋਈ ਲੋੜ ਨਹੀਂ। ਜਿਹੜੇ ਡਿਮੋਨਸਟ੍ਰੇਟ ਨਗਰ ਕੀਰਤਨ ਨੂੰ ਡਿਮੋਨਸਟ੍ਰੇਸ਼ਨ ਬਹੁਤ ਕਰਦੇ ਨੇ। ਬਿਉਜ਼ ਦਿਖਾਵੇ ਕਰਦੇ ਨੇ। ਬਾਹਰ ਚ ਬਾਹਰ ਚ ਜੇਤ ਉਹਨਾਂ ਨੂੰ ਜਿਹੜੀ ਲੋੜ ਆ ਆਪਣੇ ਸਾਹਮਣੇ ਉਕੜਾ ਦੱਸਣ ਦੀ ਲੋੜ ਉਹਨਾਂ ਨੂੰ ਵੀ ਪਤਾ ਲੋਕਾਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਸਾਰੇ ਬਾਕੀ ਧਰਮ ਦੇ ਸਾੜਿਆਂ ਨੂੰ ਵੀ ਪਤਾ ਕਿਸੇ ਤੇ ਕੁਝ ਹੈ ਸਾਰੇ ਲੋਕ ਕੀ ਦੇ ਉਹਨਾਂ ਦੇ ਪਿੱਛੇ ਵੀ ਕੋਈ ਲਾਲਚ ਦੇਣ ਵਾਲੇ ਦੇ ਪਿੱਛੇ ਆ ਬੁਰਖ ਦੇ ਇਹ ਹੋਏ ਵਿਚੇ ਲਾਲਚ ਸਾਰੇ ਧਰਮਾਂ ਨੂੰ ਇਹ ਦੰਦ ਦੇ ਲੋਕ ਇਹਨਾਂ ਨੂੰ ਦੱਸਦੇ ਸਿਆਰੂ ਵੀ ਦਿੰਦੇ ਲੋਕੋ ਪੈਸਾ ਥੋੜਾ ਹੈ ਰਾਮਬੰਦਰ ਦੇ ਲੋਦਰੀ ਦਿੰਦੇ ਥੋੜਾ ਹੈ ਸਾਰੇ ਰੂ ਵੀ ਦਿੰਦੇ ਵਿਸ਼ਾਸੀ ਪਾਰਟੀ ਉਹਨੂੰ ਵੀ ਲੋਕ ਦਿੰਦੇ ਉਹ ਲੋਕੋ ਥੋੜਾ ਹੈ ਸਵਾਲ ਹੈ ਕਿ ਸਾਡੇ ਕੋਲ ਇੱਕ ਸਪੈਸ਼ਲ ਧਰਮ ਸੀ ਅੱਜ ਉਹ ਸਪੈਸ਼ਲਿਟੀ ਕਿੱਥੇ ਗਈ ਉਹ ਜाहਰ ਕਰੋ ਤੁਸੀਂ ਉਹ ਕੀ ਸਪੈਸ਼ਲ ਕਿਉਂ ਸਪੈਸ਼ਲ ਧਰਮ ਕੋਦਸ ਕੋਲ ਯੂਨੋ ਵੀ नहीं ਵੀ ਸਾਰੇ ਕਹਿੰਦੇ है ਸਪੈਸ਼ਲ ਕਿਉ ਹੈ ਕੋਈ ਜਵਾਬ ਨਹੀਂ ਲੋੜ ਹੈ ਅਸ਼ਾਂਤੀ ਵੱਧਦੀ ਜਾਂਦੀ ਹੈ ਲੋਕਾਂ ਨੂੰ ਪਤਾ ਹੈ ਸਿੱਖ ਸਿੱਖੀ ਨੂੰ ਛੱਡ ਚੁੱਕੇ ਨੇ ਪਤਾ ਹੈ ਸੂਝ ਵਾਲਾ पता ਪਤਾ ਸਿੱਖ ਸਿੱਖੀ ਨੂੰ ਛੱਡ ਚੁੱਕੇ ਨੇ ਸਿੱਖਾਂ ਨੂੰ ਸਿੱਖੀ ਦੀ ਲੋੜ ਨਹੀਂ ਜਿਹੜੇ ਸਿੱਖ ਬਾਦ ਦੇ ਵਿੱਚ ਪੜੇ ਨੇ ਗੁਰੂਆ ਤੋਂ ਅਸਲ ਦੇ ਵਿੱਚੋਂ ਸਿੱਖੀ ਵਾਸਤੇ ਉਹ ਸਾਰੇ ਸਿੱਖੀ ਵਿੱਚ ਰਲੇ ਹੋਏ ਸਿੱਖੀ ਤਬਦਵਾਜਾ ਦਾ ਸਰਕਾਰ ਕਮਜ਼ੋਰ ਹੋ ਗਈ ਹੋਈ ਗਈ ਖਾਲਸਾ ਦਾ ਬਲ ਉਹ ਵਧਾ ਚਲੇਗਾ ਪਤਾ ਲੱਗ ਜੇ ਵੀ ਛੇਤੀ ਉਹ ਰਾਜ ਹੋਣਾ ਦਾ ਸਾਡਾ ਹੋਏਗਾ ਤਾਂ ਬਹੁਤ ਸਾਰੇ ਟਾਊਟ ਜਿਹੜੇ ਸੀਗੇ ਉਧਰ ਰਲੇ ਹੋਏ ਸੀ ਇਧਰ ਆਏ ਇਹ ਕਾਂਗਰਸ ਦੇ ਰਾਜ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਦੇ ਬਹੁਤ ਸਾਰੇ ਬੰਦੇ ਬਾੜ ਕੇ ਸੀ ਜੇ ਰਾਜ ਹੋਣੀ ਰੋਧ ਹੋ ਜਾਣਾ ਸਾਨੂੰ ਛੱਡ ਦੇਣਾ ਤੁਸੀਂ ਪਹਿਲੇ ਹੀ ਆਵੋ। ਛਾਣੇ ਬੰਦੇ ਪਹਿਲਾਂ ਹੀ ਕਰਦੇ ਨੇ ਕਿ ਤੁਸੀਂ ਤਾਂ ਕੰਮ ਕੰਮ ਜੇ ਕੋਈ ਸਾਡੇ ਖਿਲਾਫ ਗੁੰਦਲਣੇ ਗੁੰਦਲਗੇ ਕੋਈ ਤਾਂ ਆ। ਪਹਿਲਾਂ ਹੀ ਵੜ ਗਏ ਸੀ। ਬੰਦੇ ਵਾਧ ਵੇਲੇ ਹੋਰ ਵੜ ਗਏ ਪਹਿਲਾਂ ਵੜ ਗਏ ਸੀ। ਕਿਸਨੋਂ ਵੇਲੇ ਹੋਰ ਵੜ ਗਏ। ਤਾਂ ਫਿਰ ਬੱਦ ਤੇ ਹੀ ਚਲੇਗਾ। ਵਿਰਵਾਦ ਵਿੱਚ ਲੁਟੇਰੇ ਜਿਆਦਾ ਤੇ असल बंदे थोड़े सी असल बंदे सारे रहे आटे जरूर वाले सरकार ने बड़े मुद्दे गाड़ के ऊ बड़े वेलकम असल जो मूवमेंट भी की सी वो बड़ेटी थी वो भी एक आगाज़ ताकत पर गौरव तक कब्जा कर दिस की सी चलाई हुई ਸਰਕਾਰ ਦੇ ਕਾਂਗਰਸ ਦੀ ਪਾਰਟੀ ਇਸ ਖਲਪ ਪਰੇਸ਼ਾਨ ਕਰਦੇ ਸੀ ਬੋਲ ਚਰਨ ਕੇ ਨਾਲ ਸਿਆਸੀ ਗੱਲਾਂ ਸਿਆਸੀ ਆਦਮੀ ਨੂੰ ਬਿਮਾਰੀਆਂ ਵੀ ਸਿਆਸੀ ਨੂੰ ਲੱਗੂ ਤੈਂਹੇ ਕਾਰਨ ਆਦਮੀ ਨੇ ਬਿਮਾਰੀ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਗੁਰਦੇਵ ਦੀ ਸੰਗਤ ਗੁਰਦੇਵ ਸੰਗਤ ਪ੍ਰਭ ਮੇਲ ਕਰੇ ਪਾ ਗੁਰਦੇਵ ਸੰਗਤ ਰੂਪ ਕੀ ਕਾਂਗੇ ਗੁਰਦੇਵ ਦੇ ਨਾਲ ਹੈ ਪ੍ਰਭ ਗੁਰਦੇਵ ਦੀ ਸੰਗਤ ਵਿੱਚ ਗੁਰਦੇਵ ਦੇ ਨਾਲ ਮਿਲੂਗੇ ਲੋਕਾਂ ਤੇਰਾ ਤੁੱਪਾ ਕਰੇ ਸਰਪ੍ਰੇਪਾ ਐਸੀ ਕਰ ਹਾਂ ਮੈਨੂੰ ਜਿਹੜਾ ਚੀ ਚਾਹਦਾ ਫਿਕਰ ਹੈ ਚਿੰਤਾ ਹੈ ਉਹ ਤੂੰ ਦੂਰ ਕਰ ਜਿਹੜਾ ਜਿਹੜੀ ਮੇਰੇ ਰੜਕਾ ਬਣਦੀ ਉਹਨਾਂ ਹਾਲਾਤ ਆਵਾ ਪੇਰੀ ਜ਼ਿੰਦਗੀ ਦੇ ਕੁਝ ਹਾਲਾਤ ਮੈਨੂੰ ਇਤ ਰੜਕਾ ਬਣਦਾ ਹੈ ਦੁਨੀਆਵੀ ਹਾਲਾਤ ਦੁਨੀਆਵੀ ਦੁਨੀਆਵੀ ਹਾਲਾਤ ਪਰਮੇਸ਼ਰ ਦੇ ਅੱਗੇ ਬਦਲ ਨੇ ਏ ਗੁਰਦੇਵ ਦੇ ਹੱਥ ਜੀਦਾ ਮੇਰਾ ਉੱਥੇ ਗਿਆ ਪਿੱਛੇ ਸਾਧਕ ਹੋ ਤੋ ਅਗੇ ਇਹ ਤੇਰੇ ਹੱਥ ਜੇ ਤੂੰ ਉਹਨਾਂ ਦੇ ਵਿੱਚ ਥੋੜੀ ਜਿਹੀ ਐਸੀ ਗੱਲ ਕਰੇ ਜਿਹੜਾ ਮੈਨੂੰ ਉਹਦੀ ਚਿੰਤਾ ਘਟ ਦੀ ਦਿਲ ਦੀ ਗੱਲ ਦੀ ਕੀ ਲੋੜ ਹੈ ਤੂੰ ਐਵੇਂ ਕਰ ਪਾਤਾ ਹਾਂ ਤੇ ਤੈਨੂੰ ਤਾਂ ਪਤਾ ਹੀ ਯਾਰ ਮੈਂ ਦੱਸਾਂ ਬਸ ਉਹ ਆਪੀ ਗੱਲ ਹੋਈ ਜਾਵੇ ਰੋਟੀ ਦਾ ਸਾਥ ਨਾਪੀ ਵੜੀ ਜਾਵੇ ਮੈਂ ਇਧਰ ਬੇਲਾ ਹੋ ਕੇ ਦੂਰ ਪਾਸੇ ਕਰ ਕਰਪਾ ਹਮ ਮੂਰ ਪਾਪੀ ਜਿਤ ਲਗਤਰਾ ਮੇਰੇ ਵਰਗਾ ਕੋਈ ਮੂਰਖ ਪਾਪੀ ਹੈ ਪਾਪੀ ਉਹ ਵਿਰੋਧ ਕਰਦਾ ਸੁਲਤਾਣ ਕਬੇ ਹਕੂਮਤ ਦਾ ਤਰ੍ਹਾਂ ਕਿਸਮ ਇਸ ਮੂਰ ਦੇਵ ਜੁੜ ਕੇ ਉਹ ਵੀ ਤਾਂ ਗੁਰਦੇਵ ਜੁਗ ਜੁਗ ਤੋਂ ਹੈ ਗੁਰਦੇਵ ਕਦੇ ਮਰਦਾ ਨਹੀਂ ਮੈਂ ਮਰ ਜਾਂਦਾ ਜੇ ਮੈਂ ਉਹਦੇ ਨਾਲ ਜੁੜ ਜਾਂਦਾ ਬੇਵਜੂਦ ਮੈਂ ਕੀ ਹਾਂ ਗੁਰਦੇਵ ਤੋਂ ਲੱਗ ਕੇ ਹਾਂ ਜੇ ਗੁਰਦੇਵ ਤੋਂ ਆਟ ਬਣਿਆ ਗੁਰਦੇਵ ਨੂੰ ਵੀ ਪਿਛਲੇ ਜਨਮ ਦਾ ਗਿਆਨ ਕਿਉਂ ਰੂ ਗਿਆਨ ਹੋ ਗਿਆ ਬੰਦੂ ਨਰੇਵ ਨੂੰ ਪਿਛਲੇ ਜਨਮ ਦਾ ਗਿਆਨ ਇਹ ਤਾਂ ਸੱਚਾ ਹੁੰਦਾ ਗਿਆਨ ਬਾਅਦ ਚ ਬੋਲ ਗੁਰਦੇਵ ਨੂੰ ਪਿਛਲੇ ਜਨਮਾਂ ਦਾ ਗਿਆਨ ਦੇ ਐ ਸਦਾ ਸਦਾ ਦੇ ਸਤੂਰ ਮੇਰਾ ਸਦਾ ਸਦਾ ਨਾ ਆਵੇਂ ਬਚਾਈ ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ ਜਾਂ ਸੌਂ ਜਾਂਦਾ ਉਹਨੂੰ ਵੀ ਪਤਾ ਨਹੀਂ ਠੋਕ ਰਿਆ ਉਹ ਬੀਜ ਰੂਪ ਬੀਜੋ ਸੁਜੇ ਕੋ ਗੁਰਦੇਵ ਤੋਂ ਬਾਤਾਂ ਨਹੀਂ ਲਾ ਸੋਦਾ ਜਿਦਾ ਜਨ ਬੀਜ ਰੂਪ ਹੈ ਮੇਰੇ ਚੇ ਸੋਤਾ ਹੈ ਢਾਲ ਸੁਰਤੇ ਅੱਡ ਹੈ ਉਹਦੀ ਸੁਰਤੇ ਉਹਦੀ ਮਰਤੀ ਹੈ ਸਤ ਦਾ ਦੀ ਰਾਤ ਤੁਸ ਦਾ ਮਰਨਾ ਸੋਣਾ ਸੌਣੇ ਮੇਰੇ ਭੁੱਲ ਜਾਣਾ ਸਭ ਨੂੰ ਕਿਹਾ ਸਭ ਕੁਝ ਜਾਗਦਾ ਕਿ ਇਸ ਵੇਲੇ ਜਾਗਦਾ ਦਿਓ ਹੈ ਇਸ ਵੇਲੇ ਤਾਂ ਬੰਨ ਫੁੱਲ ਲਈ ਜਾਂਦੇ ਤਦੋਂ ਤਾਂ ਸੋਦਾਈ ਰਾਤ ਨੂੰ ਚਾਲੇਂਦਾ ਰਹੇ। ਸੋਦਾ ਕਦੋਂ ਜਿਹੜੇ ਅਸ ਵਿਲੇਜ ਜਗਦਾ ਸੋਦਾ ਕਦੋਂ। ਸੋਦਾ ਜਿਹਾ ਤੇਰੇ ਤੇ। ਉਦੋਂ ਜੀ ਬੀਰੂ ਕੀ ਕਰ ਜਾਏਂ ਜਾਮਦਾ ਗੰਡ ਲੱਗਦਾ ਨਾਲ ਜਾ ਕੇ। ਨਾ ਮਰਨੂ ਜਗਰਗਾ ਤੇ ਜਾਮਦਾ ਗੰਡ ਲੱਗਦੀ ਬਸ ਜੱਦ ਜਾ ਦਰੂ ਮੈਂ ਤੂੰ ਪੈ ਗਿਆ ਜੀ ਤੋ ਉਹ ਕਿਹਦਾ ਨਵੇਂ ਸੋ ਕੀ ਕਰ ਦਿਆ ਸੀ ਉਸ ਤੋਂ ਦਾ ਪਤਾ ਨਹੀਂ ਦਾ ਬੂੜਿਆ ਬੂੜੇ ਨੂੰ ਗਿਆਨ ਨਹੀਂ ਹੈ ਵੀ ਮੈਂ ਕੀ ਕਰ ਦਤਾਇਆ ਸੀ ਉਹ ਲਗਾਉਂ ਦਰ ਰੋ ਤੂੰ ਦਬਾਈ ਹਰੇ ਸੁਪਨੇ ਦੇ ਵਿੱਚ ਜੇ ਜਾਗਦਾ ਸੁਪਨਾ ਦੇਖਦਾ ਸੁਪਨੇ ਜੋ ਜੇ ਜਾਗਦਾ ਸੰਸਾਰ ਦੇ ਨਾ ਮੇਂ ਬੁੱਲੇ ਤੇਰੇ ਤੇ ਇਸ ਵਕਤ ਤੇਰੇ ਸੋਚੀ ਲਿਖ ਐਸ ਵਕਤ ਤਾਂ ਸੋਚੀ ਹੋਵੇ ਤੇਰੇ ਤੇ ਸੋਚੀ ਤਾਂ ਹੁਣ ਕੀ ਕਰਨਾ ਸੀ ਤੇਰੇ ਤੇ ਨਹੀਂ ਸੋਚੀ ਤਾਂ ਬੰਦੀ ਹੋਈ ਐ ਗੁਰਸੇਵਾ ਤੇ ਭਗਤ ਉਹਥੇ ਤਾਂ ਪੁੱਛਦਾ ਹੈ ਪਰ ਉਹਤੇ ਕਰ ਕੁਝ ਨਹੀਂ ਸਕਦਾ ਐਸ ਵਕਤ ਹੋਤੀ ਤੁਸੀਂ ਇਸ਼ ਵਕਤ ਤੂੰ ਸੋਚੀ ਜਰੂਰ ਤੋ ਬਾਤ ਹੀ ਵਰਤੀ ਜੋ ਕਿਸੇ ਨੂੰ ਕੋ ਪ੍ਰੇਰ ਉਹ ਸੇ ਉਸ ਦੇ ਵਿੱਚ ਕੋ ਤੇਰੇ ਤੋਂ ਪ੍ਰੇਰਣਾ ਇਹ ਚੱਟੀ ਬੁੱਤੇ ਸੋਚੀ ਇਹਦੇ ਨਾਲ ਹੋਰ ਕੀ ਦੇਖੋ ਜਨਮ ਮਰਨ ਦੇ ਬਾਅਦ ਕੀ ਦਸਬੇ ਉੱਦੀ ਜਾਲੀਏ ਇਹ ਬੁਢੀ ਜਾਲਦੀਏ ਤੇ ਕੋਈ ਛੱਡੀ ਹੋਈ ਨਹੀਂ ਕੰਮ ਆਉਂਦੇ ਦੁਬਾਰਾ ਜਾਂ ਲੈ ਕੇ ਆਊਗਾ ਉਹ ਤਾਂ ਹੈ ਲੋ ਨਹੀਂ ਜੋ ਬ੍ਰੇਨ ਜੀ ਉਹ ਬ੍ਰੇਨ ਪਿਛਲੇ ਬ੍ਰੇਨ ਤੇ ਨਹੀਂ ਟੋਕਣ ਤੂੰ ਤਾਂ ਜੋ ਸ਼ੀਸ਼ਾ ਨਰਮਨ ਹੁਣ ਅਸੀਂ ਇਹਨਾਂ ਬਲੀ ਬਸ ਉਹ ਕੋਈ ਯਾਰ ਯਾਰ ਕੁਛ ਨਹੀਂ ਹੋ ਕੋਈ ਲਖਾਰੀ ਕੋਈ ਕੁਝ ਮੈਟਰ ਦੀਆਂ ਮੈਮਰੀਆਂ ਨਹੀਂ ਰਿਕਾਰਡ ਕੀਤੀਆਂ ਜਾਂਦੀਆਂ ਉਹ ਨਿਸ਼ੇ ਤੇ ਡਿਲੀਟ ਹੁੰਦੀਆਂ ਨੇ ਇਹ ਮੈਮਰੀ ਕਿਵੇਂ ਡਿਲੀਟ ਹੋ ਜਾਂਦੀ ਹੈ ਕਿਉਂਕਿ ਉਸੇ ਬੁੱਧੀ ਨੇ ਬਣਾ ਗਾਹਾਂ ਮੈਂ ਨਹੀਂ ਮਾਈਆਂ ਉਹ ਮੈਮਰੀਆਂ ਵੀ ਆਪ ਕਰੇ ਦਾ ਰਿਲੇਟ ਹੁੰਦੀਆਂ ਨੇ ਜਿਹੜੀਆਂ ਜਿੰਨੀਆਂ ਮਰਜ਼ੀ ਮੈਂ ਬਣਾਉਣਾ ਇਹ ਡਿਲੀਟ ਦੀਆਂ ਹੁੰਦੀਆਂ ਨੇ ਪਰ ਡਿਲੀਟ ਇਹ ਮੈਮਰੀ ਹੈ ਬ੍ਰੇਨ ਦੇ ਵਿੱਚ ਹੈ ਮੈਂ ਕੁਝ ਹੋ ਰਿਹਾ ਦੈਤਾ ਹੈ ਇਹਦੇ ਸੋਜੀ ਜਾਂਦੀ ਹੈ ਬੈਵਰੀ ਨਹੀਂ ਕਰਦੀ ਬੈਵਰੀ ਫੇਲ ਚ 60 ਲੱਗ ਜਾਂਦੀ ਹੈ ਬੰਦੇ ਨੀ ਨਹੀਂ ਉਹ ਇਹਨਾਂ ਮੋਟਰਾਂ ਮੈਮਰੀ ਜਿਹੜੀ ਹੈ ਬਰੇਕ ਤੱਕ ਸੀਮਿਤ ਹੈ ਬਸ ਕਹਾਣੀ ਹੈ ਉਹ 60 ਲੱਗ ਯਾਦ ਆਤ ਹੋ ਕੰਪਿਊਟਰ ਚ ਜੋਦਾ ਇਹਦਾ ਉਹੀ ਜਾਂਦਾ ਉਹਦੇ ਵਿੱਚ ਖੋ ਜਾਂਦੀ ਹੈ ਹਾਂ ਇਹ ਦੇ ਵੀ ਉਹਦੇ ਆਦੇ ਨਹੀਂ ਹੈ ਪਿਛਲਾ ਜੇ ਅੰਦਰ ਹੋਵੇ ਤਾਂ ਉਹਦੇ ਆਦਰ ਹੋਵੇ ਅੰਦਰ ਕੁਝ ਨਹੀਂ ਹੈ ਸੰਸਾਰ ਇੱਥੋਂ ਥੱਲੇ ਹੈ ਥੱਲੇ ਜਾ ਨਰਾਕਾਰੀ ਤੋ ਉਹ ਜਿਹੜਾ ਕਹਿੰਦੇ ਮੂਲ ਲੈ ਕੇ ਆਇਆ ਵੀ ਮੂਲ ਵੀ ਜੱਡਿਆ ਘਵਾ ਕੇ ਉਹ ਮੂਲ ਹਰ ਕਿਹ ਨੂੰ ਕਹਿ ਜਿਹੜਾ ਕਹਿੰਦਾ ਮੂਲ ਸੋਝੀ ਗਈ ਉਹ ਹੀ ਉਹ ਹਿਰਦੇ ਲੈ ਗਿਆ ਕੀ ਹੈ ਉਹ ਨੂੰ ਕਬੂਲ ਲਿਆ ਆਪਣੇ ਆਪ ਨੂੰ ਘਟ ਮੰਨ ਲਿਆ ਜਿੰਨਾ ਆਪਣੇ ਆਪ ਨੂੰ ਛੋਟਾ ਕਰਕੇ ਮੰਨ ਲਿਆ ਉਹਨਾਂ ਨੂੰ ਲਾਹ ਲੈ ਜਿੰਨਾ ਆਪਣੇ ਆਪ ਨੂੰ ਟੀਵਾ ਕਰ ਲਿਆ ਉਹਨਾਂ ਨੂੰ ਲਾਹ ਲੈ ਜਿੰਨਾ ਆਪਣੀ ਮੱਤ ਨੂੰ ਛੋਟੀ ਮੰਨ ਲਿਆ ਉਹ ਵੀ ਛੋਟੀ ਮੰਨ ਲਿਆ ਉਹਨਾਂ ਲਾਹ ਲੈ ਜਿੰਨਾ ਹੰਕਾਰ ਵਧਾ ਲਿਆ ਉਹਨਾਂ ਨੂੰ ਬਾਵੇਂ ਮੈਂ ਨਹੀਂ ਕੋਲ ਰਹੀ ਔਰ ਉਹ ਦਾ ਪ੍ਰਭਾਵ ਹਕਾਰ ਵਧਿਆ ਹੋਇਆ ਪੋਰ ਰਹੇ। ਬੁੱਧ ਖਰਾਉ ਕਰਦੇ। ਬੁੱਧ ਦਾ ਨਾਲ ਜਾਉਂਦਾ। ਸਾਤ ਸਿੱਧ ਬੁੱਧ ਬੁੱਧ। ਬੁੱਧ ਨੂੰ ਕਿਹੜੀ ਚੀਜ਼ ਗਗੜਾ ਕਰਦੀ ਜਿਹੜਾ ਜਾਨ ਗਗੜਾ ਕਰ ਜਾ ਜਿਹੜਾ ਜਾਨ ਡਰਨੋਂ ਕਰ। ਬਸ ਪਾਸ 2000 ਬੁੱਧ। ਜੇ ਬਹੁਤ ਵੱਡਾ ਡਾਕਟਰ ਹੋ ਕੇ ਬਹੁਤ ਵੱਡੇ अपराध किए इसे देखो रेलवे ने किया वो तो मुझे नहीं पता कि नहीं बारेयर वो विघताक असरण किए तो देखा उन्होंने तो मैं निराला डॉक्टर सी गए सी तो असर वो तो दिसो वो का प्रभाव दिसो पूर विच जहरण दी कुछ खादा सी जहरली ਕੁਝ ਚਰਲਗੀ ਉਹ ਖਾਧੀ ਚੀਜ਼ ਰੋਟੀ ਤੇ ਦੁੱਧ ਤੇ ਆ ਤਾਂ ਸਮਝਦੇ ਜੋ ਕਈ ਸਾਲ ਪਹਿਲਾਂ ਪਰ ਕਈ ਸਾਲ ਬਾਅਦ ਉਹ ਕਹਿੰਦਾ ਤਾਂ ਕਿ ਬੜਾ ਚਰ ਖਾਲੀ ਸੀ ਭਾਈ ਕੋਈ ਕੀ ਉਹ ਅਸਰ ਹੈ ਅਸਰ ਜਿਹੜੀ ਖਾਧੀ ਸੀ ਉਹ ਜਿਹੜੀ ਅਸਰ ਹੈ ਅਸਰ ਹੈਗਾ ਉਹਦਾ ਬਸ ਥੋੜ੍ਹੀ ਸਾਡੇ ਕੋਲ ਅਸਰ ਜਿਹੜੀ ਸੇਵਾ ਕਰਦਾ ਕੀਤੀ ਹੈ ਇਹ ने ਨੇ सेवा की ਕੀਤੀ ਹੈ ਉਹ ਸਰੀਰ ਕਰਕੇ ਕੀਤੀ ਹੈ ਜੋ ਵੀ ਕੁਝ ਕਰਦਾ ਹੈ ਕੋਈ ਜਬ ਤੱਕ ਕੀਤਾ ਹੈ ਜੋ ਵੀ ਕੁਝ ਕੀਤਾ ਹੈ ਉਹਦਾ ਮਸਲ ਹਲ ਕਾਰਨ ਫੁੱਲੀ ਬਲ ਹੈ ਉਹ ਜਬ ਤੱਕ ਤਾਂ ਕੋਈ ਨਹੀਂ ਉਹਦਾ ਅਸਰ ਹੈ ਸਾਡੇ ਕੋਲ ਉਹ ਤੇ ਕਿਸੇ ਆਦਮੀ ਨੇ ਉਹ ਅਸਰ ਹੁੰਦਾ ਜਦਿ ਬੱਚੇ ਤਾਂ ਉਹਦੇ ਕੋਲ ਹੈ ਉਹ ਅਸਰ ਹੁੰਦਾ ਪੁਰਾਣੋ ਦਿਹਾੜੀਆ ਥੋੜੀ ਉਹ ਉਹ ਦੇਖੋ ਸਾਡੀ ਰੀਲ ਉਹ ਰੀਲ ਲੱਗੀ ਲੈਦਾ ਉਹ ਤਾਂ ਕੀ ਖਟਿਆ ਕੀ ਬੋਇਆ ਥੋੜੀ ਹੈ ਕੀ ਤਾਂ ਖਟਿਆ ਕੀ ਬੋਇਆ ਉਹ ਅਸਰ ਹੈ ਬਹੁਤ ਅਸਰ ਹੈ ਉਹ ਹੋ ਕੀ ਰਹਿਣ ਉਹ ਉਹ ਲੀਡ ਤਾਂ ਕਿਵੇਂ ਹੋਈ ਕਿਵੇਂ ਹੋਇਆ ਇਹ ਨਹੀਂ ਰੋਲਾ ਅਸਲ ਆ ਮਲੀਨ ਹੋਇਆ ਹੈ ਵੀ ਅਸਰ ਸਾਹਮਣੇ ਆ ਵਧੀਆ ਹੋਇਆ ਹੈ ਮੇਰ ਬਲ ਹੋਇਆ ਵੀ ਅਸਰ ਤੋਂ ਬਸ ਦੋ ਅਸਰ ਅਸਰ ਦੇਖ ਰਹੇ ਹਾਂ ਤਾਂ ਆ ਮਲੀਨ ਹੋ ਗਿਆ ਲਿਖਿਆ ਆ ਪਹਿਲਾਂ ਉਹਨਾਂ ਕੋਲ ਦੇਖਣਾ ਵੀ ਤਾਂ ਉਹਨਾਂ ਕੋਲ ਆ ਲੈ ਤਾ ਪਾ ਲੈ ਤਾ ਹੋਰ ਕੋਈ ਕਰਮ ਕੋਈ ਲੇਖਾ ਨਹੀਂ ਹੈ ਕੁਛ ਵੀ ਲੇਖਾ ਨਹੀਂ ਕਿਤੇ ਉਹਦਾ ਕਹਾ ਇਹ ਪਰ ਜਲ ਜੇ ਫੈਲੇ ਬਣ ਜਾਣਾ ਉੱਥੇ ਸਿਰ ਬੰਨ ਮਲੀਨ ਹੋਇਆ ਆ ਨਿਰਮਲ ਹੋਇਆ ਇਹ ਨਾਲ ਦਾ ਨਾਲ ਦੀ ਨਾਲ ਹੋਈ ਹੈ ਉਹ ਤਾਂ ਜਿਹ ਜਿੰਨਾ ਮੈਨ ਉਹ ਨਾਲੇ ਨਾਲੇ ਜਿਹਨਾਂ ਨੇ ਨਮਲ ਹੋ ਗਿਆ ਵੀ ਇਹ ਉਹ ਵੀ ਨਾਲੇ ਕੁਛ ਨਹੀਂ ਕਬ ਮਥੋਦਾ ਦੇ ਰਮਲੀਨ ਯੇ ਬਗੀਰ ਗਾ ਲੈ ਰਾ ਦਵਾਲੇ ਲੇ ਦਰਬੋ ਜਨ ਬਦਾ ਹੋ ਗਿਆ ਹੋਏ ਸੋ ਦੋਬਲੇ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਗੁਰਦੇਵ ਸੰਗਤ ਬੇਲ ਪ੍ਰਭ ਮੇਲ ਪ੍ਰਭ ਬੇਲ ਕਰ ਕਿਰਪਾ ਪ੍ਰਭ ਕਿਰਪਾ ਕਰੋ ਸੰਗਤ ਵਿੱਚ ਬੇਲਿਆ ਗੁਰਦੇਵ ਨਾਲ ਜੁੜਿਆ ਨਾ ਹੋ ਗੁਰਦੇਵ ਕਹੇ ਜੋ ਗੁਰਦੇਵ ਚਾਹੇ ਉਹੀ ਤਰਾ ਐਸੇ ਹਾਲਾਤ ਮੇਰੇ ਬੜੇ ਅਰਜ਼ਦਿਗੇ ਐਸਾ ਕੋਈ ਬਿਗੜ ਨਾ ਪਵੇ ਇਸ ਤੋ ਗਰਪਾ ਐਸੀ ਕਿਰਪਾ ਕਰ ਕੋਈ ਬਿਗੜ ਨਾ ਹਮ ਮੂੜ ਪਾਪੀ ਜਿਤ ਲਗਤਰਾ ਅਸੀਂ ਮੂੜ ਪਾਪੀ ਬਰਬੁੱਦੀ ਦੋਰੇ ਹਾਂ ਤੱਪੀ ਜੋ ਇਹ ਮੂਰਖ ਅਸੀਂ ਨਹੀਂ ਲੱਗੇ ਗੁਰਦੇਵ ਨੂੰ ਤਰਜੀਹ ਸਤ ਗੁਰਦੇਵ ਸਤ ਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਸਤ ਗੁਰ ਹੈ ਔਰ ਸਤ ਲੋ ਜਿਵੇਂ ਆਹ ਪੜੇ ਉੱਤੇ ਲੈਟਰ ਹੋਈ ਹੈ ਲੋਹੇ ਅੱਖਾ ਨਾ ਟੰਗਿਆ ਹੈ ਕੀ ਲੋਕ ਚੱਕੀ ਗੜੀਓ ਕਰਦੇ ਲੈਟਰ ਦੇ ਨਾਲ ਚੱਕੀ ਕਰਦੇ ਲਗੁਰਦੇਵ ਤਾਂ ਹੁੱਕਾ ਤਾਜਤਾ ਮੈਂਟਰ ਦੀ ਲੈਟਰ ਦੇ ਕੀ ਉਹਦਾ ਇਹ ਤੇ ਬਿਨਾਂ ਲੈਟਰ ਦਾ ਨਹੀਂ ਉਹ ਖਰੇ ਬਹੁਤ ਵੱਡਾ ਆਪਣੀ ਆਪਣੀ ਹੁੱਕਾ ਲੜੇ ਪਾਰ ਬ੍ਰਹਮਤਾ ਸਰਵ ਇਹ ਜਿਹੜੇ ਗੁਰਦੇਵ ਨੇ ਸਾਰਿਆਂ ਦੇ ਬਖਰੇ ਬਖਰੇ ਆਪਣੀ ਆਪਣੀ ਹੁਕਮ ਤਾਂ ਥੱਲੇ ਮੈਰੀ ਜਾਂ ਗਾਜੂ ਦੀ ਮਿੱਟੀ ਗਾਜੂ ਮਿੱਟੀ ਦਾ ਮਿੱਟੀ ਉਹ ਖਾਉ ਸਰਪੇ ਮਿੱਟੀ ਖਾਏ ਗੁਰਦੇਵ ਸਾਤ ਕੋ ਪਾਰ ਬ੍ਰਹਮ ਪਰਮੇਸ਼ਰ ਪਾਰ ਬ੍ਰਹਮ ਪਰਮੇਸ਼ਰ ਇਹਨੂੰ ਮਿੱਟੀ ਤੋਂ ਉੱਤੇ ਚੱਕੋ ਪ੍ਰਕਾਸ਼ ਦੇ ਵਿੱਚ ਕੰਦ ਲੋ ਇਹਨੂੰ ਗੁਰਦੇਵ ਨਾਨਕ ਹਰ ਨਮਸਕਾਰ ਗੁਰਦੇਵ ਨਾਨਕ ਨਾਨਕ ਹਰ ਨਮਸਕਾਰ ਨਾਨਕ ਕਹਿੰਦਾ ਇਹੜਾ ਗੁਰਦੇਵ ਹੈ ਉਹ ਹਰ ਰੂਪ ਹੈ ਹਰ ਜੋਤ ਸਰੂਪ ਹੈ ਗੁਰਦੇਵ ਬਰੂਡੋ ਬੁਸ਼ਕਾਰ ਐਸੇ ਗੁਰਦੇਵ ਬਰੂਡੋ ਬੁਸ਼ਕਾਰ ਹੈ ਜੀ ਉਹ ਸਤਗੁਰ ਦਾ ਵੀ ਸਤ ਕੋ ਰਹਿਣਾ ਗੁਰਦੇਵ ਅੰਦਰ ਉਹ ਉਸ ਤਾਂ ਉਹ ਸਤਗੁਰ ਦੇ ਸਾਥ ਸੂਰਤ ਹੋੜਾ ਹੈ ਸੂਰਤ ਕਾਦਾ ਹੋਣਾ ਜਦ ਇਹ ਉਹਦੀ ਸੰਗਤ ਵਿੱਚ ਜੀਵ ਰਹੇ ਉਹਦੀ ਸੰਗਤ ਕਰਨੀ ਹੈ ਉਹਦੇ ਨਾਲ ਜੁੜਿਆ ਰਹਿਣਾ ਫਿਰ ਗੁਰਦੇਵ ਪੂਰਾ ਸਤਗੁਰ ਹੋ ਜਾਣਾ ਪੂਰੇ ਪੂਰਾ ਗੁਰੂ ਜੜਾ ਪੂਰਾ ਪੂਰੇ ਗੁਰਕਾ ਸੋ ਸੋ ਜਦ ਪੂਰਾ ਗੁਰ ਹੈ ਫਿਰ ਪੂਰੇ ਗੁਰਦੇ ਵਿੱਚੋਂ ਸ਼ਬਦ ਗੁਰੂ ਪ੍ਰਗਟ ਹੋ ਜੀ ਪ੍ਰਗਟ ਅੰਦਰੋਂ ਪ੍ਰਗਟ ਹੋਈ ਹੈ ਉਹ ਸਤਗੁਰ ਦਾ ਚਾਰੂ ਬਣੂ ਆਵੋ ਕੇ ਸਤਗੁਰ ਕੇ ਨੂੰ ਬਚਾਇਆ ਕੋਨ ਜਲਬ ਪਦਾਰਥ ਕਹਦੇ ਆਂ ਅੰਦਰੋਂ ਜੋ ਸੋਜੀ ਆਉਣ ਲੱਗਦੀ ਹੈ ਨਾ ਅੰਦਰੋਂ ਉਹ ਨਮ ਜਲਬ ਬਾਕੀ ਜਲਬ ਜਿਸੋਜੀ ਬਾਹਰੋਂ ਜਿੱਦੇ ਜਰੂਰਤ ਉਦਰੀ ਆਪਣੇ ਧਿਆਨ ਕਰਕੇ ਜਾਂਦੂ ਜੋ ਵੀ ਗਿਆਨ ਮਿਲਦਾ ਸਾਨੂੰ ਬਾਹਰੋਂ ਮਿਲਦਾ ਅੰਦਰੋਂ ਵੀ ਮਿਲਦਾ ਰਹਿੰਦਾ ਅੰਦਰੋਂ ਵੀ ਮਿਲਦਾ ਅੰਦਰੋਂ ਵੀ ਹੁੰਦੀ ਜਾਨਵਰਾਂ ਨੂੰ ਦ੍ਰਸ਼ਤਾਂ ਨੂੰ ਉਈ ਦਾਖਤ ਤੇਲੇ ਦਾ ਫਟ ਡਾ ਹੋ ਗਿਆ ਤੇ ਤੁਹਾਨੂੰ ਲੱਗਿਆ। ਵਰਨ ਦਾ ਦਰ ਗਿਆ ਨਾ ਬੀਜ ਬੰਤਰ ਸਰਪ ਹੋ ਗਿਆ। ਗੀਜ ਬੰਤਰ ਕੀ ਹੈ। குரு ਬੰਤਰ ਬੀਜ ਬੰਤਰ। ਇਹ ਗੁਰਮੰਤਰ ਹੈ। ਗੁਰਮੰਤਰ ਬੀਜ ਬੰਤਰ ਜੋ ਕੰਨਾ ਨਾਲ ਸੁਣਨ ਵਾਲਾ ਬੰਤਰ ਹੈ ਬਾਣੀਏ ਉਹ ਬੀਜ ਰੂਪ ਨਹੀਂ ਹੈ ਬੀਜ ਰੂਪ ਹੈ ਪਰ ਤੁਸੀਂ ਵਾਖੋ ਜੋ ਨਾਲ ਲੱਗੇ ਉਹ ਗਿਆਨ ਉਹ ਜਿਹੜਾ ਸਰਬ ਗਿਆਨ ਦੇਣ ਵਾਲਾ ਬੰਤਰ ਹੈ ਜੋ ਕੰਨਾ ਨਾਲ ਸੁਣਨ ਵਾਲਾ ਗੁਰੂ ਸ਼ਬਦ ਗੁਰੂ ਉਹ ਜੋ ਸਾਰਿਆਂ ਦੀ ਸੋਚੀ ਹੈ ਸਾਰੇ ਬੀਜ ਦੀ। ਸਾਰੀਆਂ ਜੁਡੀਆਂ ਦੀ ਸੋਚੀ ਉਹਦੇ ਵਿੱਚ। ਸਾਰੇ ਬੀਜ ਤੇ ਬਰਾਬਰ। ਬੀਜ ਰੂਪ ਸੋਚੀ। ਸਾਰੇ ਉਹ ਕਰਦੀ। ਜਾਨਵਰ ਕੋਈ ਹੋਵੇ ਲਵੇ ਪਤਾ ਹੁੰਦਾ ਨਹੀਂ। ਅਗ ਬੋਲਦੀ ਬੋਲ ਰਿਹਾ ਕਿਦਾ ਨਿਕਲੋ ਦੀ ਗਰਮੀ ਸਾਰਿਆਂ ਨੂੰ ਬੈਸ ਨਹੀਂ ਸੋਦੀ ਹੈ। ਬੜੀ ਗਰਮੀ ਹੈ ਹੀਟ ਆ ਦੇ ਵਿੱਚ। ਉਹ ਆਪਣੀ ਬੋਲੀ ਚ ਸਾਰਿਆਂ ਨੂੰ ਦੱਸ ਦਿੰਦੀ ਕਿ ਰਹਿ ਲੈ। ਪਰ ਚਲੇ ਜਾ ਨੇੜੇ ਜਾਂਦਾ ਕੋਦੀ ਛੱਡ ਕੇ ਸੌਂਜ ਬੈਠਦਾ ਜਾ ਕੇ। ਉਹ ਬੀਜ ਰੂਪ ਦੇ ਬੀਜ ਰੂਪ ਸੋਚੀ ਨੂੰ ਬੋਲਣ ਦੀ ਲੋੜ ਨਹੀਂ ਜੇ ਬਿਨਾ ਬੋਲੇ ਦੇ ਹੁੰਦੀ ਆਖ ਬੋਲਦੀ ਨਹੀਂ ਮੇਰੇ ਲਈ ਇਹ ਗੁਰਮੰਤਰਾਂ ਨੇ ਬੋਲੇ ਤੇ ਬੇਜਮੰਦਾਂ ਕਰੋ ਹਾਂ ਬੋਲੇ ਤੇ ਕਨੂੰ ਸੁਣਵਾ ਬੋਲਣ ਦੀ ਲੋੜ ਨਹੀਂ ਕਰਮੀ ਧੁੱਪ ਦੀ ਬੋਲਦੀ ਇਹਨੂੰ ਲੱਗਦੀ ਉਹ ਬੋਲਦਾ ਬਾਹਰ ਲੈ ਧੁੱਪ ਨੇ ਬਹੁਤ ਗਰਮੀ ਬੋਲਦਾ ਤਾਂ ਇਹਨੂੰ ਲੱਗਦੀ ਜਿਹੜਾ ਉਹਨੂੰ ਪ੍ਰਗਟ ਕਰਦਾ ਹੈ ਬੀਜ ਨੂੰ ਉਹ ਬੋਲਦਾ ਉਹ ਬੀਜ ਮੰਤਰ ਨੂੰ ਪ੍ਰਗਟ ਕਰਨ ਵਾਲਾ ਬੋਲਦਾ ਥੋੜੀ ਗਰਮੀ ਹੈ ਭਈ ਪ੍ਰਗਟ ਕੀਤੀ ਨਾ ਮੁਗਲੋ ਨੂੰ ਬਾਣੀ ਆਈ ਮਾਲ ਨੇ ਪ੍ਰਗਟ ਕੀਤੀ ਬੀਜ ਰੂਪ ਨੂੰ ਸ਼ਬਦ ਪ੍ਰਗਟ ਕੀਤਾ ਬੀਜ ਰੂਪ ਹੀ ਰਹੀ ਉਹ ਅਖਰ ਸੀ ਬੀਜ ਰੂਪ ਦੇ ਸੁੱਧ ਬਣਦਾ ਰੂਪ ਬੀਜ ਮੰਤਰ ਕੋ ਮੰਤਰ ਬੀਜ ਬੰਤ ਤੋਂ ਬਣ ਬੰਤਰ ਤਦ ਕਿ ਬੀਜ ਮੰਤਰ ਸਰਬ ਗਿਆਨ ਜਿਹੜਾ ਸਰਬ ਗਿਆਨ ਹੈ ਬੀਜ ਮੰਤਰ ਉਹ ਪਸ਼ੂ ਪੰਛੀ ਫਿਰ ਖਸਤਾਵਰ ਸਾਰਿਆਂ ਨੂੰ ਉਹ ਬੀਜ ਮੰਤਰ ਹੈ ਉਹ ਬਿਨਾ ਕਰਨ ਦਾ ਸੁਣ ਨਾਲ ਚੋਬਾਣਾ ਕੋ ਸਾਂਝਾ ਨਹੀਂ ਇਹ ਬੀਜ ਇਹ ਚੋਬਾਣਾ ਕੋ ਸਾਂਝਾ ਹੈ ਇਹ ਵਰਡ ਦਾ ਆਪਣੇ ਵਰਡ ਮੰਡਾ ਚਾਹਤਾ ਜਨਮ ਵਾਲਾ ਥੋੜੀ ਵਰਡ ਮੰਡਾ ਕੋਈ ਨੂੰ ਹੀ ਗਿਆ ਆਇਆ ਉਹ ਜਿਹੜੇ ਖੱਤਰੀ ਸ਼ੂਦਰ ਬ੍ਰਾਹਮਣ ਖੱਤਰੀ